ਪੇਮੈਂਟ ਹੋਇਆ ਜੀ ਇਸ ਇਸ ਸਮੇਂ ਹੁਣ ਪ੍ਰਮੇਂਦਰ ਸਿੰਘ ਠੰਦ ਮੇਰੇ ਨਾਲ ਨੇ 604828721360482872 13 ਇੱਕ ਹੈਪ ਐਂਟਰਪ੍ਰਾਈਜ਼ ਵਾਲਿਆਂ ਨੂੰ 20 ਕਲਾਸ 1 ਲੋਕਲ ਪੋਰਟ ਕੰਟੇਨਰ ਫਲ ਡਰਾਈਵਰ ਚਾਹੀਦੇ ਆ ਤੇ 10 ਉਹਨਾਂ ਨੂੰ ਚਾਹੀਦੇ ਆ ਓਨਰ ਆਪਰੇਟਰ 6049520952 6049520952 ਤੇ ਇੱਕ ਕੰਸਟਰਕਸ਼ਨ ਵਾਲੇ ਜਿੰਨੇ ਵੀਰ ਨੇ ਟਰੇਡਮੈਨ ਨੇ ਉਹਨਾਂ ਨੇ ਸਾਰਿਆਂ ਦੇ ਸਰਵਤ ਦੇ ਭਲੇ ਲਈ ਅਖੰਡ ਪਸਾਵਾ ਅੱਜ ਪ੍ਰਾਰੰਭ ਕਰ ਦਿੱਤਾ ਹੈ ਰੌਸ ਗੁਰੂ ਘਰ ਦੇ ਵਿੱਚ ਤੇ ਐਤਵਾਰ ਨੂੰ ਭੋਗ ਪਹਿਣਗੇ ਸਾਰਿਆਂ ਨੂੰ ਖੁੱਲਾ ਸੱਦਾ ਹੋਰ ਜਾਣਕਾਰੀ ਲਈ ਬੂਟਾ ਸਿੰਘ ਜੋਲ 604537 6446 60453764 46 ਬੂਟਾ ਜੋਹਲ ਅੱਜ ਖੰਡਬਰਸਾ ਪ੍ਰਾਪਾ ਹੋਏ ਨੇ ਰੌਸ ਗੁਰੂ ਘਰ ਦੇ ਵਿੱਚ ਇਹ ਤੁਹਾਨੂੰ ਭੋਗ ਹਰ ਸਾਲ ਇਹ ਟਰੇਡਸਮੈਨ ਤੇ ਕੰਸਟਰਕਸ਼ਨ ਵਰਕਰਸ ਵੱਲੋਂ ਇਹ ਖੰਡਬਰਸਾ ਸਰਬੱਤ ਦੇ ਭਲੇ ਲਈ ਕਰਾਉਂਦੇ ਆ ਇਹ ਤੁਹਾਨੂੰ ਭੋਗ ਪਾਣਗੇ 60453764 46 ਬੂਟਾ ਜੋਹਲ ਭਾਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜਿੱਥੇ ਵੀ ਸੌਂਦੇ ਨੇ ਜਿਸ ਤੱਕ ਆਵਾਜ਼ ਪਹੁੰਚ ਰਹੀ ਆਪਣੀ ਸਾਧਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਕਲਜੀ ਥਿੰਕ ਇੰਸ਼ੋਰੈਂਸ .ਸੀ ਇਹ ਤੇ ਜਾਣਕਾਰੀ ਹੈ 604 ਸਿੰਘ ਸੇਨ ਤੇ ਰਮਨਦੀਪ ਹੈ ਗੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਉੱਥੋਂ ਹੀ ਪਿਛਲੇ 15 ਦਿਨਾਂ ਦੇ ਵਿੱਚ ਕੋਈ ਇੰਸ਼ੋਰੈਂਸ ਇੰਡਸਟਰੀ ਚ ਨਵੀਂ ਚੀਜ਼ ਹੋਈ ਹੋਵੇ ਉੱਥੋਂ ਸ਼ੁਰੂ ਕਰ ਲਓ ਨਵੀਂ ਚੀਜ਼ ਹੀ ਪਹਿਲਾਂ ਤਾਂ ਸਾਰਿਆਂ ਨਾਲੋਂ ਇਹ ਵੀ ਆਪਾਂ ਜੇ ਪਿਛਲੇ ਦਿਨੋਂ ਜਿਹੜੀ ਗੱਲਬਾ ਚੀਜ਼ਾਂ ਤੇ ਨਵੇਂ-ਨਵੇਂ ਜਿਹੜੇ ਚੇਂਜਸ ਆ ਰਹੇ ਨੇ ਜਾਂ ਪ੍ਰੋਡਕਟ ਆ ਰਹੇ ਲਾਈਫ ਵਾਲਾ ਜਿਹੜਾ ਪ੍ਰੋਡਕਟ ਤੇ ਉਹਨੂੰ ਜੀ ਤੇ ਉਹ ਹੈ ਵੀ ਹੁਣ ਉਹ ਪ੍ਰੋਡਕਟ ਤੋਂ ਹੀ ਹੈਰਾਨ ਹੋਵੋਗੇ ਵੀ ਮੈਨੂਅਲ ਲਾਈਫ ਬਹੁਤ ਵੱਡੀ ਕੰਪਨੀ ਉਹਨਾਂ ਕੋਲ ਬਹੁਤ ਪਹਿਲਾਂ ਵੀ ਪ੍ਰੋਡਕਟ ਸੀ ਜਾਦੇ ਕਿਉਂਕਿ ਚੇਂਜਸ ਆਉਂਦੀਆਂ ਕੁਝ ਵੀ ਉਹਨਾਂ ਦਾ ਆਹ ਪ੍ਰੋਡਕਟ 30% ਉਹਨਾਂ ਦੀ ਮਾਰਕੀਟ ਲੈ ਗਿਆ ਇੰਸ਼ੋਰੈਂਸ ਇੰਡਸਟਰੀ ਦੀ ਉਹਨਾਂ ਦਾ ਇਹ ਨਵਾਂ ਪ੍ਰੋਡਕਟ ਹਾਲ ਹੀ ਨੂੰ ਮੰਨ ਲਾ ਵੀ 6 ਮਹੀਨੇ ਵੀ ਨਹੀਂ ਹੋਏ ਜਿਹੜੇ ਗੁੱਟ ਤੇ ਘੜੀ ਬਣਾਉਂਦੇ ਆ ਬਸ ਬਸ ਵਾਹ ਉਹ ਇਹ ਹੋ ਗਿਆ ਆਪਾਂ ਵੀ ਲਈਏ ਹਾਂ ਲੱਗਦਾ ਹੈ ਕੰਮ ਹੈਰਾਨ ਹੋਵੋਗੇ ਨੌਜਵਾਨ ਤਾਂ ਗੱਲ ਬੰਦਾ ਹੈਗਾ ਹੀ ਹੈਗਾ ਜੀ ਉਹ ਹਰੇਕ ਵਾਸਤੇ ਹੁਣ ਉਹ ਹੋ ਗਿਆ ਜੀ ਕਿ ਮੈਂ ਫਿੱਟ ਰਹਿਣਾ ਹਰੇਕ ਬੰਦਾ ਫਿੱਟ ਰਹਿਣਾ ਚਾਹੁੰਦਾ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਕਿੱਦਾਂ ਅਟੈਚ ਕਰੀਏ ਫਿੱਟ ਰਹੀਏ ਫ੍ਰੀ ਤੁਹਾਨੂੰ ਇੱਕ ਆਪਣਾ ਡਾਈਟੀਸ਼ਨ ਮਿਲ ਗਿਆ ਇੱਕ ਫ੍ਰੀ ਹੈ ਤੁਹਾਨੂੰ ਇਹ ਮਿਲ ਗਿਆ ਜਿਮ ਚ ਇਹ ਐਕਸਚੇਜ ਕਿੱਦਾਂ ਕਰਨੀ ਹੈ ਤੁਹਾਨੂੰ ਇਹ ਤੁਸੀਂ ਆਪ ਦੇ ਆਪ ਨੂੰ ਅਪਡੇਟ ਰੱਖਦੇ ਨਾਲੇ ਫ੍ਰੀ ਤੁਹਾਡਾ ਮੈਡੀਕਲ ਹੁੰਦਾ ਹੈ ਸਾਹਿਬ ਸਭ ਤੋਂ ਇਹ ਹੈ ਵੀ ਉਹ ਤੁਸੀਂ ਜਦੋਂ ਜੋ ਵੱਡੀ ਚੀਜ਼ ਨਾ ਪਹਿਲੇ 10% ਡਿਸਕਾਊਂਟ ਦਿੰਦੇ ਤੁਹਾਨੂੰ ਜੇ ਦੂਜੀ ਕੰਪਨੀ 100 ਲੈਂਦੀ ਉਹ ਕਹਿੰਦੇ ਅਸੀਂ ਪਹਿਲੇ 90 ਡਾਲਰ ਲਾਨੂੰ ਲਵਾਂਗੇ ਤੇ ਹੋਰ ਘਟਾਏ ਜਾਵਾਂਗੇ ਜੇ ਤੁਹਾਡੀ ਸ਼ੇਅਰ ਵਧਿਆ ਰਹੂਗੀ ਤੇ ਉਹਨੇ ਪੈਹਲ ਕੰਮ ਚ ਆਇਆ ਹੈ ਨਾਲੇ ਕੰਪਨੀ ਇਹ ਵੀ ਜੀ ਹਰੇਡ ਕਾਡਵਾਈਜ਼ਰ ਵੀ ਨਹੀਂ ਵੇਚ ਸਕਦਾ ਜਿਹੜਾ ਪਾਰਟ ਟਾਈਮ アドਵਾਈਜ਼ਰ ਨੂੰ ਤਾਂ ਕੰਟਰੈਕਟ ਨਹੀਂ ਦਿੰਦੇ ਜੀ ਇਸ ਕਰਕੇ ਇਹ ਵੀ ਜਿਹੜਾ ਬੰਦਾ ਇਹ ਇੰਡਸਟਰੀ 'ਚ ਹੈਗਾ ਫੁੱਲ ਟਾਈਮ ਕੰਮ ਕਰਦਾ ਉਹੀ ਉਹ ਪ੍ਰੋਡਕਟ ਨਾਲੇ ਹੀ ਸਨਲਾਈਫ ਨੇ ਵੀ ਇੱਕ ਨਵਾਂ ਪ੍ਰੋਡਕਟ ਕੱਢਿਆ 8 ਸਾਲ ਦੇ ਵਿੱਚ ਤੁਸੀਂ ਆਪਣੀਆਂ ਪਾਲਸੀਆਂ ਪੇਆਫ ਕਰ ਸਕਦੇ ਕਈ ਵਾਰੀ ਹੁੰਦਾ ਪਤਾ ਕਹਿੰਦਾ ਯਾਰ ਹੁਣ ਆਹੀ ਨਵੇੜ ਹੈ ਗਈ ਆ ਕੰਮ ਨਵੇੜ ਦੀ ਸਾਲਾਂ ਦੀ ਹੁਣ ਇੱਕ ਉਹ ਨਵੀਂ ਚੀਜ਼ ਆਈ ਬਹੁਤ ਹੋਰ ਕੰਪਨੀਆਂ 1500 1000 ਤੱਕ ਵੀ ਪਰ 8 ਸਾਲ ਵਾਲੇ ਵੀ ਇੱਕ ਨਵੀਂ ਚੀਜ਼ ਆਈ ਹੈ ਉਹਨਾਂ ਨੇ ਵੀ ਹੁਣ ਇਹ ਵੀ ਇੱਕ ਰੈਵੋਲੂਸ਼ਨ ਲਿਆਨ ਦਾ ਥੋੜਾ ਜਿਹਾ ਲੋਕੀ ਚਾਹੁੰਦੇ ਛੋਟੇ ਸਮੇਂ ਸਾਰਾ ਕੁਝ ਕਿਸ ਸਾਡੇ ਉੱਤੇ ਜਾਣੀ ਮੈਨੂੰ ਬੰਦਾ ਫਿਜ਼ੀਕਲ ਐਕਟਿਵ ਨਹੀਂ ਤਾਂ ਉਹਦੀ ਪਾਲਿਸੀ ਹੈ ਜਿਹੜੀ ਅਵੋਇਡ ਹੋ ਨਹੀਂ ਜੀ ਨਹੀਂ ਵਧੀਆ ਕੁਐਸਚਨ ਤੁਸੀਂ ਐਜਾ ਮੈਂ ਮੰਗੋ ਜਿੱਦਾਂ ਪੁੱਛਦਾ ਤਾਂ ਹੀ ਆ ਵੀ ਆਪਾਂ ਉਹਨਾਂ ਦੇ ਜਿੱਦਾਂ ਕਰਤਾ ਜੀ ਉਹਨਾਂ ਨੇ ਜਿਹੜਾ ਨਾਮ ਹੈ ਉਹ ਕਹਿੰਦੇ ਵੀ ਜੇ ਬੰਦਾ ਫਿੱਟ ਰਹਿੰਦਾ ਉਹਦੀ ਕਿਸ਼ਤ ਘਟੀ ਜਾਣੀ ਹੈ ਆ ਵੀ ਉਹਨੇ ਰੱਖਿਆ ਵੀ ਉਹਨਾਂ ਨੇ ਕਿਹਾ ਵੀ ਜੇ 100 ਦਾ ਦੀ 100 ਜੇ ਨਹੀਂ ਕੁਝ ਕਰਦੇ ਲੈ ਕੇ 100ਗੇ ਤੁਸੀਂ ਤੇ ਵੱਧ ਉਸ ਹੱਬ ਨਾਲ ਗਿਆ ਬਣਾਇਆ ਗ੍ਰਾਫ ਬਣਾਇਆ ਜੇ ਨਹੀਂ ਤੁਸੀਂ ਕੁਝ ਕਰਨਾ ਤੁਹਾਡੀ ਮਰਜ਼ੀ ਹੈ ਉਹ ਹੈ ਵੀ ਉਹਨਾਂ ਨਾਲ ਤੁਹਾਨੂੰ ਐਕਟਿਵ ਰੱਖਣਾ ਚਾਹੁੰਦੇ ਉਹਦਾ ਡੈਂਟਲ ਐਗਜ਼ਾਮ ਕਰਾਉਨੇ ਹੋ ਤੁਹਾਨੂੰ ਪੁਆਇੰਟ ਦਿੰਦੇ ਨੇ ਜੇ ਤੁਸੀਂ ਆਪਦਾ ਮੈਡੀਕਲ ਐਗਜ਼ਾਮ ਕਰਾਉਂਦੇ ਤੁਹਾਨੂੰ ਪੁਆਇੰਟ ਦਿੰਦੇ ਨੇ ਉਹਨਾਂ ਨਾਲ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਪੁਆਇੰਟਸ ਮਿਲੋ ਉਹਨਾਂ ਦੇ ਨਾਲ ਜਿੰਨੇ ਜ਼ਿਆਦਾ ਪੁਆਇੰਟਸ ਨੇ ਤੁਹਾਡੇ ਉਹਨੇ ਜ਼ਿਆਦਾ ਤੁਹਾਡਾ ਫਿੱਟ ਇਹ ਵੀ ਉਹਨਾਂ ਦਾ ਪਤਾ ਹੈ ਵੀ ਜਿਹੜਾ ਬੰਦਾ ਫਿੱਟ ਰਹਿ ਰਿਹਾ ਇਹ ਸਾਡਾ ਕਲੇਮ ਨਹੀਂ ਆਉਣਾ ਪਰ ਜਿਹੜਾ ਬੰਦੇ ਨੇ ਇੰਸ਼ੂਰੈਂਸ ਲੈਣੀ ਲੈਣੀ ਉਹ ਕਹਿੰਦਾ ਵੀ ਵਾਈ ਨਾਟ ਵੀ ਸਾਨੂੰ ਡਿਸਕਾਊਂਟ ਮਿਲ ਜਾਣਾ ਹੈ ਨਾ ਅਜੀ ਸਭ ਤੋਂ ਵੱਡਾ ਲੋਕਾਂ ਦਾ ਇਸ਼ੂ ਆ ਤਕੜੇ ਰਹਿਣ ਦਾ ਅੱਜ ਸੀਵੀਸੀ ਦੀ ਬਹੁਤ ਵੱਡੀ ਰਿਪੋਰਟ ਆ ਜਿਹੜਾ weight lose ਕਰਨ ਦੇ ਆ ਚਾਹਾਂ ਨੇ ਇਹ ਆ ਉਹ ਕਹਿੰਦੇ ਸਭ ਕੋਈ ਪੈਨਿਕ ਐ ਤੁਸੀਂ ਪਤਲਾ ਜੇ ਹੋਵੋਗੇ ਤਾਂ ਉਹ ਜਾ ਕੇ ਜਿਮ ਦੇ ਵਿੱਚ ਹੋਵੋਗੇ ਤੇ ਹੈਲਦੀ ਡਾਈਟ ਖਾਤੇ ਦਵਾਈਆਂ ਨਾਲ ਪਤਲਾ ਹੋਇਆ ਤੇ ਕੰਨੀ ਹੋਣਾ ਹੋਇਓ ਵੀ ਨਾ ਜਿੱਦਣ ਦਵਾਈਆਂ ਛੱਡਤੀਆਂ ਗੁਲਗਲੇ ਫੇਰ ਫੁੱਲ ਜਾਣਾ ਬਿਲਕੁਲ ਗੱਲ ਸਹੀ ਜਿਹੜਾ ਕਹਿੰਦੇ ਵੀ ਉਹ ਸਾਜ਼-ਵਾਜ ਨਾਲ ਕੁਝ ਹੋਣਾ ਕੰਮ ਤਾਂ ਮਿਹਨਤਾਂ ਕਰਨੀ ਪੈਣੀ ਜੇ ਕੁਝ ਵੀ ਕਰਨਾ ਤਾਂ अच्छा जी दूसरा टैक्स ਜਿਹੜਾ ਫ੍ਰੀ ਸੇਵਿੰਗਸ ਅਕਾਊਂਟ ਹੈ ਤੇ ਆਰਆਰਐਸਪੀ ਹੈ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਾਰੇ ਲੋਕਾਂ ਨੂੰ ਸਮਝਾਓ ਕਿੰਨੇ ਪੈਸੇ ਰੱਖ ਸਕਦੇ ਨੇ ਤੇ ਤੇ ਵਿਆਜ ਕਿੰਨਾ ਕੁ ਮਿਲਦਾ ਤੇ ਟੈਕਸ ਉਸ ਤੇ ਲੱਗਦਾ ਜੇ ਲੱਗਦਾ ਤਾਂ ਕਿਵੇਂ ਲੱਗਦਾ ਜਾਂ ਲੱਗਦਾ ਹੀ ਨਹੀਂ ਬਿਲਕੁਲ ਜੀ ਜਿਹੜਾ ਫੈਡਰਲ ਗਵਰਨਮੈਂਟ ਦਾ ਇਹ ਪਲਾਨ ਸੀਗਾ ਜੀ 2009 ਚ ਸ਼ੁਰੂ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਹੈਗੇ ਵੀ ਕਿਉਂਕਿ ਇਹ ਇਸ ਕਰਕੇ ਉਹਨਾਂ ਨੇ ਕਾਉਂਟ ਸ਼੍ਰੀ ਕੀਤਾ ਵੀ ਸਾਈਟ ਤੇ ਆਪਦੀ ਸੇਵਿੰਗ ਸ਼ੁਰੂ ਕਰਦਿਓ ਉਹਨਾਂ ਨੇ ਇੱਕ ਥੋੜਾ ਜਿਹਾ ਇਹ ਐਡਵਾਂਟੇਜ ਕਰਤਾ ਉਹ ਕਹਿੰਦੇ ਵੀ ਜਿੰਨੀ ਵੀ ਇਸ ਚ ਗ੍ਰੋਥ ਹੋਊਗੀ ਤੁਸੀਂ ਟੈਕਸ ਨਹੀਂ ਦੇਣਾ ਜਦੋਂ ਨਿਮਿਤ ਤੁਹਾਡੀ ਇਨਕਮ ਵਿੱਚ ਹੈਗੀ ਤੁਸੀਂ ਉਸ ਤੇ ਇੱਕ ਤਾਂ ਕੈਪ ਲਾਤਾ ਤੁਸੀਂ ਪਾਉਣ ਦਾ ਮਤਲਬ ਸੀ ਫਿਰ 5000 ਕਰਤਾ ਕੋਈ ਸਾਲ ਫਿਰ ਉਹਨਾਂ ਨੇ 10000 ਕਰਤਾ ਫਿਰ ਬਾਅਦ ਚ ਫਿਰ 5500 ਕਰਤਾ ਇਸ ਕਰਕੇ ਜਿਨ੍ਹਾਂ ਨੇ ਨਹੀਂ ਪੈਸੇ ਪਾਇਓ ਉਸ ਟੀਐਫਐਸ ਚ ਪੈਸੇ ਪਾ ਸਕਦੇ ਨੇ ਕਿਉਂਕਿ ਉਹਦੇ ਚ ਇਹ ਵੀ ਜਦੋਂ ਤੁਸੀਂ ਕਢਾ ਵੀ ਸਕਦੇ ਆ ਪੈਸੇ ਪਾ ਵੀ ਸਕਦੇ ਆ ਫਲੈਕਸੀਬਿਲਟੀ ਵੀ ਹੈਗੀ ਜਿੱਥੇ ਤੁਸੀਂ ਅਮਾਉਂਟ ਆਪ ਦੀ ਇਨਵੈਸਟ ਕੀਤੀ ਹੋਈ ਹੈ ਇੱਕ ਤਾਂ ਤੁਹਾਡਾ ਡੀਐਫਐਸ ਅਕਾਊਂਟ ਹੋ ਗੁੰਦਾ ਚਾਹ ਵੀ ਆਪਾਂ ਨੂੰ ਐਕਸੈਸ ਸਕਦੇ ਮਨੀ ਰੱਖ ਵੀ ਸਕਦੇ ਕਿਉਂਕਿ ਵੀ ਲਾਇਬਿਲਟੀ ਹੁੰਦੇ ਵੀ ਕਿੰਨੀ ਤੁਸੀਂ ਕਢਾ ਸਕਦੇ ਹੋ ਕਿੰਨੀ ਤੁਸੀਂ ਪਾ ਸਕਦੇ ਹੋ ਪਰ ਜੇ ਕਿਸੇ ਨੇ ਇਨਵੈਸਟ ਨਹੀਂ ਕੀਤਾ ਡੀਐਫਐਸ ਦੇ ਜਾਬਦਾ ਅਕਾਊਂਟ ਚੋਂ ਮਨੀ ਵਾ ਸਕਦੇ ਨੇ ਦੂਜੇ ਪਾਸੇ ਜਿਹੜੀ RRSP ਹੈਗੀ ਉਹਦੇ ਚ ਇਹ ਹੈ ਵੀ ਰਜਿਸਟਰਡ ਸੇਵਿੰਗ ਪਲਾਨ ਆ ਉਹਦੇ ਚ ਇਹ ਵੀ ਤੁਹਾਨੂੰ ਇਹ ਫਾਇਦਾ ਹੈ ਵੀ ਜੇ ਜਿੰਨੀ ਤੁਹਾਡੀ ਦੀ ਇਨਕਮ ਹੈ ਕਿਸੇ ਨੇ 50000 ਦੀ RRSP ਲਈ ਹੈ ਤੁਸੀਂ ਹੁਣ 45000 ਤੇ ਤੁਹਾਡਾ ਟੈਕਸ ਲੱਗਣਾ ਕਿਉਂਕਿ ਤੁਹਾਨੂੰ ਉਹ ਡਿਡਕਸ਼ਨ ਮਿਲ ਗਈ ਉਹਦੇ ਨਾਲ ਇਹ ਹੈ ਵੀ ਤੁਸੀਂ ਹੁਣ ਉਹ ਟੈਕਸ ਫਰੀ ਗਰੋ ਹੋ ਜਾਂਦਾ ਪਰ ਜਦੋਂ ਤੁਸੀਂ ਕਢਾਉਨੇ ਨੇ ਉਹ ਕਿਉਂਕਿ ਹੁਣ ਇਹ ਹੈ ਵੀ ਜਦ ਤੁਸੀਂ ਅੱਜ ਤੱਕ ਤੁਸੀਂ ਛੇਤ ਮੰਦੇ ਹੋ ਤੁਸੀਂ ਹੁਣ ਤੁਹਾਡਾ ਲਾਈਫ ਸਟਾਈਲ ਦਾ ਚੇਂਜ ਨਹੀਂ ਹੋਣਾ ਜੇ ਤੁਸੀਂ ਰਿਟਾਇਰ ਹੋਵੋਗੇ ਜਦੋਂ ਉਦੋਂ ਫਿਰ ਤੁਹਾਨੂੰ ਇਨਕਮ ਚਾਹੀਦੀ ਹੈ ਜੇ ਆਪਾਂ ਦੂਜੀ ਆਪਣੀ ਇਨਕਮ ਦੀ ਗੱਲ ਕਰਦੇ ਆਂ ਤੇ ਆਪਾਂ ਆਪਣੇ ਜਿਹੜੇ ਆਪਣਾ ਕੇਂਦਰਾ ਪੈਨਸ਼ਨ ਪਲਾਨ ਹੈ ਜਾਂ 올ਡ ਏਜ ਸਿਕਿਉਰਟੀ ਹੈ ਆਪਾਂ ਰਲਾ ਕੇ 14500 ਬਣਦੀ ਬਾਈ ਸਾਰੇ ਸਾਹੇ ਪਰ ਜੇ ਹੁਣ ਉਹ ਦੇਖਦੇ ਆਂ ਜਦੋਂ ਤੁਸੀਂ ਰਿਟਾਇਰ ਹੋਣਾ 14000 ਨਾਲ ਕਿਸੇ ਦਾ ਕਿੰਨਾ ਕੰਮ ਚੱਲਣਾ ਇਸ ਕਰਕੇ ਵੀ ਜਦੋਂ ਯਾਰ ਅਰਸਟਰੀ ਚ ਪੈਸੇ ਪਾਉਣੇ ਹੋ ਉਹ ਤੁਹਾਡੀ ਨਾਲ ਉਦੋਂ ਫਿਰ ਉਸ ਤੇ ਫਿਰ ਟੈਕਸ ਦੇਣਾ ਸਾਰੀ ਅਮਾਉਂਟ ਤੇ ਜਿੰਨੇ ਜੇ ਨਿਕੜਾਈ ਜਾਵੋਗੇ ਪਰ ਉਹ ਤੁਹਾਡੀ ਇਨਕਮ ਵੀ ਘਟ ਜਾਣੀ ਹੈ ਪਰ ਇਹ ਆ ਵੀ ਤੁਸੀਂ ਲੌਂਗ ਟਰਮ ਸੇਵ ਕਰਦੇ ਹੋ ਅਰਸਟਰੀ 'ਚ ਪਰ ਇਹ ਆ ਵੀ ਉਹ ਤੁਸੀਂ ਆਪ ਹਿਸਾਬ ਨਾਲ ਪਲਾਨ ਚੂਜ਼ ਕਰ ਸਕਦੇ ਹੋ ਜਿਕਰਾਂ ਦਾ ਪਲਾਨ ਚੂਜ਼ ਕਰਨਾ ਨਾਲਿਆਂ ਦੇ ਨਾਲ-ਨਾਲ ਮੈਂ ਵੀ ਕਹਿ ਦਣਾ ਇੰਸ਼ੋਰੈਂਸ ਕੰਪਨੀਆਂ ਤੋਂ ਹੀ आरएसपी ਲੈਣ ਦਾ ਦੂਜੇ ادارےਾਂ ਤੋਂ ਕੀ ਫਾਇਦਾ ਨੁਕਸਾਨ ਹੈਗਾ ਜੀ ਪਰ ਇਹ ਸਭ ਨਾਲ ਪਹਿਲਾਂ ਤਾਂ ਇਹ ਵੀ ਜਿਹੜੇ ਵੀ ਹੈਗੇ ਆਰਐਸਪੀ ਜੇ ਤੁਸੀਂ ਕਿਤੇ ਵੀ ਇਨਵੈਸਟ ਕਰਦੇ ਹੋ ਇਹਦੀ ਗਾਰੰਟੀ ਹੈਗੀ ਮੈਚਿਓਰਿਟੀ ਡੇਟ ਦੀ ਜੇ ਤੁਸੀਂ ਡਸਨ ਮੈਟਰ ਨਾਲੇ ਡੈਥ ਹੋ ਜਾਂਦੀ ਹੈ ਉਹ ਵੀ 100% ਮਨੀ ਜਿਹੜੀ ਪਾਈ ਹੋਈ ਦੀ ਗਾਰੰਟੀ ਹੈਗੀ ਇਦਾਂ ਦੇ ਨਾਲੇ ਵੀ ਹਰੇਕ ਸਾਲ ਇਦਾਂ ਦੀ ਕੰਪਨੀ ਹੈਗੀਆਂ 5% ਕੁ ਮਾਰਕੀਟ ਦੇ ਭਾਵੇਂ 0 ਡਾਲਰ ਆ ਗੋਨਾ ਹੈ 5% ਹਰੇਕ ਸਾਲ ਤੁਹਾਨੂੰ ਪਾਉਣਾ ਹੀ ਪਾਉਣਾ ਆ ਇਦਾਂ ਦੇ ਪਲਾਨ ਜਦੋਂ ਤੁਸੀਂ ਰਿਟਾਇਰ ਹੋਣਾ ਹੈ ਵੀ ਤੁਹਾਨੂੰ ਪਤਾ ਹੈ 5% ਤੁਹਾਡੀ ਮਨੀ ਗਰੋ ਹੋਈ ਜਾਂਦੀ ਹੈ ਜੇ ਆਪਾਂ ਕਿਸੇ ਹੋਰ ادارے ਚ ਜਾਂ ਬੈਂਕ ਜਾਂ ਕਿਤੇ ਹੋਰ ਆ ਉੱਥੇ ਜਦੋਂ ਜਾਂਦੇ ਕੋਈ ਨਵਾਂ ਬੰਦਾ ਆਇਆ ਨਾ ਪਤਾ ਨਹੀਂ ਤੁਹਾਡੀਆਂ ਜ਼ਰੂਰਤਾਂ ਬਾਰੇ ਤੁਹਾਡਾ ਲਾਈਫ ਸਟਾਈਲ ਕੀ ਹੈ ਕਿਉਂਕਿ ਬੰਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਬਣਿਆ ਹੁੰਦਾ ਜੇ ਮਨੀ ਪਈ ਤਾਂ ਉਦਾਂ ਹੀ ਪਈ ਰਹ ਜਾਂਦੀ ਐ ਕਿਉਂਕਿ ਗਰੋਥ ਨਹੀਂ ਹੈਗੇ ਇਸ ਕਰਕੇ ਜਾਂ ਇਹ ਵੀ ਨਹੀਂ ਕਹਿੰਦਾ ਮੈਂ ਸਾਰੇ ਨਹੀਂ ਹੈਗੇ ਉੱਥੇ ਵਧੀਆ ਐਡਵਾਈਜ਼ਰ ਵੀ ਹੈਗੇ ਨੇ ਕਿਉਂਕਿ ਹਰੇਕ ਬੰਦਾ ਵਿਆਪ ਦੇ ਲੋਕ ਪ੍ਰੋਫੈਸ਼ਨਲ ਕੰਮ ਕਰਦਾ ਕਿਉਂਕਿ ਹੁਣ ਵੀ ਹਰੇਕ ਬੰਦੇ ਨੂੰ ਲਾਲਚ ਹੁੰਦਾ ਆ ਕਲਾਇੰਟ ਨੂੰ ਖੁਸ਼ ਰੱਖੇ ਸਾਨੂੰ ਹੋਰ ਬੰਦੇ ਰੱਲ ਕਰੂ ਇਸ ਕਰਕੇ ਜੋ ਵਧੀਆ ਕੰਮ ਕਰਦੇ ਹੋ ਤੇ ਤੁਹਾਨੂੰ ਹਮੇਸ਼ਾ ਇਹ ਬੰਦੇ ਆਪਣੇ ਆਪ ਹੀ ਕਹਿੰਦੇ ਵੀ ਫਲਾਣੇ ਬੰਦੇ ਤੋਂ ਕੰਮ ਕਰੋ ਇਸ ਕਰਕੇ ਵੀ ਜਿੱਥੇ ਵੀ ਤੁਹਾਡੀ ਮਨੀ ਪਈ ਐ ਪਹਿਲਾਂ ਤਾਂ ਦੇਖੋ ਕੋਈ ਗਰੋਥ ਆ ਰਹੀ ਐ ਕੁਝ ਹੋ ਰਿਹਾ ਨਹੀਂ ਹੋ ਰਿਹਾ ਉਦਾਂ ਹੀ ਮਨੀ ਪਈ ਹੈ ਜੇ 1.5 ਲੱਖ ਪਾਇਆ ਇਹ 2 ਸਾਲਾਂ ਬਾਅਦ ਉਦਾਂ ਹੀ ਆ 1.6 ਲੱਖ 60 ਹਜ਼ਾਰ ਹੋ ਗਏ ਹੁੰਦਾ ਕੋਈ ਫਾਇਦਾ ਨਹੀਂ ਇਸ ਕਰਕੇ ਉਹ ਤੁਸੀਂ ਉਸ ਚੀਜ਼ ਬਾਰੇ ਵਿਚਾਰ ਕਰੋ ਜੀ ਕੋਈ ਕੁਐਸਚਨ ਬ੍ਰੇਕ ਤੋਂ ਪਹਿਲਾਂ ਆਰਆਰਐਸਪੀ ਨਾਲੋਂ ਜਿਹੜਾ ਤੁਸੀਂ ਕਹਿੰਦੇ ਹੋ ਵੀ ਪਰਮਨੈਂਟ ਇੰਸ਼ੋਰੈਂਸ ਕਰਾ ਲਓ ਕੁਝ ਪੈਸੇ ਦੇ ਕੇ ਕੁਝ ਸਾਲ ਫਿਰ ਤੁਸੀਂ ਕਢਾ ਸਕਦੇ ਹੋ ਪੈਸੇ ਲੈ ਸਕਦੇ ਹੋ ਫਿਰ ਉਹ ਠੀਕ ਹਾਂ ਜੀ ਦੇਖੋ ਜੀ ਹਰੇਕ ਵਹੀਕਲ ਹੈਗਾ ਜੀ ਹਰੇਕ ਵਹੀਕਲ ਦੀਆਂ ਜ਼ਰੂਰਤਾਂ ਨੇ ਤੁਸੀਂ ਬਿਲਕੁਲ ਉਹ ਵਹੀਕਲ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਉਹਦੇ ਚ ਵੀ ਆਪਸ਼ਨਸ ਨੇ ਜਿਹੜੀਆਂ ਹੋਲ ਲਾਈਫ ਪਾਲਿਸੀਜ਼ ਹੈਗੀਆਂ ਨੇ ਡਿਵੀਡੈਂਡ ਤੇ ਉਹਨਾਂ ਦਾ ਇਹ ਹੈ ਵੀ ਜੇ ਤੁਸੀਂ ਮਨੀ ਪਾ ਰਹੇ ਹੋ ਤੁਹਾਡੀ ਨਾਲ ਇੰਸ਼ੋਰੈਂਸ ਬੇਸਿਕਲੀ ਕਿਉਂਕਿ ਉਹ ਹੀ TFS ਵਾਂਗੂ ਤੁਸੀਂ ਮਨੀ ਪਾ ਰਹੇ ਹੋ ਤੁਹਾਡੀ ਮਨੀ ਜਿਹੜੀ ਗਰੋ ਹੋ ਰਹੀ ਹੈ ਨਾਲ ਤੁਹਾਨੂੰ ਇੰਸ਼ੋਰੈਂਸ ਮਿਲ ਰਹੀ ਹੈ ਬਿਲਕੁਲ TFS ਸੇਮ ਚੀਜ਼ ਪਰ ਉਹਦੇ ਵਿੱਚ ਬਿਲਕੁਲ ਤੁਹਾਡਾ ਪਲਾਨ ਪਰ ਉਸ ਹਿਸਾਬ ਨਾਲ ਹੀ ਹੋਵੇ ਤੁਹਾਡੇ ਵਾਸਤੇ ਟੁਕੜਾ ਹੋਵੇ ਤੁਹਾਨੂੰ ਉਸ ਹਿਸਾਬ ਨਾਲ ਤਿਆਰ ਹੋਵੇ ਜੇ ਤੁਹਾਨੂੰ ਅਗਲੇ ਸਾਲ ਮਨੀ ਲੋਡ ਪੈ ਜਾਵੇ ਤਾਂ ਮਨੀ ਅਗਲੇ ਸਾਲ ਵੀ ਹੋਵੇ ਉਹਦੇ ਵਿੱਚ ਇਹ ਨਾ ਹੋਵੇ 5 6 7 8 ਸਾਲ ਉਹਦੇ ਵਿੱਚ ਅਕਾਊਂਟ ਜੇ ਕੋਈ ਪੈਸੇ ਨਾ ਹੋਣ ਤੁਸੀਂ ਕੈਸ਼ ਕ੍ਰਾਂਚ ਇਫਾਸਿਓਨ ਬਿਲਕੁਲ ਉਹ ਵੀ ਹੋ ਸਕਦਾ ਹੈ ਸੇ ਆਪਸ਼ਨ ਸਾਰੀਆਂ ਨੇ ਜੀ ਹੁਣ ਇਹੀ ਕਹਿੰਦੇ ਜਦੋਂ ਬਹਿ ਕੇ ਗੱਲ ਕਰਦੇ ਆ ਬਿਲਕੁਲ ਬਹੁਤ ਵਧੀਆ ਕੁਐਸਚਨ ਹੈ ਵੀ ਜੀ ਹਾਂਜੀ ਉਹ ਵੀ ਆਪਸ਼ਨ ਹੈਗੀ ਹੋਲ ਲਾਈਫ ਪਾਲਿਸੀਆਂ ਜਿਹੜੀਆਂ ਹੈਗੀਆਂ ਡਿਵੀਡੈਂਡ ਪੇਇੰਗ ਹੁਣ ਡਿਵੀਡੈਂਡ ਪੇਇੰਗ ਤੇ ਜਿਹੜਾ ਕੈਸ਼ ਵੈਲਿਊ ਉਸ ਹਿਸਾਬ ਨਾਲ ਸੈੱਟ ਕਰ ਸਕਦੇ ਜਿੱਦਾਂ ਦੀਆਂ ਜ਼ਰੂਰਤਾਂ ਨੇ ਐਗਜ਼ਾਮਪਲ ਹੈ ਜੇ ਮੈਂ 12000 ਪਾਉਣਾ ਤਾਂ ਮੈਨੂੰ ਪਹਿਲੇ ਸਾਲ ਜੇ ਮੈਨੂੰ ਲੋਡ ਪੈ ਗਈ 6-7000 ਦੀ ਮੇਰਾ ਪੈਸਾ ਵਿੱਚ ਪਿਆ ਆ ਮੈਨੂੰ ਇਹ ਨਹੀਂ ਵੀ ਮੇਰਾ 12000 ਹੀ ਜਾਂਦਾ ਲੱਗਿਆ ਮੈਂ ਉਹ ਬੀਡੀ ਇੰਸ਼ੋਰੈਂਸ ਨਾਲ ਫ੍ਰੀ ਹੈਗੀ ਇਦਾਂ ਦੇ ਆਪਸ਼ਨਸ ਵੀ ਹੈਗੀਆਂ ਇਹ 5 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਸਾਰਾ ਲੋਅਰ ਮੀਨਲੈਂਡ ਮੈਟਰੋ ਵੈਂਕੂਵਰ ਜਿਹੜਾ ਬਰਫ਼ ਦੇ ਵਿੱਚ ਕੱਜਿਆ ਰਿਹਾ ਚਿੱਟਾ ਚਿੱਟਾ ਰਿਹਾ ਤੇ 25 ਦਿਨ ਸੁਖ ਸ਼ਾਂਤੀ ਰਹੀ ਹੈ ਤੇ ਅੱਜ ਫੇਰ ਬਰਫ਼ ਪੈਣ ਲੱਗੀ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਗੱਲ ਕਰਦੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਲੋਕ ਡਿੱਗ ਰਹੇ ਨੇ ਤਿਲਕ ਰਹੇ ਨੇ ਸੱਟਾਂ ਲੱਗ ਰਹੀਆਂ ਕਿਵੇਂ ਸਿਕਿਓਰ ਰੱਖਣਾ ਗੋਡੇ ਦੀ ਅੱਖ ਜੇ ਟੁੱਟ ਗਈ ਸੀਪੀਐਫ ਪਹਿਣਾ ਪਹਿਣਾ ਤੇ ਉਧਰੋਂ ਦਿਹਾੜੀ ਟੁੱਟ ਗਈ ਤੇ ਮੌਰਗੇਸਤਾਨੀ ਬੈਂਕ ਨੇ ਕਹਿਣੀ ਤੇਰੇ ਸੱਟ ਲੱਗ ਗਈ ਉਹਦਾ ਹੀ ਲਾਤੀ ਆ ਹੁਣੇ ਦੱਸਣਗੇ ਪਰਮਿੰਦਰ ਕੇ ਠੰਡ 11:45 ਹੋਏ ਜੀ ਪਰਮਿੰਦਰ ਸਿੰਘ ਠੰਡ ਮੇਰੇ ਨਾਲ ਨੇ 6048287213 thankyouinsurance.co ਅੱਛਾ ਜੀ ਡਿਸੇਬਿਲਟੀ ਇੰਸ਼ੋਰੈਂਸ ਵਾਲੇ ਦੱਸੋ ਜਬ ਵੈਦਰ ਆ ਤਾਂ ਆਪਾਂ ਕਦੇ ਵੀ ਨਹੀਂ ਵੇਖਿਆ ਮੈਂ 20 ਸਾਲ ਹੋ ਗਏ ਇਹਨੂੰ ਇੱਥੇ ਮੈਂ ਨਹੀਂ ਵੇਖਿਆ ਤੁਸੀਂ ਵੀ ਨਹੀਂ ਵੇਖਿਆ ਇਸ ਤਰ੍ਹਾਂ ਤਾਂ برف ਪੈਂਦੀ ਵੀ ਵੇਖੀ ਹੂੰ ਤਾਂ ਆਨੰਦ ਆ ਦੇਖਣ ਨੂੰ ਨਜ਼ਾਰਾ ਪੂਰਾ ਵਧੀਆ ਸੋਹਣਾ ਲੱਗਦਾ ਤੇ ਜਿਹਦੇ ਬਾਰੇ ਦੱਸੋ ਵੀ ਸੇਫ ਕਿਵੇਂ ਰਹਿ ਸਕਦੇ ਆ ਦੇਖੋ ਜੀ ਪਹਿਲਾਂ ਤਾਂ ਆਪਾਂ ਹਮੇਸ਼ਾ ਆ ਵੀ ਹਰੀ ਲੱਗੇ ਜ਼ਰੂਰਤ ਦੇ ਆਧਾਰ ਨਾਲ ਚੀਜ਼ ਲਾਓ ਪਰ ਇਹ ਵੀ ਜਦੋਂ ਆਪਾਂ ਰਿਸਕ ਦੇਖਦੇ ਆ ਆਪਾਂ ਬਿਸਕ ਜ਼ਰੂਰ ਕਵਰ ਕਰਨਾ ਚਾਹੀਦੇ ਨੇ ਵੀ ਜਦੋਂ ਵੀ ਆਪਾਂ ਕੋਈ ਚੀਜ਼ ਲੈਣੀ ਹੈ ਪਹਿਲਾਂ ਤਾਂ ਆਪਦੇ ਰਿਸਕ ਕਵਰ ਕਰੋ ਕਿਉਂਕਿ ਆਪਾਂ ਜੇ ਘਰ ਲੈਣਾ ਤਾਂ ਸੋਚਦੇ ਆ ਘਰ ਦੇ ਇੰਸ਼ੋਰੈਂਸ ਹੋਵੇ ਕਾਰ ਲੈਣਾ ਕਾਰ ਦੇ ਇੰਸ਼ੋਰੈਂਸ ਉਹ ਬੰਦਾ ਆਪਦੇ ਬਾਰੇ ਭੁੱਲ ਜਾਂਦਾ ਵੀ ਮੇਰੇ ਵੀ ਰਿਸਕ ਨੇ ਕਿਉਂਕਿ ਮੈਂ ਹੀ ਜੇ ਮੈਂ ਹੀ ਆਪਦੇ ਆਪ ਨੂੰ ਪ੍ਰੋਟੈਕਟ ਨਹੀਂ ਕੋਈ ਚੀਜ਼ ਪ੍ਰੋਟੈਕਟ ਨਹੀਂ ਆਏਗੀ ਉਹ ਚੀਜ਼ ਤੁਸੀਂ ਆਪਦੇ ਪ੍ਰੋਟੈਕਟ ਨੂੰ ਕਰਨਾ ਆਪਦਾ ਜਿਹੜਾ ਸਿਹਤ ਸੱਟ ਪੇਟ ਲੱਗ ਜਾਂਦੀ ਹੈ ਉਹ ਡਿਸੇਬਿਲਟੀ ਨੇ ਕਵਰ ਕਰਨੀ ਜਿੱਥੇ ਮਰਜੀ ਆ ਤੁਸੀਂ ਭਾਵੇਂ ਕਿਉਂਕਿ ਸਭ ਤੋਂ ਵਧੀਆ ਚੀਜ਼ ਹੈ ਡਿਸੇਬਿਲਟੀ ਜੋ ਵੀ ਘੰਟੇ ਕਵਰੇਜ ਹੈ ਬਈ ਡਿਸੇਬਿਲਟੀ ਦੀ ਜਦਾ ਮੈਟਰ ਤੁਸੀਂ ਹੁਣ ਇਹ ਵੀ ਭਾਵੇਂ 스ਨੋ ਰਿਮੂਵ ਕਰਦੇ ਹੋ ਗਟਰ ਕਲੀਨ ਕਰਦੇ ਹੋ ਆਪਦੇ ਫਾਰਮ ਚੋਂ ਕਿਤੇ ਵੀ ਲਈ ਹੋਈ ਹੁਣ ਨਾਲੇ ਜੇ ਤੁਹਾਡੀਆਂ ਕਿਸ਼ਤਾਂ ਨੇ ਤੁਸੀਂ ਆਪਦੇ ਹੁਣ ਟਰੱਕ ਨੇ ਟਰੱਕ ਬਹੁਤ ਮਹਿੰਗੇ 2.5 3-3 ਲੱਖ ਦੇ ਟਰੱਕ ਨੇ ਜੀ ਹੁਣ ਪੀਟਰਬਿਲਡ ਨਵੇਂ ਜਿਹੇ ਟੌਪ ਦੇ ਟਰੱਕ ਆਉਂਦੇ ਨੇ ਹੁਣ ਉਹਨਾਂ ਦੀਆਂ ਕਿਸ਼ਤਾਂ ਹੋ ਤੁਸੀਂ ਜਿਆ ਮੈਂ ਤੁਸੀਂ ਆਪਦੀਆਂ ਕਵਰ ਕਰ ਸਕਦੇ ਹੋ ਆਪਦੇ ਜੇ ਸੱਟ ਲੱਗ ਜਾਵੇ ਤਾਂ ਤੁਹਾਡਾ ਪੀਚ ਇੱਕ ਹੈ ਪਲੱਸ ਤੁਹਾਡੇ ਜਿਹੜੀਆਂ ਕਿਸ਼ਤਾਂ ਜਿਹਨੀਆਂ ਵੀ ਹੈਗੀਆਂ ਜਾਂ ਮੋੜ ਗਏ ਤੇ ਕਿਸ਼ਤੇ ਆ ਜਾਂ ਤੁਹਾਡੀ ਕਾਰ ਦੀ ਕਿਸ਼ਤੇ ਸਾਰਾ ਕੁਝ ਤੁਸੀਂ ਆਪ ਪ੍ਰੋਟੈਕਟ ਕਰ ਸਕਦੇ ਹੋ ਪਰ ਉਹ ਵੀ ਰਿਸਕ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਜਿੰਨੇ ਤੁਹਾਡੇ ਰਿਸਕ ਹੈਗੇ ਨੇ ਤੁਸੀਂ ਉਸੇ ਹਿਸਾਬ ਨਾਲ ਹੀ ਆਪ ਰਿਸਕ ਕਵਰ ਕਰੋ ਜਿੰਨੀਆਂ ਤੁਹਾਨੂੰ ਲੋੜ ਹੈ ਨਹੀਂ ਵੀ ਹਰੇਕ ਚੀਜ਼ ਵਧੀਆ ਲੱਗਦੀ ਬੰਦਾ ਕਹਿੰਦਾ ਜੀ ਲਾਈਫ ਇੰਸ਼ੋਰੈਂਸ ਵੀ ਲੈਣੀ ਹੈ ਜੀ ਕ੍ਰਿਟੀਕਲ ਵੀ ਲੈਣੀ ਸੋਚਣਾ ਘੰਟਾ ਲੱਗੇ 2 ਘੰਟੇ ਲੱਗੇ ਫਿਰ ਆਪਾਂ ਚੀਜ਼ ਉਹੀ ਪਿਕ ਕਰਨੀ ਜਿਹੜੀ ਸਾਨੂੰ ਟੁਕਵੀਂ ਆ ਉਸ ਹਿਸਾਬ ਨਾਲ ਕੰਮ ਦੀ ਹੋਣਾ ਅੱਛਾ ਜੀ ਸੁਪਰਵਾਈਜ਼ਰ ਦਾ ਇੰਸ਼ੋਰੈਂਸ ਫੇਰ ਆਸਮੇ ਬਹੁਤ ਲੋਕ ਜਾ ਰਹੇ ਨੇ ਲੈ ਕੇ ਗਏ ਹੋਏ ਨੇ ਵੀਜ਼ਾ ਲੈ ਗਏ ਮੈਡੀਕਲ ਲੈ ਗਏ ਹੁਣ ਕੋਈ ਜਾ ਰਹਿ ਨੇ ਉਹ ਮਾਪਿਆਂ ਦੇ ਨਾਲ ਆਉਣਾ ਉਹਦੀ ਵੀ ਟਿਪ ਜਿਹੜੀ ਲੋਕਾਂ ਨੂੰ ਦਵੋ ਕਿ ਕਿਹੜੀ ਵਧੀਆ ਜਿਹੜਾ ਕਿਹੜਾ ਵੀਜ਼ਾ ਸੌਰੀ ਕਿਹੜਾ ਮੈਡੀਕਲ ਇੰਸ਼ੋਰੈਂਸ ਵਧੀਆ ਤੇ ਉਹਦੀਆਂ ਟਿਪਸ ਕੀ ਨੇ ਹਾਂਜੀ ਦੇਖੋ ਜੀ ਪਹਿਲਾਂ ਤਾਂ ਕੋਈ ਵੀ ਟਰੈਵਲ ਇੰਸ਼ੋਰੈਂਸ ਕਿਤੇ ਵੀ ਆਪਾਂ ਟਰੈਵਲ ਜਾ ਰਹੇ ਹਾਂ ਅੱਲਾਹ ਤਾਂ ਮੇਕ ਸ਼ੋਰ ਕਰੀਏ ਵੀ ਹੁਣ ਤਾਂ ਹੋਣ ਤਾਂ ਹੋਰ ਵੀ ਤਰ੍ਹਾਂ ਕੇ ਆਪਾਂ ਤਾਂ ਕਹਿੰਨੇ ਬਾਰਡਰ ਤੋਂ ਪਾਰ ਜਾਣਾ ਬੰਦਾ ਪਹਿਲਾਂ ਦੇਖੋ ਤੁਹਾਡੀ ਨੈਸ਼ਨੈਟੀ ਕੀ ਹੈ ਚਲੋ ਦੂਜੀ ਗੱਲ ਦੇਖਦੇ ਆ ਵੀ ਜਦੋਂ ਟਰੈਵਲ ਕਰਨਾ ਪਹਿਲੀ ਗੱਲ ਤਾਂ ਉੱਥੇ ਹੋ ਸਕਦਾ ਵੀ ਆਪਾਂ ਨੂੰ ਕੈਸ਼ ਪੈਸੇ ਯੂਜ਼ ਕਰਨੇ ਪੈਣ ਕਿਉਂਕਿ ਡਾਇਰੈਕਟ ਬਿਲਿੰਗ ਦੀ ਆਪਸ਼ਨ ਨਾ ਹੋਵੇ ਤੁਸੀਂ ਇਸੇ ਕਿਤੇ ਵੀ ਜਾ ਰਹੇ ਹੋ ਜੇ ਆਪਾਂ ਪੰਜਾਬ ਦੇ ਕਿਤੇ ਕਿਸੇ ਵੀ ਹਿੱਸੇ ਜਾ ਰਹੇ ਹਾਂ ਕਿਤੇ ਡਾਇਰੈਕਟ ਬਿਲਿੰਗ ਨਾ ਹੋਵੇ ਤੁਸੀਂ ਕੰਪਨੀ ਤੋਂ ਪੁੱਛ ਕੇ ਜਾਓ ਕਿ ਮੈਂ ਉਸ ਇਲਾਕੇ ਜਾ ਰਿਹਾ ਜੀ ਉੱਥੇ ਡਾਇਰੈਕਟ ਬਿਲਿੰਗ ਕਿਹੜਾ ਹਸਪਤਾਲ ਹੈਗਾ ਜੇ ਮੈਨੂੰ ਲੋਡ ਪੈ ਗਈ ਤਾਂ ਉੱਥੇ ਜਾਵਾਂ ਇਹ ਨਾ ਹੋਵੇ ਆਪਾਂ ਕਿਤੇ ਹੋਰ ਹਸਪਤਾਲ ਜਾਈਏ ਕਿ ਉੱਥੇ ਗਈਏ ਸਾਨੂੰ ਪੈਸੇ ਕਹਿੰਦੇ ਵੀ ਸਾਨੂੰ ਪੈਸੇ ਦੇਣੇ ਪਏ ਉਹ ਵੀ ਇਸ ਚੀਜ਼ ਦਾ ਹੋ ਸਕਦਾ ਪਹਿਲਾਂ ਪੁੱਛ ਕੇ ਜਾਓ ਫਿਰ ਉਹਨਾਂ ਦਾ ਇਹ ਵੀ ਹੋ ਸਕਦਾ ਆਪਸ਼ਨ ਕਲੇਮ ਆ ਗਿਆ ਉਹਨਾਂ ਨੂੰ ਰਿਪੋਰਟ ਕਰੋ ਵੀ ਸਾਨੂੰ ਕਲੇਮ ਆ ਗਿਆ ਜੇ ਤੈਅ ਵਜੇ ਕੈਨੇਡੀਅਨ ਆਪਾਂ ਕਿਤੇ ਹੋਰ ਟ੍ਰੈਵਲ ਕਰ ਰਹੇ ਹੁਣ ਸੇਮ ਨੋਟ ਤੇ ਜੇ ਉੱਥੋਂ ਆਪਾਂ ਸੁਪਰ ਇੰਸ਼ੋਰੈਂਸ ਲੈਣੀ ਹੈ ਬਿਲਕੁਲ ਜੀ ਹੁਣ ਇੱਕ ਕੰਪਨੀ 1200 ਡਾਲਰ ਐਗਜ਼ਾਮਪਲ ਹੁਣ ਦੂਜੀ ਕੰਪਨੀਆ ਹੋਰ ਜੇ ਟਾਪ ਦੇ ਉਹ 2000 ਡਾਲਰ ਚ ਕੰਮ ਕਰਦੇ ਹੁਣ 800 900 ਡਾਲਰ ਦਾ ਬਾਈ ਕਰਕੇ ਕੰਟਰੈਕਟ ਵਿੱਚੇ ਸਰਨਾ ਪਹਿਲਾਂ ਦਵਾਈਆਂ ਖਾਂਦੇ ਨੇ ਇੰਨਾ ਚ ਰਹਿਣਾ ਉਹੋ ਚੀਜ਼ ਕਰੋ ਵੀ ਜਿਹੜੀ ਚੀਜ਼ ਸਾਨੂੰ ਇੱਥੇ ਆ ਕੇ ਜਰੂਰਤ ਪੈਣੀ ਆ ਹੁਣ 800 900 ਡਾਲਰ ਦੀ ਕੋਈ ਗੱਲ ਨਹੀਂ ਜਦੋਂ 2 ਲੱਖ ਡਾਲਰ ਦਾ ਬਿੱਲ ਆ ਜਾਂਦਾ ਉਦੋਂ ਪ੍ਰੋਬਲਮ ਆਉਂਦੀ ਉਹ ਤੇ ਪਰਿਵਾਰਾਂ ਦੇ ਕੀ ਕੁਝ ਆ ਇਸ ਕਰਕੇ ਵੀ ਆਤਮਾ ਉਹ ਉਹਨਾਂ ਦੇਖੀਏ ਵੀ ਸਸਤੀ ਕਿੱਥੇ ਹੈ ਦੇਖੀਏ ਵੀ ਸਸਤੀ ਇਹ ਨਹੀਂ ਸਸਤੀ ਮਾੜੀ ਮਾੜੀ ਸਸਤੀ ਸਸਤੀ ਵਿੱਚ ਵੀ ਆਪਣੇ ਵਾਸਤੇ ਆਪਸ਼ਨ ਟੁਕਮੀ ਹੈ ਤੇ ਸਿਹਤ ਦੇ ਸਹੀ ਹੈ ਪਤਾ ਵੀ ਉਹਨਾਂ ਨੇ ਯੂ ਨੋ ਪੂਰਾ ਸਾਲ ਰਹਿਣਾ ਹਿਸਾਬ ਨਾਲ ਉਹ ਵੀ ਟੁਕਮੀ ਹੋ ਸਕਦੀ ਹੈ ਜਿ ਉਹਨਾਂ ਨੇ ਆਪਸ਼ਨ ਤੁਸੀਂ ਦੇਖੋ ਹਰ ਚੀਜ਼ ਲਾਈਨ ਬਾਈ ਲਾਈਨ ਦੇਖੋ ਉਹ ਤੁਸੀਂ ਐਡਵਾਈਜ਼ਰ ਨਾਲ ਬਹਿ ਕੇ ਪਹਿਲਾਂ ਸਸਤਾ ਨਾਲ ਦੇਖੋ ਵੀ ਸਾਡੇ ਕੋਲੇ ਸਮਾਨ ਸਸਤਾ ਵੀ ਸਾਡੇ ਕੋਲ ਲੋਏ ਹੈ ਨਹੀਂ ਤੁਸੀਂ ਇਹ ਪਹਿਲਾਂ ਦੱਸੋ ਵੀ ਵਾਹ ਦਵਾਈਆਂ ਖਾਂਦੇ ਨੇ ਇਦਾਂ ਇੰਨਾ ਚਿਰ ਰਹਿਣਾ ਉਹਨਾਂ ਨੇ ਜੀ ਤੇ ਡਾਕਟਰ ਕੋ ਜਾਣਾ ਪੈਗਾ ਸਾਡੀ ਕਵਰੇਜ ਹੋਊਗੀ ਪਰ ਉਦੋਂ ਬਾਅਦ ਜਿਹੜਾ ਡਿਡਕਟਿਬਲ ਹੈ ਜੀ ਜਿਹੜਾ ਡਿਡਕਟਿਬਲ ਹੈ ਡਿਡਕਟਿਬਲ ਜਿੰਨੇ ਵਾਰੀ ਆਪਾਂ ਜੇ ਡਾਕਟਰ ਕੋ ਹਸਪਤਾਲ ਕੋ ਜਾਣਾ ਡਿਡਕਟਿਬਲ ਇੱਕ ਵਾਰ ਬਿਲਕੁਲ ਜੀ ਬਿਲਕੁਲ ਇਹ ਕਿਉਂਕਿ ਹੁਣ ਆ ਵੀ ਸਿੱਧਾ ਉਦਾਂ ਹੀ ਹਿਸਾਬ ਹੈ ਜੇ ਕਾਰ ਠੀਕ ਕਰਾਉਣੇ ਡਿਡਕਟਿਬਲ ਹੈ ਦਾ ਡਿਡਕਟਿਬਲ ਲੱਗਣੇ ਲੱਗਣਾ ਵੀ ਡਿਡਕਟਿਬਲ ਦਾ ਕਰਾ ਰਾਹ ਹੋਵੇ ਵੀ ਅਗਲੇ ਨੇ ਅਗਲੇ ਕੋਟ ਲੈ ਆਏ ਹਾਂਜੀ ਲੱਕ ਦੀ ਕਿੰਨੇ ਦੀ ਇੰਸ਼ੂਰੈਂਸ ਹੈ ਅਗਲੇ ਨੇ ਡੈਡਕਟੇਬਲ ਪਾਦਾ 500 ਉਹ ਕਿਸ਼ਤਾਂ 15% ਘਟ ਗਈ ਹੁਣ ਜਿਹੜਾ 1000 ਹੈ ਉਹ ਰਹਿ ਗਿਆ ਸਾਰਾ 850 ਕਹਿੰਦਾ ਜੀ ਉੱਥੇ 1000 ਦੀ ਇੱਥੇ 850 ਦੀ ਇਹਦਾ ਮਤਲਬ ਆਹ ਸਸਤੀ ਹੈ ਪਰ ਇਹ ਨਹੀਂ ਪਤਾ ਡਿਡਕਟੇਬਲ ਵੀ ਨਾਲ ਹੈਗਾ ਇਹ ਚੀਜ਼ਾਂ ਬਿਲਕੁਲ ਤੁਸੀਂ ਸੁਪਰਵਾਈਜ਼ਰ ਲੈਣਾ ਤੇ ਬਿਲਕੁਲ ਕਵਰੇਜ ਉਸ ਹਿਸਾਬ ਨਾਲ ਕਿਉਂਕਿ ਕਈਆਂ ਕੰਪਨੀਆਂ ਦੀ ਕੈਨਸਲੇਸ਼ਨ ਹੈਗੀ ਜਿਸ ਵਿੱਚੋਂ ਉੱਠ ਜਾਂਦੇ ਨੇ ਕਿਉਂਕਿ ਉਹ ਚਾਰਜ ਕਰਦੇ ਨੇ ਤੇ ਜਿਹੜੀਆਂ ਮਹਿੰਗੀਆਂ ਕੰਪਨੀਆਂ ਬਿਲਕੁਲ ਚਾਰਜ ਨਹੀਂ ਕਰਦੀਆਂ ਜਿੰਨੇ ਵਾਰੀ ਮਰਜ਼ੀ ਡੇਟ ਚ ਐਂ ਕਰਾ ਲਓ ਆਜੋ ਚਲੇ ਜੋ ਇੰਸ਼ੋਰੈਂਸ ਉਹਦਾਂ ਹੀ ਸ਼ੁਰੂ ਹੋਣੀ ਜਦੋਂ ਉਹਨਾਂ ਨੇ ਆਉਣਾ ਹੈ ਇਸ ਕਰਕੇ ਵੀ ਆਫਸਰ ਸਾਹਿਬ ਨਾਲ ਲਓ ਕਿ ਕਿਸੇ ਦਾ ਦੇ ਕਿੰਨੇ ਕੇ ਪੈਸੇ ਲੱਗ ਜਾਣੇ ਬਾਕੀ ਪੈਸੇ ਮੁੜੇ ਜਾਣੇ ਤੁਹਾਡੇ ਜੇ ਤੁਸੀਂ ਸਾਲ ਦੀ ਕਵਰੇਜ ਲਈ ਹੋਈ ਹੈ ਜੀ ਪਰਮਨੈਂਟ ਇੰਸ਼ੋਰੈਂਸ ਤੇ ਟਰਮ ਇੰਸ਼ੋਰੈਂਸ ਦੋਨਾਂ ਦੇ ਫਾਇਦੇ ਤੇ ਨੁਕਸਾਨ ਮੈਂਟ ਨੇ ਆਪਣੇ ਕੋਲ ਚਾਰਟ ਟੋਟ ਬਿਲਕੁਲ ਜਿੱਦਾਂ ਕਾ ਵੀ ਜਰ ਹੋ ਗਿਆ ਆਪਾਂ ਕੱਚੀ ਪੱਕੀ ਦੀ ਗੱਲ ਨਹੀਂ ਕੀਤੀ ਅੱਜ ਕੱਚੀ ਪੱਕੀ ਦੀ ਗੱਲ ਕਰ ਰਹੇ ਨੇ ਜਿੱਦਾਂ ਹਰੇਕ ਚੀਜ਼ ਦਾ ਨੁਕਸਾਨ ਆ ਜਿਹੜੀ ਟਰਮ ਹੈ ਵੀ ਹੁਣ ਹਰੇਕ ਨੂੰ ਇਹ ਵੀ ਕਵਰੇਜ ਤਾਂ ਚਾਹੀਦੀ ਜਾਈਦੀ ਆ ਕਵਰੇਜ ਆਪਾਂ ਨੂੰ ਕਾਹ ਚਾਹੀਦੀ ਹੁੰਦੀ ਪਹਿਲਾਂ ਦਾ ਪੈਸੇ ਸੋਚੀ ਇੰਸ਼ੋਰੈਂਸ ਆਪਾਂ ਚੱਕਰ ਚ ਕਾਹ ਪੈਣ ਲੱਗੇ ਆ ਇਹ ਆ ਵੀ ਸਾਨੂੰ ਪਤਾ ਹੀ ਪਰਿਵਾਰ ਪ੍ਰੋਟੈਕਟ ਕਰਨਾ ਅਡੀ ਮੌਰਗੇਜ ਹੈ ਜਿਹੜਾ ਸਾਡੇ ਕੋਲ ਬਿਜ਼ਨਸ ਹੈ ਆ ਜੇ ਸਾਨੂੰ ਪਤਾ ਹੈ ਵੀ ਸਾਡੀਆਂ ਲਾਇਬਿਲਿਟੀਆਂ ਹੋਰ ਵਧਣ ਵਾਲੀਆਂ ਸਾਲ ਦੀ ਟਰਮ ਹੈ 20 ਦੀ ਹੈ 25 ਦੀ ਆਪਦੇ ਹਿਸਾਬ ਨਾਲ ਆਪਾਂ ਮਿਥ ਵੀ ਸਕਦੇ ਹਾਂ ਵੀ ਸਾਨੂੰ ਇੰਨੀ ਟਰਮ ਹੀ ਚਾਹੀਦੀ ਆ ਆਪਾਂ ਉਨੀ ਟਰਮ ਵੀ ਲੈ ਸਕਦੇ ਆ ਪਰ ਉਹਦੇ ਨਾਲੇ ਵੀ ਜਿਹ ਹਰੇਕ ਦੇ ਜੋ ਤੱਕ ਸਾਰੇ ਬੰਦੇ ਹੁਣ ਕੋਈ 500 ਡਾਲਰ ਨਹੀਂ ਪਾ ਸਕਦਾ ਉਹ ਕਾਮ 500 ਰੁਪਏ ਵੀ ਹੋ ਸਕਦਾ ਹੈ ਵੀ ਉਹ ਨਾ ਇਹ ਆ ਵੀ ਆਪਦੇ ਟਰਮ ਦਾ ਪੂਰੀ ਫੁੱਲ ਦਾ ਇੰਸ਼ੂਰੈਂਸ ਲਾਓ ਹੁਣ ਮੈਂ ਕਈ ਵਾਰੀ ਦੇਖਦਾ ਕਈਆਂ ਹੁੰਦੀ ਹੈ ਜਾਂ ਡੇਢ ਆ ਮੈਂ ਸੋਚਦਾ ਵੀ ਦੇਖੋ ਇੰਸ਼ੂਰੈਂਸ ਡੇਢ ਲੱਖ ਦੀ 2 ਲੱਖ ਦੀ ਲਈ ਰਕੀ ਇੰਸ਼ੂਰੈਂਸ ਲਈ ਵੀ ਜੇ ਤੁਸੀਂ ਇੰਸ਼ੂਰੈਂਸ ਲੈਣ ਹੀ ਲੱਗੇ ਹੋ ਤੁਸੀਂ ਸੇਵਿੰਗ ਵਾਸਤੇ ਨਹੀਂ ਲੈ ਰਹੇ ਇੰਸ਼ੂਰੈਂਸ ਇੰਸ਼ੂਰੈਂਸ ਲੈ ਰਹੇ ਹੋ ਤੁਸੀਂ ਪ੍ਰੋਟੈਕਸ਼ਨ ਵਾਸਤੇ ਪਹਿਲੀ ਗੱਲ ਤਾਂ ਪ੍ਰੋਟੈਕਸ਼ਨ ਕਵਰੇਜ ਚਾਹੀਦੀ ਉਹ ਅੱਛੀ ਫਾਇਦਾ ਹੁੰਦਾ ਜਿਆਦਾ ਮਾਉਂਟ ਦੀ ਜਿੰਨੀ ਅਮਾਉਂਟ ਉਹਨਾਂ ਦੀ ਕਵਰੇਜ ਆ ਗਈ ਜੀ ਉਹਨੂੰ ਆਪਾਂ ਕੱਚੀ ਕਹਿੰਦੇ ਨੇ ਇੱਕ ਟਾਈਮ ਵਾਸਤੇ ਆ ਜੀ ਨੁਕਸਾਨ ਆਉਂਦਾ ਇਹ ਹੈ ਜੀ ਉਹ ਸਾਰੀ ਉਮਰ ਨਹੀਂ ਰਹਿਣੀ ਜੀ ਮੁੱਕ ਜਾਣੀ ਇੱਕ ਦਿਨ ਆ ਕੇ ਜੇ ਤੁਸੀਂ 10 ਸਾਲ ਦੀ ਟਰਮ ਲਈਏ 10 ਸਾਲਾਂ ਦੀ ਕਿਸ਼ਤ ਵਾਝਣੀ ਹੈ 20ਾਂ ਦੇ ਲਈ ਤੇ 20ਾਂ ਵਾਝੇ ਜਾਣੀਆਂ ਜੇ ਕਿਸੇ ਨੂੰ 65 ਸਾਲ ਤੱਕ ਲਈ ਟਰਮ ਨੂੰ ਪਤਾ ਹੈ ਕਿ ਚਲੋ 65 ਸਾਲ ਤੱਕ ਟਰਮ ਹੈਗੀ ਕੋਈ ਗੱਲ ਨਹੀਂ 65 ਸਾਲ ਤੱਕ ਸਾਨੂੰ ਰਿਸਕ ਉਸ ਤੋਂ ਬਾਅਦ ਸਾਡਾ ਰਿਸਕ ਮੁੱਕ ਜਾਣਾ ਜੀ ਕਿਉਂਕਿ ਇਹ ਜਿਹੜੀਆਂ ਟਰਮ ਹੈ ਓਕੇ ਪਰਮਾਨੈਂਟ ਨਹੀਂ ਹੈਗੀਆਂ ਵਧ ਜਾਣੀ ਵੀ ਆਪਾਂ ਨੂੰ ਛੱਡਣੀ ਪੈਣੀ ਹੈ ਕਿਉਂਕਿ ਏਜ ਤਾਂ ਵਧੀ ਜਾਂਦੀ ਸਿਹਤ ਤਾਂ ਵਧੀਆ ਹੋਈ ਜਾਂਦੀ ਹੁਣ ਆਪਾਂ ਜੇ ਪਰਮਾਨੈਂਟ ਇੰਸ਼ੋਰੈਂਸ ਵਾਲਾ ਇਹ ਹੁੰਦਾ ਇਹ ਹੈ ਵੀ ਉਹਦਾ ਨੁਕਸਾਨ ਨਹੀਂ ਹੈ ਠੀਕ ਹੈ ਜੀ ਉਹਦਾ ਹੁਣ ਇਹ ਪਰ ਮਹਿੰਗੀ ਇਸ ਕਰਕੇ ਹੈ ਕਿਉਂਕਿ ਉਹ ਚੀਜ਼ ਪਰਮਾਨੈਂਟ ਆ ਆਪਾਂ ਓਨ ਕਰਦੇ ਆ ਇਹ ਹੈ ਵੀ ਪਤਾ ਵੀ ਸਾਰੀ ਉਮਰ ਵਾਸਤੇ ਉਹ ਨਾ ਹੀ ਚੀਜ਼ ਆ ਪਰਮਾਨੈਂਟ ਹੈ ਵੀ ਸਾਰੀ ਉਮਰ ਸਾਨੂੰ ਕੰਪਨੀ ਨੂੰ ਵੀ ਪਤਾ ਵੀ ਇਹ ਪੈਸੇ ਸਾਨੂੰ ਦੇਣੇ ਪੈਣੇ ਇੱਕ ਦਿਨ ਇਸ ਕਰਕੇ ਉਹ ਚੀਜ਼ ਮਹਿੰਗੀ ਹੈ ਹੁਣ ਉਸ 'ਚ ਵੀ ਕਈ ਚੀਜ਼ਾਂ ਨੇ ਤੁਸੀਂ ਹੁਣ 8 ਸਾਲ ਦੀ 10 ਸਾਲ ਦੀ ਤੁਹਾਨੂੰ ਆਪਦੀਆਂ ਕਿਸ਼ਤਾਂ ਵੀ ਮਕਾ ਸਕਦੇ ਹਾਂ ਤੁਹਾਨੂੰ ਪਤਾ ਵੀ ਇੰਨੇ ਚਿਰ ਚ ਕਿਸ਼ਤਾਂ ਦੇਣੀਆਂ ਕਿਸ਼ਤਾਂਆਂ ਮੁੱਕ ਜਾਣੀਆਂ ਕਵਰੇਜ ਸਾਰੀ ਉਮਰ ਦੀ ਰਹਿਣੀ ਹੈ ਵੀ 2-3 ਤਰੀਕੇ ਨੇ ਮਨੀ ਦੀ ਗਾਰੰਟੀ ਵੀ ਹੈਗੀ ਆ ਤੁਸੀਂ ਮਨੀ ਚੱਕ ਵੀ ਸਕਦੇ ਹੋ ਮਨੀ ਬਾਰੋ ਵੀ ਕਰ ਸਕਦੇ ਹੋ ਉਹਦੇ ਵਿੱਚੋਂ ਵੀ ਤੁਸੀਂ ਜਿੱਦਾਂ TFS ਅਕਾਊਂਟ ਵਾਸਤੇ ਕਹਿੰਦੇ ਤੁਸੀਂ ਜਦੋਂ ਬਾਰੋ ਕਰਦੇ ਆ ਮਨੀ ਉਸ 'ਚ ਬਾਰੋ ਕਰ ਸਕਦੇ ਹੋ ਤੁਸੀਂ ਪਰ ਇਹ ਵੀ ਕਵਰੇਜ ਸਾਰੀ ਉਮਰ ਦੀ ਉਹਦੇ ਚ ਵੀ 2-3 ਤਰੀਕੇ ਨੇ ਪਰਮਾਨੈਂਟ ਨੇ ਕਈਆਂ 'ਚ ਤੇ ਲੱਖ ਦੇ ਲਈ ਹੈ ਤੇ ਜਿੱਦਾਂ ਇਹਦਾ ਕੈਸ਼ ਵਧੀਉਂਦਾ ਤੁਹਾਡੀ ਕਵਰੇਜ ਵਧੀ ਜਾਂਦੀ ਹੈ ਕਈਆਂ ਦਾ ਲੱਖ ਦੀ ਹੈ ਸਾਰੀ ਉਮਰ ਲੱਖ ਦੀ ਕਵਰੇਜ ਹੀ ਰਹਿਣੀ ਹੈ ਹੁਣ ਉਹ ਥੋੜੀ ਐ ਸਸਤੀ ਐ ਇਸ ਕਰਕੇ ਕੋਈ ਪ੍ਰੋਡਕਟ ਲੈਣਾ ਪਹਿਲਾਂ ਦੇਖ ਲਓ ਸਸਤੀ ਚੀਜ਼ ਹੈਗੀ ਤਾਂ ਇਹ ਜ਼ਰੂਰੀ ਨਹੀਂ ਮਹਿੰਗੀ ਵਧੀਆ ਸਸਤੀ ਮਾੜੀ ਐ ਫਿਰ ਉੱਥੇ ਟੁਕਵੀ ਆ ਜਾਂਦੀ ਐ ਇਹਨਾਂ ਦੋਹਾਂ ਦੇ ਫਾਇਦੇ ਨੁਕਸਾਨ ਐ ਜੀ ਟਰਮ ਤੇ ਪਰਮਨੈਂਟ ਦੇ ਤੁਸੀਂ ਆਪ ਦੀ ਮੋਰਗੇਜ ਇੰਸ਼ੋਰੈਂਸ ਐ ਤੁਸੀਂ ਟਰਮ ਨਾਲ ਪ੍ਰੋਟੈਕਟ ਕਰੋ ਸਾਰਾ ਰਿਸਕ ਜਿਹੜਾ ਆਪ ਤੁਸੀਂ ਜੇ ਸੇਵਸ ਵਧੀਆ ਜਿੱਦਾਂ ਹੁਣ ਆਪਾਂ ਅੱਗੇ ਅੱਗੇ ਗੱਲ ਕੀਤੀ ਐ ਡਿਸਕਾਊਂਟ ਤੁਹਾਨੂੰ ਵਧੀਆ ਤੋਂ ਜੇ ਦੀ 30 ਘਟ ਗਈ ਜੇ ਸੇਵ ਕਰ ਲਿਆ ਹਰ ਮਹੀਨੇ ਉਹ ਗੱਲ ਬੈਂਦੀ ਹੈ ਜੀ ਅ ਅਖੀਰ ਦੇ ਵਿੱਚ 40 ਸੈਕਿੰਡ ਹੋਰ ਨੇ ਕੁਝ ਕਲੋਜ਼ਿੰਗ ਚ ਐਡ ਕਰਨਾ ਚਾਹੋ ਹਾਂਜੀ ਜੀ BC ਚ ਕਿਤੇ ਵੀ ਅਲਬਰਟਾ ਚ ਕਿਤੇ ਵੀ ਸਾਡਾ ਫੇਸਬੁਕ ਪੇਜ ਹੈਗਾ ਜੀ ਥਿੰਕ ਇੰਸ਼ੋਰੈਂਸ ਜੀ ਆਹ ਤੁਹਾਡੀ ਵੈਬਸਾਈਟ ਹੈ ਇਹ thinkinsurance.ca ਜੇ ਨੰਬਰ ਤੁਸੀਂ ਜੇ ਬਹੁਤ ਭੁੱਲ ਜਾਨੇ ਹੋ ਕਈ ਵਾਰ ਹੁੰਦਾ ਹੈ ਚਲੋ ਸਟੇਸ਼ਨ ਤੇ ਲਾਈਨ ਆ ਬਿਜ਼ੀ ਹੁੰਦੀਆਂ ਨੇ ਤੁਸੀਂ ਸਿੱਧਾ ਗੂਗਲ ਤੇ ਸਰਚ ਮੈਂ ਕਹ ਜਦੋਂ ਸ਼ੋਅ ਸ਼ੁਰੂ ਕੀਤਾ ਹੈਗਾ ਨਿਮੀ ਦੇ ਪ੍ਰੋਗਰਾਮ ਆਏ ਕਹਿੰਦੇ ਨੰਬਰ ਤੁਹਾਡਾ ਵਧੀਆ ਮੈਂ ਕੀ ਕਹਿੰਦੇ ਕੰਮ ਤੁਹਾਡਾ 808 ਆ ਬਹਤਰ ਘੰਟੇ ਦੇ ਬਾਬੇ ਰਤੇ ਹੈ ਔਰ 128 72 13 ਇਹ ਜੀ ਕਿਤੇ ਵੀ ਹਾਜ਼ਰ ਹੈ ਕੋਈ ਵੀ ਸਲਾਹ ਲੈਣੀ ਕੋਈ ਵੀ ਕੁਐਸਚਨ ਹੈ ਤੇ ਨਾਲੇ ਇਹ ਕੰਮ ਨਾ ਫੋਨ ਕਰਕੇ ਤੁਹਾਨੂੰ ਤੰਗ ਕਰਨਾ ਜੇ ਤੁਹਾਡਾ ਫੋਨ ਆਊਗਾ ਅਪਾਇੰਟਮੈਂਟ ਨਾਲ ਹੀ ਮਿਲਣਾ ਜੀ ਜਿੰਨਾ ਟਾਈਮ ਲੱਗੂ 2 ਘੰਟੇ ਲੱਗਣ 3 ਘੰਟੇ ਲੱਗਣਾ ਹਿਸਾਬ ਨਾਲ ਬੈਠ ਗਿਆ ਆਪਾਂ ਪੂਰਾ ਵਧੀਆ ਕੰਮ ਕਰਨਾ ਜੀ ਥੈਂਕ ਯੂ ਧੰਨਵਾਦ ਜੀ ਵਧੀਆ ਤੁਹਾਨੂੰ ਸਰਵਿਸਿਸ ਦਿੰਦੇ ਨੇ ਕੋਈ ਲਾਂਮਾ ਨਹੀਂ ਵਾਲੇ ਤੱਕ 4 ਸਾਲ ਦਾ ਸਮਾਂ ਹੋ ਗਿਆ ਪ੍ਰੋਗਰਾਮ ਤੇ ਆਉਂਦਿਆਂ ਨੂੰ ਜਦ ਕੋਈ ਤੁਹਾਡੇ ਵਿੱਚੋਂ ਆ ਕੇ ਦੱਸ ਦਿੰਦਾ ਕਿ ਆ ਗੜਬੜ ਹੈ ਫਿਰ ਉੱਥੇ ਠੀਕ ਨਹੀਂ ਗੱਲ ਬੈਂਦੀ ਇੰਸ਼ੋਰੈਂਸ ਇੰਡਸਟਰੀ ਬਹੁਤ ਵੱਡੀ ਇੰਡਸਟਰੀ ਹੈ ਬਹੁਤ ਇੰਸ਼ੋਰੈਂਸ ਏਜੰਟਸ ਬ੍ਰੋਕਰ ਕੰਮ ਕਰਦੇ ਆ ਵਧੀਆ ਕੰਮ ਕਰੋ ਐਨ ਠੁੱਕ ਨਾਲ 6048287213 thinkinsurance.ca g ਆਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਜਿੱਦਾਂ ਆਪਾਂ ਹੁਣ ਪਿਛਲੇ ਦਿਨੇ ਵਿੱਚ ਕਿਹਾ ਸੀ ਆਪਾਂ ਐਡਵਾਈਜ਼ਰ ਹੋਰ ਐਡ ਕਰ ਰਹੇ ਹਾਂ ਜੀ ਕੋਈ ਬਣਨਾ ਚਾਹੁੰਦਾ ਐਡਵਾਈਜ਼ ਸ਼ੁਰੂ ਹੋ ਰਹੀਆਂ ਜੁੜਨਾ ਚਾਹੁੰਦੇ ਹੋ ਜਾਂ ਕਿਤੇ ਹੋਰ ਲਾਇਸੈਂਸ ਨਾਵਾ ਪ੍ਰੋਫੈਸ਼ਨਲ ਸਾਡੇ ਕੰਸਟ੍ਰਕਟਰ ਨੇ ਮੈਂ ਨਹੀਂ ਜੀ ਕਿਉਂਕਿ ਮੇਰਾ ਕੰਮ ਨਹੀਂ ਹੈਗਾ ਕਿ ਸਾਡੇ ਕੰਸਟ੍ਰਕਟਰ ਨੇ ਬਿਲਕੁਲ ਮੈਨੂੰ ਕੰਟੈਕਟ ਕਰ ਸਕਦੇ ਨੇ 604 828 7213 ਥੈਂਕ ਯੂ ਜੀ ਥੈਂਕ ਯੂ ਬਪਾਰਕ ਸੰਦੇਸ਼ ਤੇ ਵਾਪਸ ਆਉਣੇ 12 ਵਜੇ ਕੰਮਿੰਟ ਹੋਇਆ ਪ੍ਰੋਗਰਾਮ ਦੇ ਸਪான்ਸਰ ਨੇ ਉਹ ਦੱਸਿਓ ਕਿਹਦਾ ਭਈਆ ਕਹਿ ਲੋ ਜਾਂ ਬਾਣੀਆਂ ਤੁਹਾਡਾ ਚਿੱਤ ਰਾਜੀ ਚਾਹੀਦਾ ਪਰ ਅੱਜ ਬਾਦਲ ਤੇ ਕੈਪਟਨ ਦੇ ਸੰਗ ਚ ਆਏ ਐ ਤਾਂ ਉਹ ਕੇਜੀ ਗਵਾਲ ਲਿਆਂਦੇ ਐ ਰਜਾਈਆਂ ਚ ਬਹਿ ਕੇ ਸਟੇਟਸ ਲਿਖਣੇ ਸੌਖਿਆ ਪੋਸਟ ਕਰਕੇ ਕਮੈਂਟ ਦੇਖਣੇ ਸੌਖਿਆ ਪਰ ਪਾਰਟੀਆਂ ਖੜੀਆਂ ਕਰਨੀਆਂ ਬਹੁਤ ਔਖੀਆਂ ਭਗਵੰਤ ਮਾਨ ਦੀ ਕੁੱਲ ਕਮੇਟੀ ਇਸ ਸਿਸਟਮ ਦੇ ਖਿਲਾਫ ਹੁੰਦੀ ਸੀ ਅੱਜ ਉਹ ਬੰਦਾ ਇਸੇ ਸਿਸਟਮ ਦੇ ਵਿੱਚ ਵੜ ਕੇ ਇਹਨੂੰ ਬਦਲਣਾ ਚਾਹੁੰਦਾ ਹੈ ਥਿਓਰੀਕਲ ਨਹੀਂ ਹੁਣ ਪ੍ਰੈਕਟੀਕਲ ਹੈ ਮੇਰਾ ਚਿੱਤ ਨਹੀਂ ਮੰਨਦਾ ਕਦੇ ਭਗਵੰਤ ਜੀਆ ਗੁਰਪ੍ਰੀਤ ਘੁੱਗੀ ਪੰਜਾਬ ਨਾਲ ਧੋਖਾ ਕਰਨਗੇ ਅੱਜ ਪੰਜਾਬ ਦੀ ਕੁੱਲ ਜਵਾਨੀ ਨੂੰ ਆਮ ਆਦਮੀ ਤੋਂ ਬੜੀਆਂ ਆਸਾਂ ਨੇ ਬੇਤਹਾਸ਼ਾ ਸ਼ੋਸ਼ੇਵਾਲੀਆ ਠਰਕ ਨਹੀਂ ਜਵਾਨੀ ਤੋਂ ਅੰਦਰੋਂ ਇਹ ਪਾਰਟੀ ਨਾਲ ਜੁੜੀ ਹੈ ਪਰਸਨਲੀ ਕੁਝ ਰਿਸ਼ਤਦਾਰਾਂ ਨੂੰ ਫੋਨ ਕਰਕੇ ਵੋਟ ਖਾਤ ਰੱਖਦੇ ਨੇ ਮੁੰਡੇ ਗੱਲਾਂ ਬਹੁਤ ਨੇ ਬਾਕੀ ਫੇਸ ਸੀ ਜੇ ਹੁਣ ਵੀ ਪੁਰਾਣੀ ਪਾਰਟੀ ਮੋੜਾਈ ਤਾਂ ਸਮਝਿਓ ਬਸ ਫਿਰ ਕੰਮ ਸਫਟੇ ਐ ੱਲਿਓ ਤੇਲ ਫੂਕ ਫੂਕ ਲੋਕਾਂ ਨੇ ਕੰਮ ਛੱਡ ਛੱਡ ਕੇ ਖੜਾ ਕੀਤਾ ਐ ਪਾਰਟੀ ਨੂੰ ਜੇ ਅਵੀ ਨਵੀ ਹੋ ਗਈ ਲੱਖਾਂ ਲੋਕਾਂ ਦੇ ਦਿਲ ਟੁੱਟਣਗੇ ਹੁਣ ਕੱਲ ਨੂੰ ਖਿੱਚ ਕੇ ਰੱਖਿਓ ਕੰਮ ਪੰਜਾਬ ਜਿੰਦਾਬਾਦ ਉੱਦਾ ਸਿੰਘ ਕਹਿੰਦਾ ਨਿਸ਼ਾ ਡੋਗਰਾ ਜੀ ਨਾਲ ਹੁਣ ਗੱਲਬਾਤ ਕਰਦੇ ਆ ਤੁਹਾਡੀ ਸਿਹਤ ਸਬੰਧੀ ਨਿਸ਼ਾ ਜੀ ਤੁਹਾਡਾ ਕਾਲ ਜਜੀਤ ਜੀ ਔਰ ਸੁਣਨੇ ਵਾਲੇ ਸਾਰੇ ਨੂੰ ਮੇਰੀ ਪਿਆਰ ਜੀ ਕਾਲ ਨਮਸਕਾਰ ਦਰਵਾਜ ਅੱਛਾ ਸਭ ਤੋਂ ਪਹਿਲਾਂ ਤਾਂ ਬਣਾਈ ਜੀ ਚੌਥੀ ਲੋਕੇਸ਼ਨ ਬਰਨਵੀਚ ਖੁੱਲ ਗਈ ਆ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਹਾਂਜੀ ਹਰਜੀਤ ਜੀ ਤੁਹਾਡੇ ਪਿਆਰ ਦੇ ਨਾਲ ਔਰ ਜਿੰਨੇ ਵੀ ਸਾਰੇ ਸੁਣਨੇ ਵਾਲੇ ਸ਼ਰੋਤਾ ਨੂੰ ਉਹਨਾਂ ਦੇ ਪਿਆਰ ਦੇ ਨਾਲ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇੱਕ ਹੋਰ ਐਬਸਫੋਰਡ ਦੀ ਨਵੀਂ ਲੋਕੇਸ਼ਨ ਦੇ ਬਾਅਦ ਇੱਕ ਹੋਰ ਬਨ ਵਿੱਚ ਅਸੀਂ ਲੋਕੇਸ਼ਨ ਨਵੀਂ ਖੋਲ੍ਹਦੀ ਹੈ ਔਰ ਉੱਥੇ ਵੀ ਹੁਣ ਇਹਦੇ ਕੋਲੋਂ ਫਰਵਰੀ ਦੇ ਐਂਡ ਵਿੱਚ ਅਪਲਾਈਐਂਸ ਲੈਣਾ ਸ਼ੁਰੂ ਕਰ ਦਿੰਦੇ ਨੇ ਉੱਥੇ ਅਸੀਂ ਸੋ ਕਿਉਂਕਿ ਕਾਫੀ ਨਾਰਥ ਵੈਂਕੂਵਰ ਤੇ ਕਾਫੀ ਆਂਦੇ ਸੀ ਔਰ ਵੈਂਕੂਵਰ ਦੇ ਆਂਦੇ ਸੀ ਕਹਿੰਦੇ ਸੀ ਕਿ ਸਰੀ ਡੈਲਟਾ ਤੋਂ ਨੂੰ ਦੂਰ ਪੈਂਦਾ ਹੈ ਤੇ ਇਸ ਕਰਕੇ ਅਸੀਂ ਆਪਣੀ ਕੋਸ਼ਿਸ਼ ਪੂਰੀ ਕਰਨੀ ਹੈ ਕਿ ਜਿੰਨੇ ਵੀ ਸਾਡੇ ਇਸ ਕਰਕੇ ਅਸੀਂ ਉੱਥੇ ਖੋਲੀ ਐ ਔਰ ਕੁ ਫੀਅ ਅੱਛੇ ਸੇਵਾਵਾਂ ਵਾਂਗੀਆਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਜਿੱਦ ਵੱਧ ਕੋਲ ਬਸ ਅਸੀਂ ਹੈਲਪ ਕਰੀਏ ਠੀਕ ਹੈ ਜੀ ਅੱਛਾ ਇੱਕ ਦੱਸਿਓ ਨਿਸ਼ਾ ਜੀ ਇਹ ਕਾਹਮ ਲੋਕਾਂ ਨੂੰ ਪ੍ਰੋਬਲਮ ਹੈ ਘਰ ਦੇ ਵਿੱਚ ਵੀ ਬਾਹਰ ਅੰਦਰ ਜਾਂਦੇ ਵੀ ਕੁਝ ਵੀ ਖਾਂਦੇ ਉਹਨਾਂ ਨੂੰ ਗੈਸ ਬਹੁਤ ਹੋ ਜਾਂਦੀ ਹੈ ਕਈਆਂ ਦੇ ਢਿੱਡ ਤੰਦੂਰ ਜਿੱਡੇ ਹੋ ਜਾਂਦੇ ਆ ਤੇ ਡੁਗ ਡੁਗ ਗੁਰ ਗੁਰ ਗੁਰ ਗੁਰ ਕਰਦੇ ਆ ਉਹ ਕੀ ਕਾਰਨ ਆ ਜੀ ਇਹ ਗੈਸ ਕਿਉਂ ਬਣ ਜਾਂਦੀ ਹੈ ਹਾਂਜੀ ਹਰਜੀਤ ਜੀ ਹੁਣ ਨਵੀਂ ਜੀ ਇਹ ਪ੍ਰੋਬਲਮ ਸ਼ੁਰੂ ਹੋਈ ਹੈ ਕਾਫੀ ਹੈ ਲੋ ਫੂਡ ਸੈਂਸਿਟੀਵਿਟੀਜ਼ ਕਾਫੀ ਹੁੰਦੀ ਪਈਆਂ ਨੇ ਤੇ ਜਿਹੜੀਆਂ ਕਿ ਪਹਿਲੇ ਇੱਕ ਦੇ ਹੁੰਦੀਆਂ ਫੂਡ ਅਲਰਜੀਜ਼ ਹੁਣ ਜਿਹੜੀ ਨਵੀਂ ਜਿਹੜੀ ਪ੍ਰੋਬਲਮ ਸ਼ੁਰੂ ਹੋਈ ਹੈ ਕਿ ਉਹਨੂੰ ਕਿ ਕਈ ਵਾਰੀ ਕੋਈ ਇਦਾਂ ਦੇ ਖਾਣੇ ਪੀਣੇ ਖਾਂਦੇ ਆ ਜਿਹੜੇ ਕਿ ਸਾਡੀ ਬਾਡੀ ਦੇ ਪਚਨ ਸ਼ਕਤੀ ਦੇ ਨਾਲ ਮੈਚ ਨਹੀਂ ਕਰਦੇ ਔਰ ਸਾਡੀ ਬਾਡੀ ਵਿੱਚ ਉਹ ਡਾਈਜੈਸਟ ਪ੍ਰੋਪਰ ਨਹੀਂ ਹੁੰਦੇ ਤੇ ਉਹ ਫਿਰ ਗੈਸ ਬਣਦੀ ਹੈ ਔਰ ਕਾਫੀ ਸਾਰੇ ਕਹਿੰਦੇ ਕਿ ਬਲੋਟਿੰਗ ਹੁੰਦੀ ਹੈ ਬਹੁਤ ਤੇ ਬਲੋਟਿੰਗ ਦਾ ਪੇਟ ਫੁੱਲ ਜਾਂਦਾ ਆਕੜ ਜਾਂਦਾ ਕਿਹਾਂ ਦਾ ਕਈ ਕਹਿੰਦੇ ਇਦਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੰਦੂਰ ਵਰਗੇ ਇਦਾਂ ਫੁੱਲ ਜਾਂਦਾ ਤੇ ਇਹ ਜਿਹੜੀਆਂ ਤਕਲੀਫਾਂ ਨੇ ਔਰ ਕਈ ਕਹਿੰਦੇ ਨੇ ਸਾਨੂੰ ਵਾਸ਼ਰੂਮ ਰੋਟੀ ਖਾਂਦੇ ਵਾਸ਼ਰੂਮ ਭਜਣਾ ਪੈਂਦਾ ਹੈ ਜਾਂ ਡਾਇਰੀਆ ਜੇ ਸਿੰਪਟਮ ਆਉਂਦੇ ਨੇ ਕਈਆਂ ਨੂੰ ਕਬਜ਼ੀ ਹੋ ਜਾਂਦੀ ਹੈ ਜਾਂ ਕਈਆਂ ਦੇ ਜਿਹੜੀ ਹੈ ਕਿ ਡਕਾਰ ਆਉਂਦੇ ਨੇ ਕਿੰਨੇ ਬੜੇ ਗੰਦੇ ਗੰਦੇ ਡਕਾਰ ਆਉਂਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੇ ਖਾਣਾ ਅਸੀਂ ਆਪਣੀ ਬੋਡੀ ਦੇ ਮੈਟਾਬੋਲਿਜ਼ਮ ਦੇ ਹਿਸਾਬ ਨਾਲ ਨਹੀਂ ਖਾਂਦੇ ਤੇ ਉਹ ਫੂਡ ਸੈਂਸਿਟੀਵਿਟੀਜ਼ ਬਣ ਜਾਂਦੀ ਹੈ ਹਰਜੀਤ ਜੀ ਅੱਛਾ ਜੀ ਦੂਸਰਾ ਇਹ ਨਾਲ ਦੱਸੋ ਨਿਸ਼ਾ ਜੀ ਇੱਕ ਇਨਸਾਨ ਨੂੰ ਪਤਾ ਨਹੀਂ ਹੁੰਦਾ ਬੈਡ ਜਿਹੜੀ ਬ੍ਰੈਥ ਹੈ ਮੂੰਹ ਦੇ ਵਿੱਚੋਂ ਜਿਹੜੀ ਹਵਾੜ ਆ ਇੱਕ ਕਿਸਮ ਦੀ ਉਹ ਬਹੁਤ ਖਤਰਨਾਕ ਹੈ ਤੁਸੀਂ ਕਿਸੇ ਨੂੰ ਹੱਥ ਮਿਲਾਉਂਦੇ ਬਗਲਗੀਰ ਹੁੰਨੇ ਕਿਸੇ ਨੂੰ ਹੱਕ ਕਰਦੇ ਹੋ ਦੋਸਤ ਮਿੱਤਰ ਨੂੰ ਇੱਕੋ ਬਹੁਤ ਕੀ ਉਹਨੂੰ ਮੈਂ ਕਹਾਂ ਬਹੁਤ ਮਾੜੀ ਸਮੈਲ ਹੈ ਕਈਆਂ ਦਾ ਮੂੰਹ ਬਹੁਤ ਸੁੱਕਿਆ ਹੁੰਦਾ ਉਹਨਾਂ ਦੇ ਲਵ ਨਹੀਂ ਹੁੰਦਾ ਭੋਰਾ ਮੂੰਹ ਦੇ ਵਿੱਚ ਤਰਲ ਨਹੀਂ ਹੁੰਦਾ ਇਹ ਕੀ ਕਾਰਨ ਹੈ ਜੀ ਇਹ ਇਹ ਸਟਮਕ ਦੀ ਕੋਈ ਢਿੱਡ ਦੇ ਵਿੱਚੋਂ ਉਹ ਜੀ ਉਹ ਹਵਾੜ ਹੈ ਜਾਂ ਬੰਦੇ ਖਾਣ ਪੀਣ ਦਾ ਨਹੀਂ ਖਿਆਲ ਲੋਕ ਰੱਖਦੇ ਕਿ ਹੈ ਜੀ ਉਹ ਜਾਂ ਕੋਈ ਰੋਗ ਆ ਹਾਂਜੀ ਜੀ ਇਹ ਹੁੰਦਾ ਕਿ ਉਹ ਜਿਸ ਤਰ੍ਹਾਂ ਮੇ ਖਾਣਾ ਜਿਹੜਾ ਡਾਈਜੈਸਟ ਹੁੰਦਾ ਗੈਸ ਬਣ ਕੇ ਉਹ ਜਾਂਦੇ ਥੱਲੇ ਨੂੰ ਰਿਲੀਜ਼ ਹੁੰਦੀ ਹੈ ਤੇ ਜਾਂ ਫਿਰ ਉੱਪਰ ਨੂੰ ਆਉਂਦੀ ਹੈ ਤੇ ਕਈਆਂ ਦੀ ਰਿਲੀਜ਼ ਹੀ ਨਹੀਂ ਹੁੰਦੀ ਬਹੁਤ ਕੋਸ਼ਿਸ਼ ਕਰਦੇ ਤੇ ਉਹ ਫਿਰ ਅੰਦਰ 스멜 ਹੁੰਦੀ ਰਹਿੰਦੀ ਹੈ ਤੇ ਫਿਰ ਉਹ ਮੂੰਹ ਰਾਏ ਹਾਂਦੀ ਹੈ ਇਹ ਕੋਰ ਬਿਮਾਰੀ ਹੈ ਇੱਕ ਤੇ ਉਹਨੂੰ ਕਹਿੰਦੇ ਇਨਫਲੇਮੇਟਰੀ ਬਬਲ ਸਿੰਡਰੋਮ ਇਨਫਲੇਮੇਟਰੀ ਬਬਲ ਸਿੰਡਰੋਮ ਵਿੱਚ ਇਹ ਹੁੰਦਾ ਕਿ ਇੱਕ ਪ੍ਰੋਪਰ ਖਾਣਾ ਹਜਮ ਨਹੀਂ ਹੁੰਦਾ ਤੁਹਾਡੇ ਅੰਦਰ ਸਾਰੇ ਇਹ ਪੜਾਸ ਜੀ ਆਂਦੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਦ ਬਹੁਤ ਬੋਡੀ ਜਿਹੜੀ ਐਸਿਡ ਬਣਾਉਂਦੀ ਹੈ ਅੰਦਰ ਸੋਜ ਹੋ ਜਾਂਦੀ ਹੈ ਤੇ ਉਹ ਸਾਰਾ ਹੀ ਅੰਦਰ ਜਿਹੜਾ ਹੈ ਉਹ ਖਾਣਾ ਹਜਮ ਨਹੀਂ ਹੁੰਦਾ ਪਿਆ ਰਹਿੰਦਾ ਉਹ ਸਾਰੇ ਉੱਪਰ ਪੜਾਸ ਨਿਕਲਦੀ ਆ ਔਰ ਗਲੇ ਚ ਰਹਿੰਦੀ ਮੂੰਹ ਚ ਰਹਿੰਦੀ ਹੈ ਪਰ ਕੇਵਲ ਸਾਡੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦੀ ਹੈ વાયરલ ઇન્ફેક્શન હો જતી હૈ ઓર હરજીતજી આજકાલ મેં દેખિયા જરે અસી ટેસ્ટ કરકે પતા કીતા હે ஆல்મોસ્ટ 70% લોક એસે ને जिના دے اندر ઇન્ફેક્શન હે હે ઓર ઉના નુ પતા હી નહી કે સાડે اندر ઇન્ફેક્શન હે ઓર એદે વાસે કોઈ પ્રોપર ટેસ્ટિંગ ભી નહી હોndi કી પતા લગે કે મેરી બોડી ચ કિસ તરહ دی ઇન્ફેક્શન હે કી પર ઇન્ફેક્શન દા નામ લેયા જેડી આજકાલ ઇસ ઇના કન્ટ્રીયા ચ જ્યાદા હોndi પઈ ਕੈਂਡੀਡਾ ਜਿਹੜੀ ਹੈ ਇਹ ਇਨਫੈਕਸ਼ਨ ਜਿਹੜੀ ਹੈ ਅੰਦਰ ਸਾਡੇ ਜਿਸ ਦਾ ਜਾਲੇ-ਜਾਲੇ ਬਣਾਉਂਦੇ ਜਿਹਨਾਂ ਨੂੰ ਫੰਗਸ ਕਹਿੰਦੇ ਆ ਉਲੀ ਕਹਿੰਦੇ ਆ ਤੇ ਇਹ ਕਿਉਂਕਿ ਫਰੋਜ਼ਨ ਫੂਡ ਅਸੀਂ ਜਿਆਦਾ ਖਾਂਦੇ ਆ ਅੰਦਰ ਜਾ ਕੇ ਜਿਹੜੇ ਫਰੋਜ਼ਨ ਜਿਆ ਤੁਸੀਂ ਅਨੀਆ ਨੇ ਜਿਹੜੇ ਗੱਠੇ ਦੇ ਗੱਠੇ ਲਿਆਂਦੇ ਤੁਸੀਂ ਬਾਹਰ ਪੇਰਦੇ ਨੇ ਉਹਨੂੰ ਹੁਲੀ ਲੱਗ ਜਾਂਦੀ ਜਾਂ ਬਰੈਡ ਇਕੱਠੀ ਅਸੀਂ ਫਰੋਜ਼ਨ ਉਥੋਂ ਲੈ ਕੇ ਰੱਖਨੇ ਆ ਜਾਂ ਕਈ ਵਾਰੀ ਫੂਡ ਹੀ ਇਸ ਤਰ੍ਹਾਂ ਲੈ ਕੇ ਆਨੇ ਆ ਉਹ ਸਿਰਫ ਫੰਦ ਤੋਂ ਜਾਂਦੀ ਸਾਰੇ ਅੰਦਰ ਫਿਰ ਜਿ세 ਸਪੋਰ ਹੀ ਹੁੰਦੇ ਛੋਟੇ ਛੋਟੇ ਲੇਕਿਨ ਜਿਸ ਅਸੀਂ ਖਾਂਦੇ ਉਹ ਜਿਆ ਫੂਡ ਅੰਦਰ ਜਿਹੜੇ ਉਹ ਗਰੋ ਅਜੈਂਸੀ ਤੇ ਉਹ ਜਿਹੜੀ ਹੈ ਇਨਫੈਕਸ਼ਨ ਜਿਆਦਾ ਹੋ ਜਾਂਦੀ ਹੈ ਜਿਹਦੇ ਨਾਲ ਕਿ ਤੁਸੀਂ ਦੇਖਿਓਗੇ ਕਈਆਂ ਦੇ ਜੀਵ ਜਿਹੜੀ ਆ ਉਹਦੇ ਚਿੱਟਾ ਚਿੱਟਾ ਜੰਮਿਆ ਰਹਿੰਦਾ ਹੈ ਕਈਆਂ ਦੀ ਮੂੰਹ ਚ 스ਮੈਲ ਆਉਂਦੀ ਹੈ ਕਈਆਂ ਦਾ ਮੂੰਹ ਡਰਾਈ ਹੋ ਜਾਂਦਾ ਸੋ ਇਹ ਚੀਜ਼ਾਂ ਕਿ ਇਹਦੇ ਦੰਦ ਜਲਦੀ ਛੇਤੀ ਖਰਾਬ ਹੋ ਜਾਂਦੇ ਨੇ ਸੋ ਇਹ ਚੀਜ਼ਾਂ ਬਹੁਤ ਹੁਣ ਅੱਜ ਕੱਲ ਜਿਹੜੀ ਹੁੰਦੀ ਪਈਆਂ ਨੇ ਤੁਸੀਂ ਦੇਖਿਆ ਕਈ ਗੱਲ ਕਰਦੇ ਨੇ ਤੇ ਬਹੁਤ 스ਮੈਲ ਆਉਂਦੀ ਹੈ ਕਿ ਸੋਸ਼ਲ ਸਟੈਮੀਨਾ ਜਿਆ ਵੀ ਹੋ ਗਿਆ ਔਰ ਜੇ ਟੀਨੇਜਰ ਉਹਨਾਂ ਅਗਰ ਇਸ ਤਰ੍ਹਾਂ ਹੁੰਦੀ ਹੈ ਉਹ ਕੀ ਕਰਦੇ ਚਿੰਗਮ ਜੇ ਚਬਾਉਂਦੇ ਰਹਿੰਦੇ ਨੇ ਕਹਿੰਦੇ ਮੂੰਹ ਦੀ 스ਮੈਲ ਨੂੰ ਰੋਕਣ ਵਾਸਤੇ ਸਿ ਚਿੰਗਮ ਖਾਂਦੇ ਰਹਿੰਦੇ ਆ لیکن ਉਹ ਵੀ ਹੋਰ نقصان ਕਰਦੇ ਨੇ ਕਿਉਂਕਿ ਇਹ ਚ ਨਕਲੀ 슈ਗਰ ਹੁੰਦੀ ਹੈ ਜਾਂ ਫਿਰ ਜਿਹੜੇ ਸੋਡਾ ਵਗੈਰਾ ਪੀਂਦੇ ਨੇ ਜ਼ਿਆਦਾ ਤਾਂ ਇਹ ਜਿਹੜੀ ਕੁਝ ਖਾਣ ਪੀਣ ਦੀਆਂ ਚੀਜ਼ਾਂ ਨੇ ਜਾਂ ਕੁਝ ਜਿਹੜੇ ਅਸੀਂ ਨਾਨ-वेज ਇਸ ਤਰ੍ਹਾਂ ਖਾਂਦੇ ਆ ਕਿ ਸਾਡੀ ਬਾਡੀ ਦੇ ਹਿਸਾਬ ਨਾਲ ਉਹ ਸਾਡਾ ਖਜਮ ਨਹੀਂ ਹੋ ਗਿਆ ਉਹ ਸਾਡੇ ਅੰਦਰ ਗੈਸ ਤੇ ਕਈਆਂ ਨੂੰ ਪੇਟ ਦਰਦ ਹੁੰਦੀ ਹੈ ਕਈ ਇਹਨੂੰ ਬਰੋਟਿੰਗ ਹੁੰਦੀ ਗੈਸ ਖੱਟੇ ਅਦਕਾਰ ਇਹ ਸਾਰੇ ਹੁੰਦੇ ਰਹਿੰਦੇ ਨੇ ਔਰ ਇਹ ਵੀ ਦੇਖਿਆ ਕਿ ਜਿਹੜੇ ਛੋਟੇ ਬੱਚਿਆਂ ਨੂੰ ਛੇਤੀ ਹੋ ਜਾਂਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਇਹੋ ਜਿਹੀ ਪ੍ਰੋਬਲਮ ਆਉਦੀਆਂ ਨੇ ਤੇ ਉਹ ਜੇਨੈਟਿਕਲੀ ਉਹਨਾਂ ਦੇ ਅੰਦਰ ਉਹੋ ਜੇ ਇੰਜ਼ਾਈਮ ਨਹੀਂ ਬੰਦੇ ਕਿ ਪ੍ਰੋਟੀਨ ਨੂੰ ਪ੍ਰੋਪਰ ਡਾਈਜੈਸਟ ਕਰਨ ਸੋ ਬੱਚੇ ਨੂੰ ਜਲਦੀ ਹੀ ਪੇਟ ਦੀਆਂ ਤਕਲੀਫਾਂ ਸ਼ੁਰੂ ਹੋ ਜਾਂਦੀ ਹੈ ਜੀ ਓਕੇ ਜੀ ਤਾਂ ਦੱਸ ਦਿੱਤੀਆਂ ਵੀ ਆਹ ਮੁਸ਼ਕਲ ਹੈ ਇਸ ਤੇ ਬਹੁਤ ਮਲਟੀਪਲ ਪ੍ਰੋਬਲਮਸ ਹੋ ਸਕਦੀਆਂ ਨੇ ਕਬਜ਼ ਉਹਦੇ ਵਿੱਚੋਂ ਕਨਸਟਿਪੇਸ਼ਨ ਹੋ ਸਕਦੀ ਹੈ ਗੰਮ ਹੋਸਦਾ ਸੋਲਿਊਸ਼ਨ ਨਹੀਂ ਯੈਸ ਖਾਣ ਤੋਂ ਬਾਅਦ ਮੂੰਹ ਤੁਸੀਂ ਸਾਫ਼ਾਈ ਜੀ ਰੱਖਣਾ ਉਹ ਰੱਖ ਸਕਦੇ ਹੋ ਬਰਸ਼ ਕਰ ਸਕਦੇ ਹੋ ਜਾਂ ਮਾਊਥ ਵਾਸ਼ ਯੂਜ਼ ਕਰ ਸਕਦੇ ਹੋ ਚਿੰਗਮ ਹੈ ਜਿਹੜੀ ਉਹ ਕੈਮੀਕਲ ਬਹੁਤ ਦੱਬੀ ਤੁਰਿਆ ਜਾਣਾ ਸਵੇਰ ਦੇ ਕਈ ਪਾ ਕੇ ਆਥਣੇ ਕਢਦੇ ਕੋਲ 2-3 ਹਾਂਜੀ ਪ੍ਰੋਫੈਂਸ਼ਨ ਇਸ ਤਰ੍ਹਾਂ ਹੈ ਕਿ ਇਹਨਾਂ ਦਾ ਇੱਕ ਤੇ ਟੈਸਟਿੰਗ ਬੜੀ ਇੰਪੋਰਟੈਂਟ ਹੈ ਕਿ ਪਹਿਲੇ ਪਤਾ ਲੱਗੇ ਕਿ ਮੇਰੀ ਬਾਡੀ ਚ ਕੀ ਹੁੰਦਾ ਪਿਆ ਜਿਸ ਤਰ੍ਹਾਂ ਕਿ ਆਮ ਜਨਰਲ ਟੈਸਟਿੰਗ ਨਹੀਂ ਹੁੰਦੀ ਜਿਹੜੀ ਅਸੀਂ ਐਡਵਾਂਸ ਰੋਮਿਸ ਕਰਦੇ ਹਾਂ ਸਪੈਸ਼ਲ ਟੈਸਟਿੰਗ ਕਰਦੇ ਹਾਂ ਤਾਂ ਕਿ ਅੰਦਰ ਪਤਾ ਲੱਗੇ ਕਿ ਬਾਡੀ ਚਲਦਾ ਕੀ ਪਿਆ और ਉਹਦੇ ਵਾਸਤੇ ਪ੍ਰिवेंशन ਵਾਸਤੇ ਅਸੀਂ ਕਿ ਡਾਈਟ ਪ੍ਰੋਗਰਾਮ ਬਣਾਨੇ ਆ ਤੇ ਡਾਈਟ ਹਰ ਇੱਕ ਦਾ ਉਹ अपनी ਕਿ ਦਲ ਤੁਸੀਂ ਖਾਣਾ ਚਾਹੀਦਾ ਆਪਣੀ ਬੋਡੀ ਦੇ ਹਿਸਾਬ ਨਾਲ ਔਰ ਦੂਸਰੇ ਆ ਕਿ ਜਿਹੜੇ ਹੁਣ ਅਸੀਂ ਹੈਲਥ ਸੈਮੀਨਾਰ ਕਰਦੇ ਪਿਆ ਹਰ ਮਹੀਨੇ ਅਸੀਂ ਸੈਮੀਨਾਰ ਕਰਨੇ ਆ ਹੁਣ ਜਿਹੜਾ ਕਿ ਅਸੀਂ ਇੱਥੇ 219 ਯੂਨਿਟ ਵਿੱਚ ਹੈ 88 ਐਵਰੀ ਵਿੱਚ ਟ੍ਰਾਈਟਾਉਨ ਬਿਲਡਿੰਗ ਹੈ ਉੱਥੇ ਸੈਮੀਨਾਰ ਕਰਦੇ ਪਿਆ ਸਰੀ ਚ ਦੂਜਾ ਸੈਮੀਨਾਰ ਅਸੀਂ ਐਬਸਫੋਰਡ ਕਰਦੇ ਪਿਆ ਤੇ ਫੋਨ ਨੰਬਰ ਮੈਂ ਦੱਸ ਦੇਣੀ ਆ ਉਹਦੇ ਚ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ 604 593 503 604 593 5030 ਇਹ ਚ ਫੋਨ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਅਰਤੇ ਟੈਸਟਿੰਗ ਕਰवानी ਹੈ ਜਾਂ ਆਪਣੀ ਜੋ ਪ੍ਰੋਬਲਮ ਹੈ ਤੁਹਾਨੂੰ ਉਹਦੇ ਵਾਸਤੇ ਵੀ ਤੁਸੀਂ ਆਪਣੀ ਫ੍ਰੀ ਅਪਾਇੰਟਮੈਂਟ ਅੱਧੇ ਘੰਟੇ ਦੀ ਬੁੱਕ ਕਰਾ ਸਕਦੇ ਹੋ ਔਰ ਅਗਰ ਸੈਮੀਨਾਰ ਵਿੱਚ ਆਣਾ ਤਾਂ ਤੁਸੀਂ ਇਸ ਫੋਨ ਤੇ ਡਾਇਲ ਕਰਕੇ ਤੁਸੀਂ ਆਪਣੇ ਸੈਮੀਨਾਰ ਵਾਸਤੇ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ ਫੋਨ ਨੰਬਰ ਮੈਂ ਦੱਸ ਦੇ ਲਈਆਂ 6045935030 ਔਰ ਅਸੀਂ ਸਪੈਸ਼ਲ ਇੱਕ ਹੋਰ ਲਗਾਇਆ ਵੈਲੈਂਟਾਈਨ ਸਪੈਸ਼ਲ ਕਹਿੰਦੇ ਆ कि एक जे कोई टेस्टिंग ਕਰਾਉਂਦੇ ਹੈ ਤੇ ਦੂਜੇ ਵਾਸਤੇ ਅਸੀਂ 25% ਦਾ ਡਿਸਕਾਊਂਟ ਦੇਨੇ ਪਿਆ ਔਰ ਅਗਰ ਕੋਈ ਕਹੇਗਾ ਕਿ ਅਸੀਂ ਹਰਜੀਤ ਉਹਨਾਂ ਦਾ ਅਸੀਂ ਟਾਕ ਸ਼ੋ ਸੁਣ ਕੇ ਅਸੀਂ ਆਏ ਆ ਉਹਨਾਂ ਨੂੰ 5% ਅਸੀਂ ਐਡੀਸ਼ਨਲ ਡਿਸਕਾਊਂਟ ਦੇਨੇ ਤੋ ਤੁਸੀਂ ਫੋਨ ਕਰਕੇ ਆਪਣੇ ਟੈਸਟ ਵੀ ਕਰਾ ਸਕਦੇ ਹੋ ਔਰ ਵੈਲੈਂਟਾਈਨ ਸਪੈਸ਼ਲ ਹੈ ਦੂਸਰਾ ਜਿਨ੍ਹਾਂ ਨੇ ਪਹਿਲੇ ਟੈਸਟ ਕਰਵਾਏ ਨੇ ਉਹਨਾਂ ਵਿੱਚ ਕੋਈ ਫੈਮਿਲੀ ਮੈਂਬਰ ਔਰ ਐਡ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਅਸੀਂ 25% ਡਿਸਕਾਊਂਟ ਦੇਾਂਗੇ ਇਸ ਤੋਂ ਸਪੈਸ਼ਲ ਔਰ ਸੈਮੀਨਾਰ ਜਿਹੜਾ ਮੈਂ ਇੱਕ ਵਾਰੀ ਫੋਨ ਨੰਬਰ ਹੋਰ ਦੱਸ ਦੇਣੀ ਆ 6045935030 ਇਹਦੇ ਤੇ ਤੁਸੀਂ ਡਿਟੇਲ ਸਰੀ ਦੇ ਸੈਮੀਨਾਰ ਜਾਂ ਐਬਸਵਰਡ ਦੇ ਸੈਮੀਨਾਰ ਨੇ ਉਨਾ ਵਾਸਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਔਰ ਐਪੋਸਫੋਰ ਦੇ ਕਲਾਇੰਟ ਜਿਹੜੇ ਉਹਨੂੰ ਕਾਫੀ ਆਉਂਦੇ ਨੇ ਤੇ ਇਸ ਕਰਕੇ ਤੁਸੀਂ ਉਹਦੇ ਵਾਸਤੇ ਅਪਾਇੰਟਮੈਂਟ ਜਿਹੜੀ ਲੈਣੀ ਹੈ ਅੱਧੇ ਘੰਟੇ ਦੀ ਉਹਦੇ ਵਾਸਤੇ ਵੀ ਤੁਸੀਂ ਬੁਕਿੰਗ ਇਸੇ ਨੰਬਰ ਤੇ ਕਰਾ ਸਕਦੇ ਹੋ 6045935030 ਡਾਕਟਰ ਨੀਸ਼ਾ ਡੋਗਰਾ ਦਾ ਇਹ ਫੋਨ ਨੰਬਰ ਹੈ ਜੀ ਐਡਵਾਂਸਡ ਜੀਨੋਮਿਕਸ ਉਹਨਾਂ ਦੀ ਕਲੀਨਿਕ ਹੈ ਤੇ ਇਹੀ ਉਹਨਾਂ ਦੀ ਵੈਬਸਾਈਟ ਹੈ 6045935030 ਡਾਕਟਰ ਡੋਗਰਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਨਿਸ਼ਾ ਡੋਗਰਾ ਜੀ ਗੱਲਬਾਤ ਕਰ ਰਹੇ ਸਨ ਸਿਹਤ ਤਾਜ਼ੀ ਦਾ ਸਰੋਤ ਰੱਖਣ ਦੇ ਲਈ ਵਧੀਆ ਕੋਸ਼ਿਸ਼ ਕਰੋ ਕਿ ਸਿਹਤ ਤੁਹਾਡੀ ਠੀਕ ਰਹਿ ਸਕੇ ਇਹ ਆਮ ਮੁਸ਼ਕਲ ਹੈ ਜਿਹੜੀ ਉਹਨਾਂ ਨੇ ਅੱਜ ਡਿਸਕਸ ਕੀਤੀ ਹੈ ਕਈ ਵਾਰ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਜਿਹੜੀ ਬੈਡ ਬ੍ਰੈਥ ਹੈ ਫੌਲਸ ਮੈਲ ਲਾ ਲੋ ਮੂੰਹ ਦੇ ਵਿੱਚੋਂ ਆਉਂਦੀ ਹੈ ਉਹ ਸਾਡੇ ਖਾਣ ਪੀਣ ਦੇ ਸਟਾਈਲ ਦਾ ਵੀ ਹੈ ਕਿਉਂਕਿ ਸਾਡੇ ਖਾਣੇ ਦੇ ਵਿੱਚ ਰਾ ਜਿਹੜਾ ਕੱਚਾ ਪਿਆਜ਼ ਅਸੀਂ ਸ਼ਾਮਲ ਕਰਦੇ ਹਾਂ ਉਹ ਦੁਪਹਿਰੇ ਜਾਂ ਫਿਰ ਸਵੇਰੇ ਕਈ ਆਦਤ ਹੈ ਉਹ ਪਿਆਜ਼ ਪਰੌਂਠਿਆਂ ਵਗੈਰਾ ਚ ਪਾਉਂਦਿਆਂ ਆਮਲੇਟ ਚ ਪਾ ਲੈਂਦੇ ਨੇ ਕਈ ਮਿੱਸੀ ਰੋਟੀ ਦੇ ਨਾਲ ਅਚਾਰ ਦੇ ਨਾਲ ਪਿਆਜ਼ ਟੁੰਗ ਲੈਂਦੇ ਆ ਸਵੇਰੇ ਪਿਆਜ਼ ਆ ਜਿਹੜਾ ਉਹਦੀ ਸਮੈਲ ਨਹੀਂ ਜਾ ਸਕਦੀ ਉਹਦੇ ਬਾਅਦ ਤੁਸੀਂ ਕੁਝ ਵੀ ਖਾਈ ਚੱਲੋ ਕਈ ਲਸਣ ਨੂੰ ਗੇੜਾ ਚਾੜਦੇ ਆ ਕੱਟ ਕੇ ਕੱਚਾ ਸਵੇਰੇ ਇਹ ਕੋਈ ਚੀਜ਼ਾਂ ਹੈ ਖਾਧੀਆਂ ਜਾ ਸਕਦੀਆਂ ਨੇ ਪਰ ਇਹ ਕਲੀਆਂ ਜਾਂ ਤੁਸੀਂ ਖਾਣੇ ਹੋ ਜਾਂ ਨਿਰਨੇ ਕਾਲਜੇ ਖਾਣੇ ਹੋ ਕਈ ਵਾਰ ਸਟੋਮਕ ਦੇ ਵਿੱਚੋਂ ਤੁਹਾਡੇ ਮਿਹਦੇ ਦੇ ਵਿੱਚੋਂ ਇਹ ਸਮੈਲ ਆਉਣ ਲੱਗਦੀ ਹੈ ਜਿਹੜੀ ਕਿ ਬੜੀ ਹਿਰਦੇ ਵਿਦਕ ਹਿਰਦੇ ਵਿਦਕ ਨਹੀਂ ਜਿਹੜੀ ਬਹੁਤ ਨਾਲ ਦੇ ਨਾਲ ਦਾ ਜਿਹੜਾ ਕੋਈ ਹੁੰਦਾ ਉਹਦੇ ਲਈ ਬੜੀ ਇਹ ਖਤਰਨਾਕ ਹੈ ਦੇ ਤੇ ਕਈ ਵਾਰ ਤੁਹਾਡੇ ਪਰਿਵਾਰ ਦੇ ਵਿੱਚ ਜੀਵਨ ਸਾਥੀਆਂ ਤੁਸੀਂ ਮੀਆਂ ਬੀਵੀਆਂ ਤੋਂ ਤੁਹਾਡਾ ਆਪਸ ਵਿੱਚ ਇਹ ਗੱਲਾਂ ਕਲੀਅਰ ਹੋਣੀ ਚਾਹੀਦੀਆਂ ਜੇ ਕੋਈ ਤੁਹਾਨੂੰ ਚੀਜ਼ ਮੁਸ਼ਕਲ ਕਰਦੀ ਹੈ ਕਿ ਜਿਹਨੂੰ ਸੁਧਾਰਨੀ ਚਾਹੀਦੀ ਨਾ ਕਿ ਤੁਸੀਂ ਇੱਕ ਦੂਜੇ ਤੋਂ ਪਰਾਂ ਭੱਜੋ ਹਰ ਚੀਜ਼ ਦਾ ਇਲਾਜ ਹੈ ਦੂਜਾ ਸਾਨੂੰ ਆਦਤ ਪੈ ਗਈ ਗਮ ਦੀ ਜੇ ਕਿਤੇ ਗਮ ਦਾ ਪੱਤਾ ਪਿਛਲੇ ਬੰਨੇੋਂ ਪੜ ਕੇ ਵੇਖੋ ਨਾ ਵੀ ਉਹ ਚ ਕਿੰਨੇ ਕੈਮੀਕਲ ਨੇ ਅੰਦਰ ਹਿਲਦਾ ਤੇ ਉਹਨੂੰ ਆਪਾਂ ਚੱਬਦੇ ਆਂ ਸਾਰਾ ਦਿਨ ਕਈ ਵਾਰ ਤੇਜ਼ ਬਹੁਤ ਚੱਬਦੇ ਆ ਉਹ ਟੈਨਸ਼ਨ ਆਪਣੀ ਰਿਲੀਜ਼ ਕਰ ਰਹੇ ਹੁੰਦੇ ਨੇ ਤੇ ਫਿਰ ਉਹ ਇੰਨੀ ਤੇਜ਼ ਚੱਬਦੇ ਆ ਨਾ ਉਹਨੂੰ ਮੂੰਹ ਖੋਲ ਕੇ ਚੱਬਦਿਆ ਕਈ ਟਕ ਟਕ ਟਕ ਜਿਵੇਂ ਕਟਖੋੜੇ ਦੀ ਆਵਾਜ਼ ਆਉਂਦੀ ਹੁੰਦੀ ਹੈ ਨਾ ਤਾਲੀ ਤੇ ਆਪਣੇ ਲੱਗਿਆ ਹੁੰਦਾ ਸੀ ਗਲੀਆਂ ਕੱਢਣ ਤਿੱਖੀ ਚੁੰਝ ਵਾਲਾ ਤੇ ਉਹ ਜੀ ਆਵਾਜ਼ ਆਉਂਦੀ ਹੈ ਫਿਰ ਉੱਚ ਤੇਜ਼ ਦੱਬਦੇ ਬੈਸਟ ਇਹੀ ਹੈ ਜੇ ਤੁਸੀਂ ਤੁਹਾਡੀ ਵਰਕਪਲੇਸ ਤੁਹਾਡੇ ਕੋਲ ਸਮਾਂ ਹੈ ਜਗ੍ਹਾ ਹੈ ਜਾਂ ਗੱਡੀ ਦੇ ਵਿੱਚ ਵੀ ਕੋਈ ਬਹੁਤਾ ਕੰਮ ਨਹੀਂ ਹੈ ਤੇ ਤੁਸੀਂ ਆਪਣਾ ਮਾਊਥਵਾਸ਼ ਜਿਹੜਾ ਉਹ ਗੱਡੀ 'ਚ ਰੱਖ ਲਓ ਤੁਸੀਂ ਅਸਾਈਨਮੈਂਟ ਤੇ ਜਾਣਾ ਦੇਖੋ ਡਿਪੈਂਡ ਕਰਦਾ ਕੰਮ ਤੁਸੀਂ ਕੀ ਕਰਦੇ ਹੋ ਕੰਮ ਤੋਂ ਬਿਨਾਂ ਵੀ ਚਾਹੇ ਤੁਸੀਂ ਕੁਝ ਵੀ ਕਰਦੇ ਹੋ ਆਪਣੇ ਆਪ ਨੂੰ ਸਾਫ਼ ਰੱਖਣਾ ਤੁਹਾਡਾ ਫਰਜ਼ ਹੈ ਕਲੀਨ ਰਹਿਣਾ ਬਹੁਤ ਜ਼ਰੂਰੀ ਹੈ ਜਦ ਤੁਸੀਂ ਮਿੱਠਾ ਕੁਝ ਖਾ ਲਿਆ ਚਾਹ ਪੀ ਲਈ ਦੁੱਧ ਪੀ ਲਈ ਦੁੱਧ ਪੀ ਲਿਆ ਪੀਪੇ ਵਾਲੇ ਬਿਸਕਟ ਲਾ ਕੇ ਲਾਇਨ ਸਟ ਦੇ ਅੰਦਰ ਉਹ ਮੂੰਹ ਦੇ ਵਿੱਚੋਂ ਮੂੰਹ ਨੂੰ ਤੁਸੀਂ ਫਰੈਸ਼ ਜੇ ਨਹੀਂ ਕਰੋਗੇ ਉਹਦੇ ਵਿੱਚੋਂ 스멜 ਆਉਣੀਓ ਆਉਣੀ ਹੈ ਉਹ ਫਿਰ ਕਿਸੇ ਨੂੰ ਪ੍ਰਭਾਵਿਤ ਜੇ ਨਾ ਕਰੇ ਤੁਹਾਨੂੰ ਆਪਣੇ ਆਪ ਨੂੰ ਵੀ ਤੁਹਾਡਾ ਮੂੰਹ ਫਰੈਸ਼ ਨਹੀਂ ਤੁਸੀਂ ਕਿਸੇ ਨੂੰ ਮਿਲਦੇ ਹੋ ਓਬਵੀਅਸਲੀ ਨੇੜੇ ਹੋ ਕੇ ਖੜੇ ਹੋ ਕਈ ਤੁਹਾਡੇ ਉੱਪਰ ਚੜ ਜਾਂਦੇ ਆ ਤੇ ਉਹ ਤੋਂ ਤੁਸੀਂ ਪਰਾਂ ਨੂੰ ਹੁੰਦੇ ਹੋ ਫਿਰ ਉੱਪਰ ਨੂੰ ਚੜ ਜਾਂਦੇ ਇਹ ਬਹੁਤ ਮੁਸ਼ਕਲ ਕਿ ਜਦੋਂ ਢੁੱਟੜੀ ਆਉਂਦੀ ਹੁਣ ਕਈਆਂ ਦੀ ਰਾਤ ਨੂੰ ਪੀਤੀ ਹੁੰਦੀ ਆ ਸਵੇਰ ਨੂੰ ਜੱਫੀ ਜਾਂ ਸਿਰਦੇ ਆਂਦਰੋਂ ਸਕੌਚ ਜਿਹੜੀ ਨੱਕ ਦੇ ਵਿੱਚ ਭੂਰੀ ਕੀੜੀ ਵਾਂਗੂੰ ਲੱਗੀ ਅਗਲੇ ਕਿਉਂਕਿ ਰਾਤ ਨੂੰ 1.5 ਵਜੇ ਤੱਕ ਪੀਤੀ ਆ ਉਹ ਲੰਮੇ ਸਮੇਂ ਵਾਲੀ ਆ ਤੇ ਸਵੇਰੇ ਜਾਂ 6 ਵਜੇ ਨਹਾਉਂਦੇ ਨੇ ਉਹ ਦੁਆਰਾ ਫੇਰ ਚੜ ਜਾਂਦੀ ਆ ਲਾਲ ਅੱਖਾਂ ਹੋਈਆਂ ਹੁੰਦੀਆਂ ਨੇ ਗੇਰੂ ਵਾਲੀਆਂ ਗਲੇਡੂ ਨਿਕਲੇ ਆ ਹੁੰਦੇ ਨੇ ਜਿਵੇਂ ਠੰਡ 'ਚ ਸਕੂਟਰ ਚਲਾ ਕੇ ਆਇਆ ਹੁੰਦਾ ਪਿੰਡੋਂ ਥੋੜਾ ਜਿਹਾ ਆਪਣੇ ਆਪ ਨੂੰ ਬਾਕੀ ਖਾਣਾ ਇਨਟੇਕ ਆ ਜਿਹੜੀ ਉਹ ਸੱਤ ਹੈ ਮੈਂ ਤਾਂ ਅੱਜ ਸੰਦੇਹਾ ਇੱਕ ਕੈਚਅਪ ਬਣਦੀ ਕਿਸ ਨੇ ਵੀਡੀਓ ਭੇਜਤੀ ਅੰਦਰ ਖਿਲ ਗਿਆ ਮੈਨੂੰ ਡਰ ਲੱਗਿਆ ਵੀ ਕੈਚਅਪ ਜਿਹੜੀ ਖਾਧੀ ਆ ਪਹਿਲਾਂ ਉਹਦਾ ਕੀ ਹਿੱਲਾ ਕਰੀਏ ਗਾਂ ਤਾਂ ਬਹੁਤ ਔਖ ਹੁਣ ਉਸ ਦੇ ਬਾਰੇ ਪ੍ਰਮਾਣਤਾ ਹੈ ਨਹੀਂ ਪਹਿਲਾਂ ਤਾਂ ਗੱਲ ਇਹ ਜ਼ਰੂਰ ਸੀ ਵੀ ਟਮਾਟਰ ਨੇ ਜਿਹੜੇ ਜਿਨ੍ਹਾਂ ਦੀ ਕੈਚਅਪ ਬਣਦੀ ਆ ਉਹਨਾਂ ਨੂੰ ਸਾਫ਼ ਸੂਫ਼ ਨਹੀਂ ਕੀਤਾ ਜਾਂਦਾ ਕੋਈ ਵਿੱਚ ਗਲੇ ਹੋਏ ਜਾਂ ਵਿੱਚ ਦੀ ਸੁਣ ਸਣ ਫਿਰਦਾ ਨੰਗਾ ਦਿੰਦੇ ਆ ਵਿੱਚ ਵੀ ਇਹਦੇ ਵਿੱਚ ਤਾਂ ਹੈਰਾਨ ਹੋ ਗਿਆ ਮੈਂ ਬੀਫ ਦੇ ਮਿੱਟ ਜਿਹੜੀ ਆ ਉਹ ਬਲੱਡ ਵਗੈਰਾ ਉਹਦਾ ਸਾਰਾ ਇਕੱਠਾ ਕਰਕੇ ਜੰਮਿਆ ਹੋਇਆ ਉਹਨੂੰ ਵਿੱਚ ਠੋਕ ਦਿੰਦੇ ਆ ਮੈਂ ਤਾਂ ਇਹ ਦੁਨੀਆ ਜਾਊ ਕਿੱਥੇ ਆਰਗੈਨਿਕ ਵੱਲ ਨੂੰ ਲੋਕ ਭੱਜ ਰਹੇ ਨੇ ਇੱਕ ਤਾਂ ਗੱਲ ਜ਼ਰੂਰ ਕਰੋ ਜਿੰਨੇ ਵੀ ਤੁਸੀਂ ਓ ਕੋਲ ਘਰ ਆ ਘਰ ਨਹੀਂ ਤਾਂ ਬੇਸਮੈਂਟ ਵਾਲਿਆਂ ਨੇ ਉਹ ਵੀ ਉੱਪਰ ਵਾਲਿਆਂ ਨਾਲ ਗੱਲ ਕਰਕੇ ਸਾਂਝੀ ਕਰ ਲਓ ਗਾਰਡਨ ਲਾਉਣਾ ਸ਼ੁਰੂ ਕਰੋ ਹਰ ਹਾਲ ਤੇ ਘਰ ਜਿਹੜਾ ਤੁਹਾਡਾ ਉਹਦੇ ਪਿੱਛੇ ਘੱਟੋ-ਘੱਟ 10 ਮੀਟਰ ਬਾਈ 10 ਮੀਟਰ ਦੀ ਜਗ੍ਹਾ ਜਾਂ 20 ਫੁੱਟ ਬਾਈ 20 ਫੁੱਟ ਦੀ ਜਗ੍ਹਾ अपना गार्डन शुरू करो, ਇਹ ਖਾਣਾ ਜਿਹੜਾ ਕੰਮ ਹੈ ਇਹ ਬਹੁਤ ਵੱਡੀ ਮੁਸ਼ਕਲ ਹੋ ਰਹੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਇਹ ਮੁਸ਼ਕਲ ਆ ਰਾ ਦੁੱਧ ਨਹੀਂ ਆਪਾਂ ਨੂੰ ਲੈ ਸਕਦੇ ਆਪਾਂ ਡੇਰੀ ਫਾਰਮ ਦੁੱਧ ਨਹੀਂ ਵੇਚਦੇ ਅਸਲ ਤਾਂ ਜੇ ਉਹ ਦੁੱਧ ਉਹ ਮਿਲੇ ਉਹ ਸਭ ਤੋਂ ਬੈਸਟ ਹੈ ਇਹ ਜਿਹੜਾ 20 20 ਦਿਨ 15 15 ਇਹ ਤਾਂ ਚੀਜ਼ਾਂ ਨਹੀਂ ਬੰਦ ਕਰ ਸਕਦੇ ਢਿੱਡ 'ਚ ਤਾਂ ਕੁਝ ਪਾਉਣੇ ਆ ਪਰ ਢਿੱਡ 'ਚ ਪਾਉਣ ਤੋਂ ਪਹਿਲਾਂ ਹੁਣ ਜ਼ਰੂਰ ਦੇਖਿਆ ਕਰੋ ਮੈਂ ਪਾਕ ਹੀ ਰਿਹਾ ਬੜਾ ਕੁਝ ਲਿਖਿਆ ਬਹੁਤ ਫਾਸਟ ਫੂਡ ਤੇ ਕਹਿੰਦੇ ਨੇ ਇਹ ਵਾਈਟ ਚਿਕਨ ਮੀਟ ਆ ਜੀ ਇਹ ਆ ਜੀ ਉਹ ਆ ਪ੍ਰੋਸੈਸਡ ਮੀਟ ਇੱਕ ਹੈ ਇੱਕ ਵਾਈਟ ਜਿਹੜਾ ਚਿਕਨ ਮੀਟ ਹੈ ਉਹਦੇ ਅਲੱਗ-ਅਲੱਗ ਨੇ ਪ੍ਰੋਸੈਸਡ ਜਿਹੜਾ ਹੈ ਜਿਹੜਾ ਬਹੁਤ ਤੁਸੀਂ शकਦੇ ਆ ਉਹਦੀ ਬੜੀ ਪੈਟੀ ਤੁਹਾਨੂੰ ਸੁਣੀ ਲੱਗਦੀ ਹੈ ਮੰਮੇ ਦੇ ਨਾਲ ਕਹਿੰਦੇ ਉਹ ਚਿਕਨ ਆ ਇਹ ਉਹਨੂੰ ਪੜਿਓ ਦੇਖਿਓ ਕਿੱਥੋਂ ਪੈਟੀ ਬਣਦੀ ਹੈ ਅੱਜ ਕਹਿੰਦਾ ਵਧੀਆ ਉਹਦੇ ਚੋਂ ਚਿਕਨ ਦੇ ਵਿੱਚੋਂ ਮੀਟ ਫਿਰ ਉਹਨੂੰ ਪੀ ਦਿੰਦੇ ਐ ਪੀ ਕੇ ਫਿਰ ਉਹਦੇ ਬਣਾਉਂਦੇ ਆ ਗੋਲ ਆ ਜਿਹੜੀਆਂ ਆਪਾਂ ਛਕਦੇ ਆਂ ਲਾ ਕੇ ਵਿੱਚ ਮੈਨਿਸ ਕਹਿੰਦਾ ਬੱਲਾ ਬੱਲਾ ਬਹਿ ਜਾ ਹੋ ਗਈ ਸਰੇ ਲਾਗੀ ਗੱਲ ਮੁਰਗਾ ਖਾਦਾ ਅੱਜ ਅੱਲੀ ਦਾ ਗੱਲ ਵੈਜੀਟੇਰੀਅਨ ਸਭ ਤੋਂ ਵਧੀਆ ਵੈਜੀਟੇਰੀਅਨ ਬਣਾਓ ਜੇ ਕੁਝ ਖਾਣੇ ਹੋ ਤਾਂ ਹੱਥੀ ਪਕਾ ਕੇ ਹੱਥੀ ਬਣਾ ਕੇ ਗ੍ਰਿਲਡ ਫੂਡ ਸਭ ਤੋਂ ਵਧੀਆ ਉਸਨੂੰ ਖਾਵੋ ਜੇ ਤੁਹਾਨੂੰ ਹੈ ਯਾ ਚਿਕਨ ਤੋਂ ਬਿਨਾ ਅਹ ਸਿੱ ਤਕੜੇ ਹੁੰਦੇ ਨਹੀਂ ਬੀਫ ਨੂੰ ਬਹੁਤ ਗੇੜਾ ਚਾੜਦੇ ਹੋ ਤੁਸੀਂ ਥੋੜਾ ਜਿਹਾ ਖਾਣ ਪੀਣ ਇਨਟੇਕ ਆਪਣੇ ਠੀਕ ਕਰੋ ਕੈਂਸਰ ਦੇ ਬਹੁਤ ਜ਼ਿਆਦਾ ਰੋਗੀ ਹੋ ਰਹੇ ਨੇ ਇੱਥੇ ਜਿੱਨੇ ਪੰਜਾਬ 'ਚ ਤਾਂ ਪਾਣੀਆਂ ਨੇ ਮਾਰ ਲਏ ਉੱਥੇ ਤਾਂ ਬੀਫ ਤੇ ਮੁਰਗਾ ਨਹੀਂ ਜੁੜਦਾ ਇੱਥੇ ਜਿਹੜੇ ਮਾਂਜਲੇ ਹੋਏ ਮਾੜੇ ਫੂਡ ਨੇ ਮਾਂਜਲੇ ਹਟਜੋ ਫਾਸਟ ਫੂਡ ਆ ਜਿਹੜਾ ਉਹ ਬਹੁਤ ਔਖੀਆਂ ਗੱਲਾਂ ਸਮਝ ਲਓ ਕੈਨ ਫੂਡ ਆ ਜਿਹੜਾ ਸਰਦਾਰनियां ਨਾ ਗਰਾਂ ਲਾ ਕੇ ਲਿਆਉਂਦੀਆਂ ਰੱਖ ਕੇ ਕਿਉਂਕਿ ਤੇਜ਼ੀ ਬਹੁਤ ਹੁੰਦੀ ਹੈ ਉਨੇ ਉਧਰੋਂ ਭੱਜਣਾ ਉਹਨੇ ਉਧਰੋਂ ਕੱਢਿਆ ਕੇਨ ਤੇ ਸਿੱਟਿਆ ਫਰਾਈ ਪੈਨ ਚ ਗਰਮ ਕਰਕੇ ਚੱਕ ਉਹਨੂੰ ਖਰਾਬ ਹੋਣ ਤੋਂ ਬਿਨਾ ਖਾਓ ਤੇ ਉਹਦੇ ਕੈਮੀਕਲ ਐਨੇ ਪਾਏ ਹੁੰਦੇ ਆ ਤੁਸੀਂ ਉਹਦਾ ਕਦੇ ਟੀਨ ਕੋਈ ਵੀ ਚੀਜ਼ ਲੈਣੇ ਉਹਦੇ ਇਨਗਰੀਡੀਐਂਟਸ ਪਿੱਛੋਂ ਪੜ ਕੇ ਵੇਖੋ ਗੱਲ ਫੇਰ ਕਰਿਓ ਵੀ ਕੀ ਐ ਜੂਣਾ ਪੈਣਾ ਇਹ ਦੁਨੀਆ ਚ ਬਾਹਰੋਂ ਵੀ ਖਾਣਾ ਪੈਣਾ ਓਬਵੀਅਸਲੀ ਸੋਸ਼ਲ ਸਿਸਟਮ ਆਪਣਾ ਆਪਾਂ ਜਾਣਾ ਪਰ ਇਨਟੇਕ ਫੂਡ ਖਰੀਦਣਾ ਕਿਹੜਾ ਫੂਡ ਖਾਣਾ ਕਿਹੜਾ ਜੇ ਬਸ ਇਹ ਗੱਲ ਕਰੋ ਜਿਹੜੇ ਪੰਜਾਬ ਚ ਤੁਸੀਂ ਵੱਡੇ ਹੋ ਕੇ ਆਏ ਹੋ ਜਿਹੜਾ 20 ਸਾਲ ਦੀ ਉਮਰ ਤੱਕ ਪੰਜਾਬ ਚ ਖਾਂਦੇ ਰਹੇ ਹੋ ਉਹ ਖਾਣ ਲੱਗ ਜੋ ਤੇ ਰੋਗਾਂ ਤੋਂ ਮੁਕਤ ਹੋ ਜਾਓਗੇ ਬਸ ਸੋਚ ਲਓ ਪੰਜਾਬ ਚ ਕੀ ਖਾਂਦੇ ਹੁੰਦੇ ਸੀ ਉਹੀ ਪੰਜਾਬ ਚੋਂ ਆਪਾਂ ਆਏ ਆ 6 ਮਹੀਨੇ ਬਾਅਦ ਤਾਂ ਭਾਂਡੇ ਕਿਤੇ ਖਾਂਦੇ ਹੁੰਦੇ ਜਿੱਦਣ ਫੁੱਫੜ ਆਉਂਦਾ ਹੁੰਦਾ ਵੀ ਉਹਨੂੰ दारू ਨਾਲ ਦੇਣੇ ਨੇ ਹੁਣ ਚਲ ਵਿੱਚੇ ਆਪਾਂ ਖਾ ਲੈਨੇ ਜਿਹੜੇ ਕੋਈ ਹਫਤੇ ਪੰਜ ਚਾਰ ਦਿਨ ਬਾਅਦ ਖਾਂਦੇ ਸੀ ਉਹਨਾਂ ਦੇ ਘਰੇ ਮੁਰਗੀਆਂ ਰੱਖੀਆਂ ਹੋਈਆਂ ਸੀ ਮੀਟ ਦਾ ਨਾਉ ਨਹੀਂ ਸੀ દિਵਾਲੀ ਦਸਹਿਰੇ ਨੂੰ ਜਿਹੜੇ ਇੱਥੇ ਨਾ ਹੁਣ ਗੱਲਾਂ ਕਰਦੇ ਆ ਮੁੱਛਾਂ ਤੇ ਹੱਤ ਪੇਰ ਕੇ ਵੀ ਨਿੱਤੇ ਸ਼ਕੀਦਾ ਸੀ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇਹ ਸੰਸਕ੍ਰਿਤੀ ਉਹ ਹੈ ਨਹੀਂ ਸੀ ਘਰਾਂ ਦੇ ਵਿੱਚ ਮੀਟ ਬਣੇ ਬਹੁਤ ਲੋਕ ਇਸ ਚੀਜ਼ ਨੂੰ ਮਾੜਾ ਮੰਨਦੇ ਸੀ દિਵਾਲੀ ਦਸਹਿਰੇ ਲੋਹੜੀ ਤੇ ਹ ਮਹੀਨੇ ਚ 5 7 ਵਾਰ 10 ਵਾਰ ਸੱਚ ਸੌਰੀ ਇਹ ਪਿੰਡਾਂ ਦੀ ਗੱਲ ਸੀ ਚਲੋ ਜਿਹੜੇ ਕੋਈ ਸ਼ਹਿਰਾਂ ਸ਼ੂਰਾਂ ਆਲੇ ਨੇ ਉਹ ਅਲੱਗ ਗੱਲ ਆ ਉਹਦੀ ਮੈਂ ਨਹੀਂ ਗੱਲ ਕਰਦਾ ਪਰ ਇਹ ਸੱਚ ਸੀ ਔਰ ਹੈ ਸੀ ਰੋਗ ਕਿਸੇ ਨੂੰ ਖੂਹ ਦੇ ਉੱਪਰ ਪਿਆਜ਼ ਉੱਥੇ ਲਸਣ ਉੱਥੇ ਹੀ ਹਲਦੀ ਉੱਥੇ ਸਾਰਾ ਕੁਝ ਸੀ ਉੱਥੇ ਹੀ ਸਾਗ ਉੱਥੇ ਪਾਲਕ ਉੱਥੇ ਮੇਥੇ ਉੱਥੇ ਹੀ ਧਨੀਆ ਸਾਰਾ ਕੁਝ ਬੰਦ ਗੋਭੀ ਉੱਥੇ ਪੂਰ ਦੂਜੀ ਗੋਭੀ ਉੱਥੇ ਹੀ ਉੱਥੇ ਛਰਗਮ ਉੱਥੇ ਗਾਜਰਾ ਉੱਥੇ ਸਾਰਾ ਕੁਝ ਉੱਥੇ ਸੀ ਮਟਰ ਆੜਾਂ ਤੇ ਲਾਏ ਹੁੰਦੇ ਸੀ ਹੈ ਸੀ ਬਿਮਾਰੀ ਕਿਸੇ ਨੂੰ ਰੂੜੀ ਦੀ ਖਾਦ ਸੀ ਹੁਣ ਵੀ ਬਹੁਤ ਘਰਾਂ ਨੇ ਇੱਥੇ ਬਣਾਏ ਹੋਏ ਨੇ ਜਿਹੜੇ ਤਾਂ 5 ਮਹੀਨੇ ਨਾਲ-ਨਾਲ ਖਾਣੇ ਨੇ ਨਹੀਂ ਤਾਂ ਉਹ ਫਰੀਜ ਫ੍ਰੀਜ਼ ਕਰਕੇ ਲੇਬਲ ਲਾ ਕੇ ਰੱਖ ਨੇ ਉਹਨਾਂ ਦਾ ਟੇਸਟ ਕਦੇ ਵੇਖੋ ਕੋਈ ਡੋਡਾ ਹੋਵੇ ਮਿੱਤਰ ਪਿਆਰਾ ਉਹ ਦੇਖਿਓ ਕਹੇ ਜੀ ਚੀਜ਼ ਆ ਹਰ ਘਰ ਦੇ ਵਿੱਚ ਕਿਚਨ ਗਾਰਡਨ ਆਪਣਾ ਲਾਉਣਾ ਸ਼ੁਰੂ ਕਰੋ ਆ ਗਰਮੀ ਦੇ ਵਿੱਚ ਇਹ ਪੱਕਾ ਕਰ ਲਓ ਵੀ ਅਸੀਂ ਲਾਉਣਾ ਹੀ ਲਾਉਣਾ ਉਹਦੇ ਚ 3 ਦਿਨ ਵੀ ਸਬਜ਼ੀ ਤੁਹਾਨੂੰ ਮਿਲੂਗੀ ਐਟ ਬੋਡੀ ਦੇ ਜਿਹੜੇ ਸਫਾਈ ਅੰਦਰੋਂ ਹੋਊਗਾ ਜਿਹੜੀਆਂ ਗੱਲਾਂ ਚੱਲ ਗਿਆ ਜੀ ਡੀਟੌਕਸ ਕਰੋ ਜੀ ਆਹ ਕਰੋ ਜੀ ਪਾਊਡਰ ਅੰਦਰ ਸਟੋ ਜੀ ਡਾਇਟ ਤੇ ਚਲੋ ਜੀ ਕੁਦਰਤ ਨੇ ਸਰੀਰ ਇੰਨਾ ਵਧੀਆ ਬਣਾਇਆ ਉਹ ਆਪ ਇਹ ਕਲੀਨ ਕਰਦਾ ਇਹ ਡੀਟੌਕਸੀਫਿਕੇਸ਼ਨ ਇਹ ਉਹ ਦਾ ਕੋਰਸ 20 ਦਿਨ ਦਾ ਕੋਰਸ 25 ਕੱਖ ਨਹੀਂ ਹੈ ਇਹਦੇ ਵਿੱਚ ਇਹ ਸਭ ਫੇਕ ਹੈ ਬੋਡੀ ਖੁਦ ਡੀਟੌਕਸੀਫਾਈ ਆਪਣੇ ਆਪ ਨੂੰ ਕਰਦੀ ਹੈ ਇੰਨੀ ਵਧੀਆ ਉਹਨੇ ਸਿਸਟਮ ਕੀਤਾ ਹੋਇਆ ਨਾ ਇੰਨੀ ਵਧੀਆ ਐਨਟੋਮੀ ਐ ਉਹਦੇ ਵਿੱਚ ਹੀ ਐ ਸਾਰਾ ਕੁਝ ਫੜਕੇ ਵੇਖੋ ਸਰੀਰ ਕੰਮ ਕਿਵੇਂ ਕਰਦਾ ਪਰ ਉਹਦੀ ਇਨਟੇਕ ਤਾਂ ਠੀਕ ਰੱਖੋ ਗੱਡੀ 'ਚ ਸਿੰਥੈਟਿਕ ਔਇਲ ਪਾਉਣਾ ਕਹਿੰਦਾ 10000 ਮੀਲ ਕਿਲੋ ਘੱਟੋ ਘੱਟ ਚੱਲੇ ਆਰਾ ਕੋ ਤੁਰਦੇ ਫਿਰਦੇ ਡਰਾਈਵ ਥਰੂ ਖਿੱਚ ਲਾਇ ਜਦ ਓਕਣੇ ਦੰਦੇ ਵੱਢ ਲੈ ਨਾਲ ਕੋਕ ਪੀਲਾ ਉਹੀ ਹੱਥ ਸਟੀਅਰਿੰਗ ਨੂੰ ਲਾ ਲੈ ਫੇਰ ਚੱਕ ਲੈ ਸੈਂਡਵਿਚ ਫੇਰ ਰੱਖ ਲੈ ਜਿਹੜੇ ਬੰਦੇ ਕੋਲ ਬੈਠ ਕੇ ਵਕਤ ਨਹੀਂ ਖਾਣਦਾ ਉਹ ਕਾਦੇ ਲਈ ਕਮਾਉਂਦਾ ਫਿਰਦਾ ਉਹ ਜਾਂ ਖੂ ਖਾਤੇ ਚੋਂ ਘਾ ਪੈਸਾ ਡਿੱਗ ਜਾਣਾ ਵਿੱਚੇ ਸਿਹਤ ਡਿੱਗ ਪੈਣੀ ਆ ਕੋਈ ਫਾਇਦਾ ਨਹੀਂ ਕੁਦਰਤ ਨੇ ਚੀਜ਼ ਬਣਾਈ ਆ ਮਾਲਕ ਨੇ ਕਿਹਾ ਵੀ ਖਾਣਾ ਵੇਖ ਕੇ ਤੁਹਾਡੀ ਜੀਭ ਤੇ ਉਹ ਤਰਲ ਪਦਾਰਥ ਆਉਂਦਾ ਜੀ ਨੇ ਉਹ ਖਾਣਾ ਹਾਜ਼ਮ ਕਰਨਾ ਜਿਹੜਾ ਚਲਾਉਂਦਾ ਹੀ ਗੱਡੀ ਐ ਹੱਥ ਚ ਸੈਂਡਵਿਚ ਫੜਿਆ ਦੂਜੇ ਹੱਥ ਚ ਸਟੀਅਰਿੰਗ ਫੜਿਆ ਫਿਰ ਖੱਬੇ ਹੱਥ ਚ ਸੈਂਡਵਿਚ ਫੜਿਆ ਸੱਜੇ ਨਾਲ ਸਟੀਅਰਿੰਗ ਫੜਿਆ ਵਿੱਚੇ ਸਿਗਨਲ ਲਾਉਣੇ ਨੇ ਵਿੱਚੇ ਕਿਸ ਨੂੰ ਅੱਗਲੇ ਗਾਲ ਕੱਢਣੀ ਆ ਵਿੱਚੇ ਮੈਸੇਜ ਆਉਣਾ ਉਹ ਹੱਥਾਂ ਨੇ ਕੀ ਸੈਂਡਵਿਚ ਖਾ ਲੈਣਾ ਤੇ ਉਹਨਾਂ ਢਿੱਡ ਕੀ ਦੇ ਦੇਣਾ ਜਾ ਕੇ। ਚਾਹ ਦੀ ਸਮੋਸੇ ਵੇਰ ਦੀ ਲੈ ਕੇ ਗਏ ਆ ਅੱਥ ਨੇ 4 ਵਜੇ ਫੇਰ ਉਹਦੇ ਚੋਂ ਆਪਾਂ ਪੀਨੇ ਆ। ਜਾਂ ਬੰਦ ਪਈ ਆ ਬੰਦ ਨੂੰ ਖੋਲ ਦਿਓ ਐਟ ਲੀਸਟ ਘੰਟੇ ਦੀ ਚਾਹ ਦੇ ਵਿੱਚ ਕੀ ਹੋਊਗਾ। ਇੰਨੇ ਬਹੁਤ ਜ਼ਰੂਰੀ ਆ ਵਧੀਆ ਇਹਨੂੰ ਕਰੋ ਜੇ ਤੁਹਾਡਾ ਤੋਂ 250 ਡਾਲਰ ਦਾ ਗ੍ਰੋਸਰੀ ਦਾ 400 ਦਾ ਬਿਲਾ ਉਹ 700 ਦਾ ਹੋ ਜੂ 300 ਦੀਆਂ ਦਵਾਈਆਂ ਤੁਸੀਂ ਬਚਾ ਲੋਗੇ ਜੇ ਵਧੀਆ ਖਾਣਾ ਸ਼ੁਰੂ ਕਰ। ਨਾ ਭੱਜਿਆ ਕਰੋ 40 ਸੈਂਟਾਂ ਦੇ 25 ਸੈਂਟਾਂ 30 ਸੈਂਟਾਂ ਦੇ ਪਿੱਛੇ 30 ਸੈਂਟ ਵਾਲਿਆਂ ਦੇ ਜਾ ਕੇ ਵੀ ਫਿਰ ਬਾਹਰ ਲਈ ਬਿਲਕੁਲ ਖੜਦੇ ਜਿਹੜੇ 20 ਸੈਂਟ ਨੂੰ ਲਾਏ ਹੋਏ ਨੇ ਜਹਾਜੇ ਵਾਲੇ ਉਹ ਜਿਹੇ ਕੁਜੇ ਜਹਾਜਾ ਅਸੀਂ ਭਾਲਦੇ ਹਾਂ ਉਹਦੇ ਸਾਨੂੰ ਵੇਚਣ ਲੱਗ ਗਏ ਉਹ ਜੇ ਕਹੋਗੇ ਵੀ ਅਸੀਂ ਮਾੜਾ ਨਹੀਂ ਲੈਣਾ ਅਸੀਂ 40 ਸੈਂਟ ਦੀ ਜਗ੍ਹਾ 1.5 ਡਾਲਰ ਦਵਾਂ ਚੀਜ਼ ਸਾਨੂੰ ਵੜੇ ਜਿਹੜੇ ਵਧੀਆ ਲੈਣ ਲੱਗ ਜਾਣਗੇ ਤੁਹਾਨੂੰ ਗ੍ਰੇਡ ਉਹਦੇ ਦੇਖੋ ਇੱਕ ਪਿਆਜਾਂ ਦਾ ਬੋਰਾ 10 ਡਾਲਰ ਦਾ ਇੱਕ 25 ਡਾਲਰ ਦਾ ਹੈ ਡਾਲਰ ਵਾਲੇ ਵਿੱਚ ਸੋਨਾ ਪਾ ਕੇ ਨਹੀਂ ਵੇਚਦੇ ਪਰ ਉਹ ਫਰਸਟ ਗ੍ਰੇਡ ਮੀਨਸ ਫਰਸਟ ਗ੍ਰੇਡ ਹੈ। ਉਹ ਕਨਾਗੰਦੇ ਬਾਗਾ ਤੋਂ ਆਇਆ ਫਰੂਟ ਚੌਥੀ ਜਗ੍ਹਾ ਤੇ ਜਿੱਥੇ ਡਿਗੂਗਾ ਜਾ ਕੇ ਜਦੋਂ ਉੱਥੋਂ ਖਰੀਦਣਾ ਜਾਂ ਦੇਣਾ ਹੀ ਨਹੀਂ ਅਸੀਂ ਕੁਛ ਉਹ ਕੋਲੋਂ ਕਿੱਥੋਂ ਪਾ ਦੇ। ਜੇ ਤੁਸੀਂ ਬਾਹਰ ਵਧੀਆ ਬਣੋ ਤੁਹਾਨੂੰ ਵਧੀਆ ਉਹ ਵੇਚਣ। ਇਹਨਾਂ ਦੇਸ਼ਾਂ 'ਚ ਆ ਕੇ ਵੀ ਜੇ ਅਸੀਂ ਕਿਰਸ਼ਾ ਕਰਨਾ ਜਿੱਥੇ ਮਾਲਕ ਨੇ ਸਾਰਾ ਕੁਝ ਸਾਨੂੰ ਦਿੱਤਾ ਇਦੋਂ ਅੱਗੇ ਤਾਂ ਫਿਰ ਪਾਣੀ ਹੋਈ ਹੈ। ਇਦੋਂ ਅੱਵੇ ਕੁਛ ਨਹੀਂ ਜੇ ਇੱਥੇ ਵੀ ਸ਼ੌਕ ਨਾ ਪੂਰੇ ਹੋਏ ਫਿਰ ਤਾਂ ਸਵਰਗ ਵਿੱਚ ਵੀ ਨਹੀਂ ਹੋਣੇ ਵਪਾਰਕ ਸੰਦੇਸ਼ ਡੋਨਲਡ 트੍ਰੰਪ ਦੀ ਜਿਹੜੀ ਬਹੁਤ ਵਿਰੋਧਤਾ ਹੋ ਰਹੀ ਹੈ ਬੈਂ ਜਿਹੜੇ ਦੇਸ਼ ਕੀਤੇ ਐ ਉਹਨਾਂ ਬਾਰੇ ਇੱਕ ਅਲ ਰਸੂਲੀ ਕਰਕੇ ਸਕਾਲਰ ਹੈ ਉਸਨੇ ਇੱਕ YouTube ਦੀ ਵੀਡੀਓ ਹੈ ਜਿਸ ਦੇ ਵਿੱਚ ਦੁਨੀਆਂ ਤੇ ਹੋਏ ਸੱਤਵਾਦੀ ਹਮਲੇ ਜਿੰਨੇ ਵੀ ਹੋਏ ਚਾਹੇ ਉਹ ਅਮਰੀਕਾ 'ਚ ਹੋਏ ਇਜ਼ਰਾਇਲ ਦੇ ਵਿੱਚ ਹੋਏ افਰੀਕਾ 'ਚ ਹੋਏ ਲਿਬੀਆ ਦੇ ਵਿੱਚ ਹੋਏ ਸਾਊਦੀ 'ਚ ਹੋਏ ਉਹਨਾਂ ਦੀ ਬਹੁਤਾਤ ਦੀ ਉਹਨੇ ਗਿਣਤੀ ਦਿੱਤੀ ਹੈ ਚਾਹੇ ਸ਼ੂ ਬੌਂਬਰ ਆ ਚਾਹੇ 벨ਟ ਵਾਲਾ ਹੈ ਚਾਹੇ ਫੋਰਟ ਹੋਲਡ ਦੇ ਸਕੂਲ ਦੀ ਨੇਵੀ ਦਾ ਜਿਹੜਾ ਸਕੂਲ ਤੇ ਹਮਲੇ ਦੀ ਗੱਲ ਹੈ ਜਾਂ ਅੰਡਰਵੇਅਰ ਦੇ ਵਿੱਚ ਇੱਕ ਅਫਰੀਕਾ ਤੋਂ ਮੁੰਡਾ ਜਿਹੜਾ ਤਮਾਕਾ ਖੇਜ ਪਦਾਰਥ ਲੈ ਆਇਆ ਸੀ ਯੂ ਐਸ ਐਸ ਕੋਲ ਦੀ ਬੌਮਬਿੰਗ ਹੈ ਮਿਡ ਰਿਡ ਦੀ ਬੌਮਬਿੰਗ ਹੈ ਬਾਲੀ ਨਾਈਟ ਕਲੱਬ ਦੀ ਹੈ ਲੰਡਨ ਸਾਬੇ ਦੀ ਹੈ ਬੋਸਟਨ ਮੈਰਾਥਨ ਹੈ ਪੈਨੇ ਮੈ Air ਦੀ ਹੈ ਤੇਰਾਨੀ ਅੰਬੈਸੀ ਅੰਬੈਸੀ ਹੈ ਲੀਬੀਆ ਹਮਲਾ ਦੀ ਅੰਬੈਸੀ ਦੀ ਜਾਂ ਟਾਵਰ ਹੈ ਪਸ਼ਾਵਰ ਦੇ ਸਕੂਲ ਦੀ ਗੱਲ ਹੈ ਸਤੰਬਰ 11 ਹੈ ਤੇ ਬਹੁਤ ਬੜੇ ਉਸਨੇ ਲੰਮੀ ਇਹ ਦੱਸੀ ਹੈ ਉਹਦੇ ਵਿੱਚ ਸਾਰੀ ਕਮਿਊਨਿਟੀ ਨਹੀਂ ਹੈ ਇਹਦੇ ਵਿੱਚ ਪਲੀਜ਼ ਇਸ ਨੂੰ ਖਿਆਲ ਨਾਲ ਸੁਣਿਓ ਉਸਨੇ ਜਿੰਨੇ ਵੀ ਬੰਦੇ ਅਟੈਕ ਕਰਨ ਵਾਲੇ ਸੀ ਉਹ ਮੁਸਲਮ ਬੰਦੇ ਸੀ 80ਆਂ ਤੋਂ ਲੈ ਕੇ ਜੇ ਤੁਸੀਂ ਇਹਨੂੰ ਗੂਗਲ ਤੇ ਸਰਚ ਕਰਦੇ ਸਾਲਾਂ ਵਧੀ ਜਿੱਥੇ-ਜਿੱਥੇ ਹਮਲੇ ਹੋਏ ਦੁਨੀਆ ਦੇ ਵਿੱਚ ਉਹਦੇ ਵਿੱਚ ਜਿਨ੍ਹਾਂ ਨੇ ਹਮਲੇ ਕੀਤੇ ਉਹ ਮੁਸਲਮਾਨ ਸੀ ਕੁਸਮ ਧਰਮ ਦੇ ਬੰਦੇ ਸੀ ਉਹ ਸਾਰੀ ਕਮਿਊਨਿਟੀ ਨਹੀਂ ਹੈ ਉਹਦੇ ਵਿੱਚ ਫੇਰ ਵੀ ਜੇ ਤੁਸੀਂ ਕਹਿ ਸਕਦੇ ਹੋ ਉਹ ਬੰਦੇ ਅਲੱਗ ਖਿਆਲਾਂ ਦੇ ਨੇ ਉਹ ਅਲੱਗ ਖਿਆਲਾਂ ਦੇ ਨੇ ਉਹ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਇਹ ਗੱਲ ਬਿਲਕੁਲ ਠੀਕ ਹੈ ਤੇ ਨਾਲ ਜਿੰਨੀਆਂ ਵੀ ਅਲ ਤੋਂ ਲੈ ਕੇ ਆਈਐਸ ਤੋਂ ਲੈ ਕੇ ਅਲ ਤੋਂ ਲੈ ਕੇ ਲਸ਼ਕਰੇ ਤੌਇਬਾ ਤੋਂ ਲੈ ਕੇ ਤਾਲਿਬਾਨਾਂ ਤੋਂ ਲੈ ਕੇ ਅਬੂ ਸਿਆਫ ਤੋਂ ਲੈ ਕੇ ਬੋਕੋ ਤੋਂ ਲੈ ਕੇ ਅਲ ਤੋਂ ਲੈ ਕੇ ਬਹੁਤ ਉਸਨੇ ਆਰਗੇਨਾਈਜੇਸ਼ਨ ਗਿਣੀਆਂ ਫਿਰ ਜਿਹੜੀ ਉਹ ਗੱਲ ਅਖੀਰ ਚ ਕਹਿੰਦਾ ਉਹ ਕਹਿੰਦਾ ਜਿਹੜੇ ਦੇਸ਼ ਨੇ ਜਿੱਥੇ ਮੁਸਲਮ ਡੋਮਿਨੇਟ ਕਰਦੇ ਨੇ ਦੇਸ਼ਾਂ ਦੇ ਵਿੱਚ ਚਾਹ ਪਾਕਿਸਤਾਨ ਦੀ afghanistan ਦੀ ਉਹਨੇ ਗੱਲ ਕੀਤੀ ਰਸ਼ੀਆ ਦਾ ਜਿਹੜਾ ਟੁੱਟੇ ਹੋਏ ਟੁੱਟ ਕੇ ਤਾਜਿਕਸਤਾਨ ਕਾਜ਼ਕਸਤਾਨ ਹੈ ਉਸ ਦੀ ਗੱਲ ਹੈ ਸੋਡਾਨ ਦੀ ਗੱਲ ਹੈ ਸਮਾਲੀਆ ਦੀ ਹੈ ਯਮਨ ਦੀ ਹੈ ਲਿਬੀਆ ਦੀ ਹੈ ਇਰਾਨ ਦੀ ਹੈ Iraq ਦੀ ਹੈ Syria ਦੀ ਹੈ Israel ਦੀ ਹੈ ਤੇ ਈਜੀਪਟ ਦੀ ਲੇਵਨਾਨ ਹੈ 사우디 ਹੈ ਜਾਂ ਹੋਰ ਦਬਈ ਹੈ मोस्टਲੀ ਉਹ ਕਹ ਜਿੱਥੇ ਰਹਿੰਦੇ ਆ ਬਹੁਤਾਂ ਮੁਸਲਮ ਭਾਈਚਾਰਾ ਰਹਿੰਦਾ ਉਹਨਾਂ ਦੀ ਆਪਸ ਵਿੱਚ ਲੜਾਈ ਹੈ ਉਹ ਲੜਦੇ ਆ ਆਪਾਂ ਨੂੰ ਪਤਾ ਹੈ ਸ਼ੀਆ ਸੁੰਨੀ ਦਾ ਜਿਹੜਾ ਫਰਕ ਹੈ ਤੇ ਉਸ ਤੋਂ ਬਾਅਦ ਹੋਰ ਵੀ ਜਿਹੜੇ ਇਸ ਧਰਮ ਦੇ ਵਿੱਚ ਅੱਗੇ ਅਲੱਗ-ਅਲੱਗ ਜਮਾਤਾਂ ਬੰਡੀਆਂ ਹੋਈਆਂ ਉਹ ਆਪਸ ਵਿੱਚ ਕਾਰਖਾਨਦियां ਨੇ ਤੇ ਆਪਸ ਵਿੱਚ ਉਹਨਾਂ ਦੇ ਦੇਸ਼ ਨੇ شیعਾਂ ਦੇ ਦੇਸ਼ ਨੇ ਸੁੰਨੀਆਂ ਦੇ ਦੇਸ਼ ਨੇ ਲੜਾਈ ਹੈ ਫਿਰ ਉਸਨੇ ਇਸ ਦੇ ਵਿੱਚ ਕਿਹਾ ਵੀ ਹੋਰ ਲੋਕ ਜਿੱਥੇ ਇਕੱਠੇ ਵੱਸਦੇ ਆ ਸਿੱਖ ਹਿੰਦੂਆਂ ਨਾਲ ਵੱਸਦੇ ਆ ਜਾਂ ਸਿੱਖ ਯਹੂਦੀਆਂ ਨਾਲ ਵੱਸਦੇ ਆ ਤੇ ਅਲੱਗ-ਅਲੱਗ ਬਹਾਵੀ ਯਹੂਦੀਆਂ ਨਾਲ ਵੱਸਦੇ ਆ ਤੇ ਇਸ ਤਰ੍ਹਾਂ ਇਸ ਤਰ੍ਹਾਂ ਉਹਨੇ ਸਾਰੀਆਂ ਕਮਿਊਨਿਟੀਆਂ ਦੇ ਨਾਮ ਲਏ ਉਹ ਕਹਿੰਦੇ ਮੁਸ਼ਕਲ ਨਹੀਂ ਦੁਨੀਆ ਦੇ ਵਿੱਚ ਮਾਈਗ੍ਰੇਸ਼ਨ ਹੈ ਜਿਹੜੀ ਉਹਨੂੰ ਰੋਕ ਨਹੀਂ ਸਕਦੇ ਪਰ ਉਹਦਾ ਕਹਿਣ ਦਾ ਵੀ ਜਦ ਇਹ ਦੇਸ਼ ਜਿੱਥੇ ਨਾਖੁਸ਼ ਨੇ ਉਹਨਾਂ ਦੇ ਵਿੱਚੋਂ ਇਹ ਖੁਸ਼ ਨੇ ਜਿੱਥੇ ਉਹਨਾਂ ਦੇਸ਼ਾਂ ਚ ਆ ਜਾਂਦੇ ਨੇ ਯੂਰਪ ਐਸਵੀਡਨ ਫਿਨਲੈਂਡਾ ਜਰਮਨੀ ਐ ਇੰਗਲੈਂਡ ਐ ਫਰਾਂਸ ਐ ਇਟਲੀ ਐ ਡਨਮਾਰਕ ਐ ਅਮਰੀਕਾ ਐ ਕੈਨੇਡਾ ਆਸਟ੍ਰੇਲੀਆ ਉੱਥੇ ਜਾ ਕੇ ਜਦ ਆ ਜਾਂਦੇ ਆਪਾਂ ਇੱਥੇ ਅਸੀਂ ਆਪਣੇ ਘਰਾਂ ਦੇ ਵਿੱਚ ਉਜੜ ਰਹੇ ਹਾਂ ਉੱਥੇ ਬੰਬ ਸਾਡੇ ਤੇ ਗਿਰ ਰਹੇ ਨੇ ਸਾਡੇ ਘਰ ਟੁੱਟ ਰਹੇ ਨੇ ਰੋਟੀ ਤੋਂ ਅਸੀਂ ਸਾਡੇ ਆਵਾਜ਼ਾਰ ਹੋ ਕੇ ਅਸੀਂ ਟੈਂਟਾਂ 'ਚ ਸੁੱਤੇ ਪਏ ਹਾਂ ਸਾਨੂੰ ਇਹ ਦੇਸ਼ ਚੱਕ ਲਿਆਉਂਦੇ ਆ ਸਾਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਮਝ ਕੇ ਜਾਂ ਕਿਵੇਂ ਨੇ ਜਿਹੜਾ ਇੰਟਰਨੇਸ਼ਨ ਕਰਕੇ ਸਾਨੂੰ ਰਿਫਿਊਜੀ ਬਣਾ ਕੇ ਇੱਥੇ ਲੈ ਆਉਂਦੇ ਆ ਤੇ ਅਸੀਂ ਰੋਟੀ ਖਾਣ ਲੱਗ ਜਾਂਦੇ ਆ ਫਿਰ ਜਿਹੜੇ ਦੇਸ਼ਾਂ ਦੇ ਵਿੱਚ ਜਦ ਪਹਿਲੀ ਪੀੜ੍ਹੀ ਹੋ ਗਈ ਜਾਂ ਦੂਜੀ ਪੀੜ੍ਹੀ ਹੋ ਗਈ ਪਛਲੇ ਦੇਸ਼ਾਂ 'ਚੋਂ ਅਸੀਂ ਆ ਕੇ ਖੁਸ਼ ਰਹਿਣ ਵਾਲੇ ਦੇਸ਼ਾਂ ਚ ਆਉਨੇ ਆ ਇੱਥੇ ਆ ਕੇ ਫਿਰ ਅਸੀਂ ਉਹੀ ਦੇਸ਼ਾਂ ਵਾਲਾ ਕੰਮ ਸ਼ੁਰੂ ਕਰਦੇ। ਦੇਖੋ ਸੱਭਿਆਚਾਰ ਤੇ ਧਰਮ ਨੂੰ ਵਧਾਉਣ ਦੇ ਲਈ ਕੋਈ ਨਹੀਂ ਰੋਕਦਾ। ਸਾਰੇ ਧਰਮ ਐਥਨਿਕ ਗਰੁੱਪ ਕਿਸੇ ਵੀ ਦੇਸ਼ 'ਚ ਆਪਣੇ ਧਰਮ ਦੀ ਪ੍ਰੈਕਟਿਸ ਕਰਦੇ ਨੇ ਚਾਹੇ ਉਹ ਮਸਜਿਦ ਦਾਇਆ ਚਾਹੇ ਉਹ ਮੰਦਿਰ ਨੇ ਚਾਹੇ ਉਹ ਗੁਰਦੁਆਰੇ ਨੇ ਚਾਹੇ ਉਹ ਸਿਨਾਗੋਗ ਨੇ ਚਾਹੇ ਉਹ ਚਾਗਜ਼ਾ ਕਰਨ। ਸਿੱਖ ਪੱਗਾਂ ਬੰਨ ਕੇ ਮੋਟਰਸਾਈਕਲ ਚਲਾਉਂਦੇ ਨੇ, ਦਾੜੇ ਪ੍ਰਕਾਸ਼ ਕਰਦੇ ਨੇ 3-3 ਲੱਖ ਦਾ ਇਕੱਠ ਨਗਰ ਕੀਰਤਨਾਂ ਦਾ। ਮੁਸਲਮਾਨ ਵੀਰ ईद ਨੂੰ ਇਕੱਠ ਕਰਦੇ ਨੇ ਗੱਲ ਮਿਲਦੇ ਨੇ ਸਾਰੇ ਪਰ ਕੁਝ ਇੱਕ ਗਰੁੱਪ ਜਿਹੜੇ ਨੇ ਉਹ ਇੱਥੇ ਆ ਕੇ ਫਿਰ ਉਹ ਪੁਰਾਣੇ ਦੇਸ਼ਾਂ ਦਾ ਕਾਨੂੰਨ ਲਾਉਣਾ ਚਾਹੁੰਦੇ ਨੇ ਜਿਵੇਂ ਸ਼ਰੀਆ ਦੀ ਗੱਲ ਇੰਗਲੈਂਡ 'ਚ ਚੱਲ ਰਹੀ ਹੈ ਇਹ ਹੋ ਰਿਹਾ ਉੱਥੇ ਜਿੱਥੇ ਦੂਜੀ ਪੀੜ੍ਹੀ ਹੋ ਗਈ ਤੇ ਵਸੋਂ ਵੱਧ ਗਈ ਜਦ ਵਸੋਂ ਵੱਧ ਗਈ ਉਹ ਕਹਿੰਦੇ ਨਾ ਹੁਣ ਅਸੀਂ ਇਉਂ ਚਾਹੁੰਦੇ ਆ ਇੱਥੇ ਪਹਿਲੀ ਤਾਂ ਗੱਲ ਜਿੱਥੇ ਪਿਛਲੇ ਦੇਸ਼ਾਂ ਦੇ ਵਿੱਚ ਅਸੀਂ ਬੁਰੇ ਹਾਲ ਸਾਡੇ ਬੰਕੇ ਦਿਹਾੜੇ ਸੀ ਸਾਨੂੰ ਇਹਨਾਂ ਨੇ ਖਰਾਤ ਦੇ ਤੌਰ ਤੇ ਸਾਨੂੰ ਚੱਕ ਲੈ ਸਾਡੀਆਂ ਪੀੜ੍hiyan ਪੜਨ ਲੱਗੀਆਂ ਪਹਿਲੀ ਤਾਂ ਗੱਲ ਜਿਹੜਾ ਸਾਨੂੰ ਵੱਢੀ ਅੱਗ ਦੇ ਵਿੱਚੋਂ ਰੋਟੀ ਤੋਂ ਆਵਾਜ਼ਾਰ ਹੋਏ ਲੋਕਾਂ ਨੂੰ ਆਵਾਜ਼ਾਰ ਹੋਏ ਲੋਕਾਂ ਨੂੰ ਲੈ ਕੇ ਆਉਂਦਾ ਪਹਿਲਾਂ ਤਾਂ ਸਾਡਾ ਫਰਜ਼ੇ ਇਹ ਬਣਦਾ ਸਾਨੂੰ ਸਰਕਾਰਾਂ ਕੋਲ ਦੇਣ ਸਾਡਾ ਜਿੱਦਣ ਅਟੈਚੀ ਰੱਖ ਲੈ ਦਿਹਾੜੀ ਤੀਜੇ ਦਿਨ ਸਾਡੀ ਸ਼ੁਰੂ ਹੋਣੀ ਚਾਹੀਦੀ ਵੀ ਦੱਸੋ ਕੰਮ ਕਿੱਥੇ ਹੈ ਸਿੱਧਾ ਕੰਮ ਕਰਕੇ ਰੋਟੀ ਖਾਣੀ ਹੈ ਸਾਡਾ ਇੰਨਾ ਹੀ ਸਾਡਾ ਸ਼ੁਕਰ ਹੈ ਬਹੁਤ ਤੁਸੀਂ ਸਾਨੂੰ ਇਹਨਾਂ ਦੇਸ਼ਾਂ ਚ ਲਾਇਆ ਜਿੱਥੇ ਰੱਬ ਨਾਉ ਦੀ ਚੀਜ਼ ਆ ਜਿੱਥੇ ਇਨਸਾਨੀਅਤ ਨਾਉ ਦੀ ਚੀਜ਼ ਆ ਜਿੱਥੇ ਧਰਮ ਨਾਉ ਦੀ ਚੀਜ਼ ਆ ਤੇ ਸਾਨੂੰ ਖੁੱਲ੍ਹ ਦੇ ਲਈ ਆ ਪ੍ਰੈਕਟਿਸ ਦੋ ਸਾਨੂੰ ਆ 3500 4000 ਡਾਲਰ ਨਹੀਂ ਚਾਹੀਦੇ ਹੁਣ ਇੱਕ ਬਹੁਤ ਵੱਡਾ ਵਿਸ਼ਾ ਜਿਹੜਾ ਸੁਲਗੋ ਸੁਲਗੋ ਕਮਿਊਨਿਟੀਆ ਦੇ ਵਿੱਚ ਚੱਲ ਰਹੀ ਆ ਖਾਸ ਤੌਰ ਤੇ ਕੈਨੇਡਾ ਦੇ ਜਿਹੜੇ ਰਿਫਿਊਜੀ ਆ ਰਹੇ ਨੇ ਉਹਨਾਂ ਦੇ ਜਿਹੜੇ ਪੱਤੇ ਨੇ ਉਹ ਪੱਤੇ ਕਿੱਥੋਂ ਜਾ ਰਹੇ ਨੇ ਤੇ ਕੱਲੋਂ ਜਿਹੜੇ ਬੰਦੇ ਕੰਮ ਕਰਕੇ ਜਿਨ੍ਹਾਂ ਦੇ ਗੋਡੇ ਘੁੰਮ ਗਏ ਉਹਨਾਂ ਨੇ 10-15 ਸਾਲਾਂ ਨੂੰ 올ਡ ਏਜ ਪੈਨਸ਼ਨ ਜਦ ਲੈਣੀ ਆ ਕੀ ਇਹ ਦੇਸ਼ ਕੋਲ ਫੰਡਿੰਗ ਹੋਏਗੀ ਉਸ ਸਮੇਂ ਜਾਂ ਜੇ ਫੰਡਿੰਗ ਹੋਏਗੀ ਉਹ ਪੈਸਾ ਮਿਲੂ ਉਹਦੀ ਕੀਮਤ ਕੀ ਤਾਰਨਗੇ ਕੈਨੇਡੀਅਨ ਟੈਕਸ ਪੇਅਰਸ ਜੇ ਉਹ ਵੱਧਦੇ ਖਰਚੇ ਵੱਧਦੇ ਖਰਚੇ ਜੇ ਮੇਰੇ ਘਰ ਦੀ ਅੱਜ 3000 ਦੀ ਸਾਲ ਦਾ ਪ੍ਰਾਪਰਟੀ ਟੈਕਸ ਆ ਜੇ ਅੱਜ ਤੋਂ 10 ਸਾਲਾਂ ਨੂੰ ਉਹ 30000 ਟੈਕਸ ਹੋ ਗਿਆ ਖਰਚੇ ਵਧ ਗਏ ਜਾਂ ਹੋਰ ਟੈਕਸ ਵਧ ਗਏ ਕੀ ਮੈਂ ਇਸ ਦੇਸ਼ 'ਚ ਉਸ ਸਮੇਂ ਰਹਿ ਸਕੂੰਗਾ 1200 ਦੀ 올ਡ ਏਜ ਪੈਨਸ਼ਨ ਲੈ ਕੇ ਮੈਂ ਗੁਜ਼ਾਰਾ ਕਰੂੰਗਾ ਅੱਜ ਤੋਂ 15 ਸਾਲਾਂ ਨੂੰ ਬਿਲਕੁਲ ਫਿਰ ਇਹਦਾ ਮਤਲਬ ਇਥੋਂ ਜਗਾੜ ਪੱਟਣਾ ਪਊ ਤੇ ਫਿਰ ਕਿੱਥੇ ਜਾਵਾਂਗੇ ਬਿਲਕੁਲ ਡੋਨਲਡ ਟਰੰਪ ਦੀਆਂ ਜਿਹੜੀਆਂ ਐਗਰੈਸ਼ਨ ਦੇ ਵਿੱਚ ਕੀਤੀਆਂ ਗੱਲਾਂ ਉਹ ਮਾੜੀਆਂ ਪਰ ਜਦ ਅਸੀਂ ਪਿਛਲੇ ਦੇਸ਼ ਦੀਆਂ ਮੁਸ਼ਕਲਾਂ ਇਹਨਾਂ ਦੇਸ਼ਾਂ 'ਚ ਲੈ ਕੇ ਆਉਂਦੇ ਆ ਜਿਹੜੇ ਸਾਨੂੰ ਆਪਣੇ ਜਹਾਜ਼ਾਂ 'ਚ ਚੜਾ ਕੇ ਟੱਬਰ ਟੀਹਰ ਦੇ ਨਾਲ ਲਿਆ ਕੇ ਸਾਨੂੰ ਹੋਟਲ 4 ਸਟਾਰਾਂ 'ਚ ਰੱਖ ਕੇ ਸਾਨੂੰ ਰੋਟੀ ਦੇ ਕੂਪਨ ਦੇ ਕੇ ਘਰ ਦਾ ਮਰਦ ਹੈ ਜਿਹੜਾ ਉਹਦਾ ਕੰਮ ਕਰਨ ਦਾ ਫਰਜ਼ ਨਹੀਂ ਹੈ ਚਲੋ ਇਸਤਰੀ ਉਹਦੇ ਜਵਾਕ ਨੇ 5-7 ਤੋਂ ਜਵਾਕ ਪਾਲੇ ਮਰਦ ਕਿਉਂ ਨਹੀਂ ਕੰਮ ਕਰ ਸਕਦਾ ਕਿਹੜੀ ਭਾਸ਼ਾ ਦੀ ਲੋੜ ਹੈ ਫਾਰਮ 'ਚ ਕੰਮ ਕਰਨ ਨੂੰ ਕਿਹੜੀ ਭਾਸ਼ਾ ਦੀ ਲੋੜ ਹੈ ਘਰਾਂ ਦੀ ਇੰਡਸਟਰੀ 'ਚ ਕੰਮ ਕਰਨ ਨੂੰ ਕਿਹੜੀ ਭਾਸ਼ਾ ਦੀ ਲੋੜ ਹੈ ਕਿਸੇ ਫੈਕਟਰੀ 'ਚ ਕੰਮ ਕਰਨ ਨੂੰ ਕੇਂਦਰੀ 'ਚ ਕੰਮ ਕਰਨ ਨੂੰ ਕਿਸੇ ਸਟੋਰ 'ਚ ਕੰਮ ਕਰਨ ਨੂੰ ਕਿਤੇ ਲੋਡਿੰਗ ਔਰ ਅਨਲੋਡਿੰਗ 'ਚ ਕੰਮ ਕਰਨ ਨੂੰ ਕਿਹੜੀ ਭਾਸ਼ਾ ਦੀ ਲੋੜ ਹੈ ਦੱਸੋ ਜਿਹੜੇ ਦੇਸ਼ ਪਿਛਲੇ 'ਚ ਜਿੱਥੇ ਸਾਡੀ ਬਹੁਤਾਤ ਆ ਜਿੱਥੇ 90% ਸਾਡੀ ਵਸੂਆਂ ਉੱਥੇ ਅਸੀਂ ਨਾ ਖੁਸ਼ ਆ ਉਸੇ ਉੱਥੇ ਮਾਰ ਧਾੜ ਹੋ ਰਹੀ ਹੈ ਬੰਬ ਚੱਲ ਰਹੇ ਨੇ ਦੁਨੀਆ ਦੇ ਵਿੱਚ ਜਿਹੜੇ ਮੇਜਰ ਟਰੋਰ ਅਟੈਕ ਹੋਏ ਨੇ ਉਹਦੇ ਵਿੱਚ ਜਿੰਨੇ ਜ਼ਿਆਦਾ ਬੰਦੇ ਨੇ ਅੱਜ ਕੱਢ ਲਿਓ ਗੂਗਲ ਕਰ ਲਿਓ ਟਰੋਰ ਅਟੈਕ ਪਾ ਲਿਓ ਦੁਨੀਆ ਦੇ ਵਿੱਚ ਦੇਖ ਲਿਓ ਫਿਰ ਉਹਦੇ ਵਿੱਚ ਬੰਦੇ ਕੌਣ ਨੇ ਮੈਂ ਚਲੋ ਉਹ ਗਰੁੱਪ ਹੈ ਕਮਿਊਨਿਟੀ ਮੇਨ ਕਮਿਊਨਿਟੀੋ ਚੋਂ ਅਲੱਗ ਹੈ ਧਰਮ ਦੇ ਵਿੱਚ ਕਿਸੇ 'ਚ ਹਿੰਸਾ ਨਹੀਂ ਧਰਮ ਅਲੱਗ ਹੈ ਉਹ ਅਤਵਾਦ ਦੇ ਨਾਂ ਤੇ ਜ਼ੁਲਮ ਕਰ ਰਹੇ ਨੇ ਉਹਨਾਂ ਦਾ ਆਪਣਾ ਖਿਆਲ ਹੈ ਪਰ ਜਿਹੜੇ ਸ਼ਾਂਤੀ ਵਾਲੇ ਲੋਕ ਨੇ ਉਹ ਸ਼ਾਂਤੀ ਵਾਲੇ ਲੋਕ ਜਾਂ ਵਧੀਆ ਦੇਸ਼ਾਂ 'ਚ ਉਹਨਾਂ ਦੀ ਰਿਪਲੇਸਮੈਂਟ ਪਲੇਸਮੈਂਟ ਹੋ ਜਾਂਦੀ ਹੈ ਉਹ ਇਹਨਾਂ ਦੇਸ਼ਾਂ ਦੇ ਵਿਚ ਆ ਕੇ ਹਿੱਸਾ ਕਿਉਂ ਨਹੀਂ ਪਾਉਂਦੇ ਫਿਰ ਉਹ ਕਿਉਂ ਉਹਨਾਂ ਦੇ ਵੈਲਫੇਅਰਾਂ ਦੇ ਚੈੱਕ ਨਹੀਂ ਕਿਉਂ ਉਹਨਾਂ ਦੇ ਸੱਤ ਸੱਤ ਅੱਠ ਅੱਠ ਜਵਾਕਾਂ ਦੇ ਚਾਈਲਡ ਟੈਕਸ ਦੇ ਘਰ ਦੇ ਵਿੱਚ ਚੈੱਕ ਹੁੰਦੇ ਨੇ ਕਿਉਂ ਘਰ ਔਨ ਨਹੀਂ ਕਰਦੇ ਤੇ ਕਿਉਂ ਕੰਮ ਨਹੀਂ ਕਰਦੇ ਜੋ ਕੈਸ਼ ਵਾਲੀਆਂ ਜੌਬਸ ਤੇ ਉਹ ਚੋਰੀ ਕੰਮ ਕਰਕੇ ਸਰਕਾਰਾਂ ਦਾ ਲੱਕ ਤੋੜ ਰਹੀਆਂ ਨੇ ਤੇ ਸਰਕਾਰਾਂ ਦੇ ਵਿੱਚ ਇਨਟੇਕ ਕੀ ਦੀ ਕਿਸੇ ਦੇਸ਼ ਦੇ ਵਿੱਚ ਇਨਟੇਕ ਉੱਥੇ ਦੇ ਲੋਕਾਂ ਦਾ ਟੈਕਸ ਹੈ ਇਹ ਗੱਲ ਬਿਲਕੁਲ ਠੀਕ ਹੈ 84 ਦੇ ਵਿੱਚ ਸਾਡੇ ਕਤਲੇਆਮ ਹੋਇਆ ਅਸੀਂ ਰਿਫਿਊਜੀ ਬਣ ਕੇ ਸਿੱਖ ਮੁੰਡੇ ਬਹੁਤ ਆਏ ਪਰ ਜਿੱਦਣ ਆ ਕੇ ਉਹਨਾਂ ਨੇ ਟੈਚੀ ਰੱਖ ਲੈ ਦੂਜੇ ਨੂੰ ਕਹਿੰਦਾ ਵਰਕ ਪਰਮਿਟ ਦਓ ਮੈਂ ਤਾਂ ਦਿਹਾੜੀ ਜਾਣਾ ਸਵੇਰੇ ਮੈਂ ਨਹੀਂ ਕਰਨਾ ਮੈਂ ਨਹੀਂ ਖਰਾਤ ਮੰਗਣੀ ਮੈਂ ਨਹੀਂ ਵੈਲਫੇਅਰ ਤੇ ਜਾਣਾ ਨਾ ਹੀ ਮੇਰੇ ਤੱਬਰ ਆ ਹਲੇ ਮੈਂ ਤਾਂ ਸਾਰਾ ਕੁਝ ਬੰਨਣਾ ਇੱਕ ਟੈਚੀ ਚੱਕ ਕੇ ਲਿਆਏ ਬੰਦੇ ਅੱਜ ਮਿਲੀਅਨਾਂ ਦੇ ਘਰਾਂ 'ਚ ਬੈਠਿਆ 15-15 ਸਾਲਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਲਿਆਓ ਜਿਨ੍ਹਾਂ ਦੇ ਸਿਰ ਤੇ ਗੋਲੇ ਵਰਦੇ ਆ ਬੱਚਿਆਂ ਨੂੰ ਪਾਣੀਆਂ ਤੋਂ ਔਖਾ ਰਹਿਣ ਨੂੰ ਔਖਾ ਉਜਾੜਾ ਹੋ ਰਿਹਾ ਉਹਨਾਂ ਨੂੰ ਲਿਆਓ ਜੇ ਲਿਆਉਣਾ ਹੈ ਦੇ ਵਿੱਚ ਅਮੀਰ ਨੂੰ ਗਰੀਬ ਦੀ ਮਦਦ ਕਰਨੀ ਪੈਣੀ ਹੈ ਪਰ ਗਰੀਬ ਦਾ ਕੀ ਫਰਜ਼ ਹੈ ਫਿਰ ਜੇ ਅਮੀਰ ਆਪਣੇ ਘਰ ਚ ਲੈ ਆ ਉਹ ਮਹਿਮਾਨ ਨਵਾਜੀ ਤਾਂ ਕਰ ਦਿੱਤੀ ਜੇ ਮੈਂ ਉਹਦੇ ਘਰ ਦੇ ਵਿੱਚ ਬਹਿ ਕੇ ਇਹ ਕਹਣਾ ਵੀ ਹੁਣ ਕਾਨੂੰਨ ਮੇਰਾ ਚੱਲੂ ਮੈਂ ਇੱਥੇ ਆਪਣਾ ਲਾਅ ਲਾਉਣਾ ਹੁਣ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਗੱਲ ਚੱਲ ਰਹੀ ਆ ਸ਼ਰੀਆ ਲਾ ਸ਼ਰੀਆ ਲਾ ਦਾ ਰੌਲਾ ਪੈ ਰਿਹਾ ਹੁਣ ਬਹੁਤ ਤੇ ਦੂਜੇ ਦੇਸ਼ 'ਚ ਜਿੱਥੇ ਤੁਸੀਂ ਰਿਪਲੇਸ ਹੋ ਕੇ ਉੱਥੇ ਦੂਜੇ ਧਰਮ ਦੀਆਂ ਕੁੜੀਆਂ ਨੂੰ ਕੜੇ ਪਾ ਕੇ ਤੇ ਦਾੜੀਆਂ ਰੱਖ ਕੇ ਵਿਆਹ ਤੇ ਉਹਨਾਂ ਨੂੰ ਜਾ ਕੇ ਚਕਲਿਆਂ ਤੇ ਬਿਠਾਉਂਦੇ ਫਿਰੋ ਇਹ ਧਰਮ ਸਿਖਾਉਂਦਾ ਹੋਰ ਕੋਈ ਧਰਮ ਦੂਜੇ ਧਰਮ ਦੇ ਵਿੱਚ ਕਿਉਂ ਨਹੀਂ ਦਖਲ ਅੰਦਾਜ਼ੀ ਕਰਦਾ ਕਿਉਂਕਿ ਇਨਸਾਨੀਅਤ ਦਾ ਇਹ ਕੰਮ ਨਹੀਂ ਹੈ ਇਹ ਕੁਦਰਤ ਵੱਲੋਂ ਧਰਮ ਦੇ ਵਿੱਚ ਰਹਿ ਕੇ ਬੰਦੇ ਚੀਜ਼ਾਂ ਸੈੱਟ ਹੋ ਗਈਆਂ ਜਿਹੜੇ ਧਰਮ 'ਚ ਬੰਦਾ ਜੰਮ ਉਹ ਧਰਮ ਦਾ ਨੇਈ ਹੈ ਪਰ ਦੂਜੇ ਧਰਮ ਨੂੰ ਗਲਬ ਕਰਨ ਦੇ ਦੂਜੇ ਧਰਮ ਨੂੰ ਜਜ਼ਬ ਕਰਨ ਦੀ ਜਿਹੜੀ ਕਹਾਣੀ ਹੈ ਉਹਦੇ ਬਾਅਦ ਵੀ ਬੰਦਾ ਜੇ ਕਹੇ ਮੈਂ ਧਾਰਮਿਕ ਹਾਂ ਉਹ ਬਿਲਕੁਲ ਝੂਠ ਬੋਲ ਰਿਹਾ ਹੈ। ਹਿੰਦੂ ਤਵਾ ਭਾਰਤ ਦੇ ਵਿੱਚ ਸਾਨੂੰ ਖਾ ਰਿਹਾ ਜਾਂ ਕਿਤੇ ਮੁਸਲਮ ਧਰਮ ਦੀ ਵੱਧ ਗਿਣਤੀ ਹੈ ਉਹ ਘਟ ਗਿਣਤੀ ਨੂੰ ਖਾ ਰਿਹਾ ਜਿੱਥੇ ਜਾਂ ਕਿਤੇ ਕ੍ਰਿਸਚੀਅਨਿਟੀ ਦੀ ਵੱਧ ਗਿਣਤੀ ਹੈ ਉਹ ਛੋਟਿਆਂ ਨੂੰ ਖਾ ਰਹੇ ਨੇ ਜ਼ੁਲਮ ਪਰ ਜਦ ਅਸੀਂ ਮਰਦੇ ਸਾਡੀ ਜਾਨ ਤੋਂ ਬਚਦੇ ਹੱਥ ਜੋੜਦੇ ਰੋਂਦੇ ਕਲਾਉਂਦੇ ਰੱਬ ਰੱਬ ਕਰਦੇ ਇਹਨਾਂ ਧਰਤੀਆਂ ਦੇ ਉੱਪਰ ਬੋਇੰਗਾ ਚ ਬਹਿ ਕੇ ਆ ਕੇ ਲਗਜ਼ਰੀ ਕਾਰਾਂ ਦੇ ਝੂਟੇ ਲੈਨੇ ਆ ਫਿਰ ਉਹ ਦੇਸ਼ ਦੀ ਨੂੰ ਵਫਾ ਕਿੱਥੇ ਗਈ ਜਿਨ੍ਹਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਠੀਕ ਹੈ ਇਹਨਾਂ ਦਾ ਸਟਾਈਲ ਹੈ ਲੋਕਾਂ ਦਾ ਇਹ ਨਹੀਂ ਰਹਿੰਦੇ ਨਹੀਂ ਇੱਕਠੇ ਰਹਿੰਦੇ ਜਾਂ ਇਹ ਵਿਆਹ ਨਹੀਂ ਕਰਾਉਂਦੇ ਬੱਚੇ ਨਹੀਂ ਪੈਦਾ ਕਰਦੇ ਜਿੰਦਗੀ ਨੂੰ ਆਪ ਨੂੰ ਖੁੱਲ੍ਹ ਦੇਲੀ ਨਾਲ ਚਾਹੁੰਦੇ ਨੇ ਉਹ ਮੰਨ ਪਰ ਜੇ ਅਸੀਂ ਉਹਨਾਂ ਦੀ ਗਣਤੀ ਨੂੰ ਦੇਖ ਕੇ ਵੀ ਅਸੀਂ ਦੂਜੇ ਬੰਨਿਓ ਜਿਗਾਰਡ ਬਣਾਈਏ ਅਸੀਂ ਗਿਣਤੀ ਆਪਣੀ ਵਧਾਈਏ ਉਹਦੇ ਬਾਅਦ ਇਹਨਾਂ ਨੂੰ ਅਸੀਂ ਆਪਣੇ ਗਲ ਵਿੱਚ ਰੱਖੀਏ ਤਾਂ ਜ਼ੁਲਮ ਹੈ ਨਾ ਫਿਰ ਜੇ ਇਸ ਤਰ੍ਹਾਂ ਹੀ ਤਰਤੀਬ ਰਹੀ ਨਾ ਲਿਬਰਲ ਸਰਕਾਰ ਦੀ 19 ਵਾਲੀਆਂ ਇਲੈਕਸ਼ਨਾਂ ਇਹਨਾਂ ਨੂੰ ਬਹੁਤ ਤੰਗ ਕਰਨੀਆਂ ਹੈ ਗੱਲ ਅੱਜ ਯਾਦ ਰੱਖ ਲਿਓ ਲੋਕ ਬਹੁਤ ਦੁਖੀ ਹੋ ਰਹੇ ਨੇ ਦਿਨ ਬਦ ਦਿਨ 25000 ਤੋਂ 50000 ਦੀ ਹੁਣ ਸੀਨੀਅਰ ਰਿਫਿਊਜ਼ੀਆਂ ਦੀ ਗਿਣਤੀ ਆ ਉਹ ਆ ਸਕਦੇ ਆ ਮੈਂ ਨਹੀਂ ਕਹਿੰਦਾ ਆਉਣ ਉਹ ਦੁਖੀ ਨੇ ਉਹਨਾਂ ਨੂੰ ਲਿਆਂਦਾ ਜਾਵੇ ਪਰ ਦੇ ਵਿੱਚ ਬੈਠੇ ਆ ਇਹ ਤਾਂ ਕੁਛ ਲੈ ਕੇ ਆਂਦੇ ਆ ਪਰ ਕੁਛ ਵੀ ਜੇ ਲੈਂਦੇ ਆ ਉਹਨਾਂ ਨੂੰ ਲਿਆਉਣਾ ਠੀਕ ਹੈ ਪਰ ਉਹ ਲੋਕਾਂ ਤੇ 5000 ਡਾਲਰ ਦਾ ਖਰਚ ਕਮੇਡੀਅਨ ਤਾਂ ਐਕਸਪੀਅਰ ਕਿਉਂ ਦੈੜੋ ਬੰਦਾ ਘਰ ਦਾ ਹੈਡ ਕੰਮ ਕਿਉਂ ਨਾ ਕਰੇ ਉਹਨੂੰ ਕਿਉਂ 1 ਸਾਲ ਵੇਟ ਕਰਨੀ ਪਵੇ 1 ਸਾਲ ਬਾਅਦ ਜਿਹਨੇ ਬਹਿ ਕੇ ਨਿਆਰੀਆਂ ਖਾਲੀਆਂ ਲਿਖ ਕੇ ਲੈ ਲਾ 13 ਮਹੀਨੇ ਉਹਨੇ ਕੰਮ ਨਹੀਂ ਕਰਨਾ ਕੁਝ ਵੀ ਹੋ ਜਾ ਕਿਉਂਕਿ ਸਰਕਾਰ ਦੇ ਤਹਿਤ ਉਹਦੇ ਬੱਚਿਆਂ ਦਾ ਟੈਕਸ ਬੈਨੀਫਿਟ ਲੋ ਇਨਕਮ ਦੇ ਵਿੱਚ ਮੈਕਸਿਮਮ ਆ 3350 ਡਾਲਰ ਇੱਕ ਬੱਚੇ ਦਾ ਜੇ ਕਿਤੇ 6 ਬੱਚੇ ਆ 5 ਬੱਚੇ ਆ ਉਹਨੂੰ 2000 ਡਾਲਰ ਘਰੇ ਬੈਠੇ ਨੂੰ ਆਉਣਾ ਬੱਚਿਆਂ ਤੇ 2000 ਡਾਲਰ ਨਹੀਂ ਖਰਚ ਹੁੰਦਾ ਜੇ ਉਹਨੇ ਗਵਰਨਮੈਂਟ ਕੋਲ ਹੱਥ ਚੱਕ ਤੇ ਮੇਰੇ ਕੋਲ ਕੰਮ ਹੈ ਨਹੀਂ ਵੈਲਫੇਅਰ ਦੇਣੀ ਪੈਣੀ ਤੇ ਜਿਹਦਾ 3000 3500 ਖਰਚਾ ਡਾਲਰ ਘਰ ਆਉਣ ਲੱਗ ਗਿਆ ਸਕੂਲ ਤੇ ਮੈਡੀਕਲ ਉਹਦਾ ਫ੍ਰੀ ਹੈ ਉਹਨੂੰ ਜੈਮ ਸਿਟੀ ਦੇ ਫ੍ਰੀ ਨੇ ਉਹਨੇ ਕੰਮ ਨਹੀਂ ਕਰਨਾ ਉਹ ਕੋਲ ਟੈਕਸੀ ਵਾਊਚਰ ਫ੍ਰੀ ਨੇ ਉਹਨੇ ਕੰਮ ਨਹੀਂ ਕਰਨਾ ਉਹ ਫਿਰ ਲੋਕਾਂ ਨੂੰ ਹੁਣ ਤੰਗ ਕਰ ਰਹੀ ਹੈ ਇਹ ਆਦਾਰਤਾ ਬਹੁਤ ਜ਼ਰੂਰੀ ਹੈ ਅਮੀਰਾਂ ਦਾ ਗਰੀਬਾਂ ਦਾ ਹੱਥ ਫੜਨਾ ਜ਼ਰੂਰੀ ਹੈ ਇਹ ਦੁਨੀਆ ਇਸ ਧਰਮ ਤੇ ਚੱਲਦੀ ਹੈ ਜਦ ਉਹਨੂੰ ਠੀਹੇ ਤੇ ਲੈ ਆਂਦਾ ਜਦ ਉਹਨੂੰ ਕੰਮ ਤੇ ਲੈ ਆਂਦਾ ਪੰਜਾਬ ਤੋਂ ਆਏ ਕਿਸੇ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਪੰਜਵੇਂ ਦਿਨ ਤੋਂ ਬਾਅਦ ਛੇਵੇਂ ਦਿਨ ਕੰਮ ਤੇ ਜਾਂਦਾ ਚਾਹੇ ਸਾਲਾ ਚਾਹੇ ਭਨੋਈਆ ਚਾਹੇ ਫੁੱਫੜ ਚਾਹੇ ਮਾਮੇ ਦਾ ਪੁੱਤ ਉਹ ਕਹਿੰਦਾ ਬਾਈ ਜੀ ਇਉਂ ਨਹੀਂ ਸਰਦਾ ਕੰਮ ਤੇ ਚਲੋ ਛੇਵੇਂ ਦਿਨ ਜਿਹੜੀ ਬੈਂਚ 'ਚ ਘਰ ਦੇ ਮੁੰਡੇ ਜਾਂਦੇ ਉਹਦੇ 'ਚ ਨਾਲ ਫੁੱਫੜ ਅੜਿਆ ਬੈਠਾ ਹੁੰਦਾ ਕਹਿੰਦਾ ਫੁੱਫੜਾ ਚਾਹ ਹੀ ਫੜਾਈ ਜਾਂ ਚੱਲ ਨਾਲ ਉਹ ਆਪ ਪੈਰ ਬੰਨਣ ਲੱਗਦਾ ਉਹ ਕਹਿੰਦਾ ਘਰੇ ਮੇਰਾ ਬਹੁਤ ਔਖਾ ਵੇ ਮੈਨੂੰ ਤਾਂ ਕੰਮ ਤੇ ਲੈ ਕੇ ਚਲੋ ਇਉਂ ਕਮਿਊਨਿਟੀਆਂ ਬਣਦੀਆਂ ਤੁਹਾਡੀ ਕੋਈ ਇਸ ਸੰਬੰਧੀ ਗੱਲਬਾਤ ਹੋਵੇ ਇਹ ਗੱਲ ਸੱਚ ਹੈ ਤੇ ਇਹ ਮੇਨਸਟ੍ਰੀਮ ਸੁਸਾਇਟੀ ਦੇ ਵਿੱਚ ਬਹੁਤ ਗੱਲ ਚੱਲ ਰਹੀ ਹੈ ਔਰ ਇਹ ਠੀਕ ਹੈ ਲੋਕ ਕਹਿੰਦੇ ਨੇ ਕਹਿੰਦੇ ਕੋਈ ਨਾ ਆਉਣ ਦਿਓ ਅਸੀਂ ਵੈਲਕਮ ਕਰਦੇ ਹਾਂ ਸਾਰਾ ਕੈਨੇਡਾ ਰੋ ਰਿਹਾ 6 ਬੰਤੇ ਕਿਊਬੈਕ ਦੇ ਵਿੱਚ ਜਿਹੜੇ ਮਸਜਿਦ 'ਚ ਮਾਰੇ ਸਾਰਾ ਕੈਨੇਡਾ ਕਿਉਂਕਿ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਆ ਪਰ ਜਦ ਇਹਨਾਂ ਦੇ ਨਾਲ ਕੋਈ ਖਲਵਾੜ ਕਰਦਾ ਉਹੋ ਜ਼ੁਲਮ ਹੈ ਜਾਕੇ ਵੇਖਿਓ ਜਰਮਨੀ ਦੇ ਵਿੱਚ ਲੋਕ ਹੁਣ ਕੀ ਕਹਿੰਦੇ ਆ ਲੱਖਾਂ ਦੀ ਗਿਣਤੀ ਚ ਬੰਦੇ ਲੈ ਆਂਦੇ ਕੋਈ ਜਾ ਕੇ ਟਰੱਕ ਚੜ ਰਿਹਾ 크ਿਸਮਸ ਦੀ ਮਾਰਕੀਟ ਦੇ ਵਿੱਚ ਕੋਈ ਜਾ ਕੇ ਪ੍ਰੈਸ਼ਰ ਕੁੱਕਰ ਨਾਲ ਬੰਬ ਬਣਾ ਰਿਹਾ ਕੋਈ ਕੁੱਸ਼ ਕਰ ਰਿਹਾ ਕੋਈ ਕੁੱਸ਼ ਕਰ ਰਿਹਾ ਕੋਈ ਤੁਹਾਨੂੰ ਰੋਟੀ ਦਿੱਤੀ ਇਹ ਲੋਕਾਂ ਨੇ ਆ ਕੇ ਕਿਹੜੇ ਧਰਮ ਦੇ ਵਿੱਚ ਲਿਖਿਆ ਹੋਇਆ ਵੀ ਜਿੱਥੇ ਰੋਟੀ ਖਾਓ ਉੱਥੇ ਸ਼ੇਧ ਕਰੋ ਜੀ ਲਾਈਨ ਬੈਠੂ habba hello ji hello haji haji sun rahe ha main gall tusi gall karo sunning the 1550 a.m. krpi ferndale the music express are not necessarily those of the staff management or ownership of this station ye difference hai ga te tanu ude edan di palna karni chahidi hai kyuki time ghat hai ji hun ad lag jani hai te main dobara kar lunga sir saab koi gall nahi dhanwaad ji thank you sir sukhwinder singh ji line number 3 we're sorry all circuits are Sorry so, hey fir uh, nahi ta jithe baithe aan pa jehde deshan ch baithe aan jahid ja asi qanoon launa chahunde aan fir utthe lao fir saada koi matlab nahi kise wadhia deshan ch vasde lokan ch aake apni shamak chalaun di fir main apni jagah te baith ke utthe apna kam kara main ਕੋਈ ਵੀ ਧਰਮ ਦਾ ਬੰਦਾ ਕਿਸੇ ਵੀ ਫਿਰਕੇ ਦਾ ਬੰਦਾ ਇਹਨਾਂ ਇਨਸਾਨ ਇਨਸਾਫ پسند ਦੇਸ਼ਾਂ ਦੇ ਵਿੱਚ ਆ ਕੇ ਜੇ ਆਪਣੀਆਂ ਪਿਛਲੀਆਂ ਮੁਸ਼ਕਲਾਂ ਨੂੰ ਇੱਥੇ ਉਜਾਗਰ ਕਰਨਾ ਚਾਹੁੰਦਾ ਉਹ ਗਲਤ ਹੈ ਯੈਸ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੋ ਪੂਰੇ ਇਨਸਾਫ ਦੇ ਨਾਲ ਪੂਰੇ ਅਨੁਸ਼ਾਸਨ ਦੇ ਨਾਲ ਇਹ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਇਨਸਾਫ ਨਾਲ ਚਾਹੇ ਉਹ ਆਟਵਾਚ ਭੇਜੋ ਚਾਹੇ ਵਿਕਟੋਰੀਆ ਭੇਜੋ ਆਪਣੇ ਸੂਬੇ 'ਚ ਭੇਜੋ ਲੋਕਲ ਇਕੱਠ ਕਰਕੇ ਉਹ ਮੰਗ ਕਰੋ ਆ ਆਪਣੀ ਐਡਵੋਕੇਸੀ ਸੈੱਟ ਕਰੋ ਹਿਊਮਨ ਰਾਈਟਸ ਦੀ ਗੱਲ ਕਰੋ ਕੁਝ ਵੀ ਕਰੋ ਪਰ ਇਸ ਦੇਸ਼ ਦੀ ਤਰੱਕੀ ਚ ਵੀ ਹਿੱਸਾ ਪਾਉਂਦਾ ਜੇ ਸਾਡੇ ਮਨ ਚ ਇਹ ਆ ਗਿਆ ਗੱਲ ਵੇ ਮੈਨੂੰ ਪੋਲਿਸ਼ਨ ਮੈਂ ਕਰਨੀ ਹੈ ਬਸ ਫਿਰ ਕੋਈ ਰੋਕਣ ਵਾਲਾ ਤਾਂ ਹੈ ਜੀ ਪੰਜਾਬੀਆਂ ਨੇ ਵੀ ਬਥੇਰਾ ਆ ਜਿਹੜਾ ਹੁਣ ਇਹ ਲੱਗਿਆ ਨਾ ਜਿਹੜਾ ਕਦੇ ਕੱਟ ਕਰ ਲਿਆ ਕਦੇ ਕੁਸ਼ ਕਰਨਾ ਕਦੇ ਇਮੀਗ੍ਰੇਸ਼ਨ ਵੱਧ ਕੀ ਕਦੇ ਅਸੀਂ ਵੀ ਕੀਤਾ ਹੁਣ ਵੀ ਹੋ ਰਿਹਾ ਹੈ ਵਰਕ ਪਰਮਿਟ ਦੇ ਨਾਂ ਤੇ 70 70 ਹਜ਼ਾਰ ਡਾਲਰ ਦੇ ਕੇ 2 ਨੰਬਰ ਦੇ ਸਾਨੂੰ ਪਤਾ ਹੈ ਸਾਰਿਆਂ ਨੂੰ ਪਤਾ ਸਰੀ ਚ ਕਰ ਰਿਹਾ ਤੇ ਕਿਹਦੀਆਂ ਕਮਾਈਆਂ ਹੋ ਰਹੀਆਂ ਉਹ ਬੰਦੇ ਕਿੱਥੇ ਆ ਰਹੇ ਨੇ ਤੇ ਕਿਵੇਂ ਆ ਰਹੇ ਨੇ ਲਿਓਨ ਵਾਲੇ ਕੌਣ ਨੇ ਉਹ ਲੇਬਰ ਮਾਰਕੀਟ ਓਪੀਨੀਅਨ ਐਲ ਐਮ ਓ ਦੇਣ ਵਾਲੇ ਕੌਣ ਨੇ ਕਿੰਨੇ ਪੈਸੇ ਉਹ ਲੈਂਦੇ ਆ ਤੇ ਕਿਹੜਾ ਬੰਦਾ ਕੈਸ਼ ਕਿਵੇਂ ਚੁੰਡ ਰਿਹਾ ਲੋਕਾਂ ਜਿਨ੍ਹਾਂ ਦੇ ਅਸੀਂ ਉੱਥੇ ਸ਼ਿਕਾਰ ਹੋਏ ਇੱਥੇ ਆ ਕੇ ਸਾਡਾ ਫੇਰ ਸ਼ਿਕਾਰ ਕਿਵੇਂ ਕਰ ਰਹੇ ਹਨ ਔਰ ਅਸੀਂ ਜਿਨ੍ਹਾਂ ਦੇ ਟੱਕੇ ਹੋਏ ਜਿਨ੍ਹਾਂ ਦੇ ਤੜਫਾਏ ਹੋਏ ਉੱਥੋਂ ਆਏ ਉਹਨਾਂ ਦੇ ਮੂਹਰੇ ਅਸੀਂ ਹੱਥ ਜੋੜ ਕੇ ਫੇਰ ਖੜਦੇ ਆਂ ਚੱਕ 50000 ਕੈਸ਼ ਭੂਆ ਦਾ ਪੁੱਤ ਲਿਆ ਦੇ ਜਿਵੇਂ ਮਰਜ਼ੀ ਲਿਆ ਦੇ ਅਗਲਾ ਹੱਸਦਾ ਢਿੱਡ ਚ ਮੁੱਕੀਆਂ ਦੇ ਕੇ ਬੈਠੀ ਠੀਕ ਹੈ ਉੱਥੇ ਮੜਾਸਾ ਮਾਰ ਕੇ ਖੜੇ ਸੀ ਹੁਣ 3 ਪੀਸ ਪਾ ਖੜੇ ਉਹ ਖੜ ਸਿੱਧਾ ਹੋ ਕੇ ਗੱਲਾਂ ਕਰਦੇ ਫੇਰ ਪਿੱਛੋਂ ਠਮਕ ਠਮਕ ਕਰਦੇ ਅਸੈਸਿਨਿਸtau ਉਹ 7 ਐਲ ਐਮ ਉਧਰ ਲੀਆਂ ਆ ਗਏ ਜੀ 3 ਇਧਰ ਲੀਆਂ ਆ ਗੀਆਂ 4 ਬੰਦੇ ਦਿੱਲੀੋਂ ਚੜ ਗਏ 4 ਸਪੇਨ ਤੋਂ ਚੜ ਗਏ 2 ਚੜ ਗਏ ਦੁਬਈ ਤੋਂ ਮੂਹਰੇ ਪਾਸੇ ਬੈਠਾ ਹੋ ਕਹਿੰਦਾ ਵੇ ਜੱਗਰ ਤਾਂ ਆਇਆ ਲੈ ਹਫ਼ਤੇ ਜੈ ਇੰਨੀ ਤੇਜ਼ੀ ਹੋ ਕਹਿੰਦਾ ਯਾਰ ਮੇਰਾ ਕੰਮ ਕਰ ਤੂੰ ਕੈਸ਼ ਲੈ ਨਾ ਲਿਫਟ ਨਾ ਪੜਤ ਜਿਆਦਾ ਲੈ ਥੱਕ ਦਿੰਦੇ ਆ ਫੇਰ ਸਾਡੇ ਜਿਹੜੇ ਕੱਢਦੇ ਆ ਉਹਨਾਂ ਲਿਫਟ ਨਾ ਪੜਤ ਅਸੀਂ ਕੀ ਕਹਿ ਦਈਏ ਇਹ ਦੇਸ਼ ਦੇ ਕੁਝ ਕਾਨੂੰਨ ਨੇ ਤੇ ਦਵਾਨੀ ਵੀ ਨਹੀਂ ਲੱਗਦੀ ਜੇ ਕੁਆਲੀਫਾਈ ਹੋ 5 500 ڈالر اپلیکیشن فیس دے کے اسی آئے ਹੋਏ ہاں میں اپنی گل کرنا 97 وچ 1100 ڈالر قرضہ دے کے ٹوٹل ایک بیٹے دا میاں بیوی اسی 1100 ڈالر چ آئے ہیں کوئی سسٹم نو اڈاپٹ کر کے آؤ نہ اپنا سತ್ಯناش کرو نہ لٹ کھوڑ دا شکار ہو نہ دنیا دے کولوں اپنا ٹیڑ ننگا کرو کر کے کتے وی کھادا جا سک ਉਹ ਜੋਕਾਂ ਜਿਹੜੀਆਂ ਸਾਨੂੰ ਪੰਜਾਬ ਚੂਸਦੀਆਂ ਆਈਆਂ ਉਹ ਜੋਕਾਂ ਦੇ ਮੂਰੇ ਨਾ ਖੜੋ ਢਿੱਡ ਨੰਗੇ ਕਰ ਕਰਕੇ ਉਹ ਖੂਨ ਤੁਹਾਡਾ ਚੂਸ ਲੈਣਗੇ 60000 ਡਾਲਰ ਚਾਰ ਘਰ ਦੇ ਜੀ 2 ਸਾਲ ਕਮਾਈ ਕਰ ਲਨ ਤਾਂ ਨਹੀਂ ਕੈਸ਼ ਵਰਨਾ 60 ਲੱਖ ਸਵਾ ਲੱਖ ਚੈੱਕ ਦੇ ਬਰਾਬਰ ਆ ਅੱਜ 10 ਦੇਰੇ ਕੱਲ ਨੂੰ 5 ਦੇਰੇ ਕੱਲ ਨੂੰ ਘਰ ਦੇ ਵਿੱਚ ਕਲੇਸ਼ ਘਾ ਟੁੱਟ ਰਹੇ ਨੇ ਵਾਈਫ ਤੋਂ ਦਰ ਚੋਰੀ ਉਹ ਦੇ ਰਿਹਾ ਚ ਵਾਈਫ ਆਪਣੇ ਘਰ ਵਾਲੇ ਤੋਂ ਚੋਰੀ ਦੇਖਿਆ ਮੈਂ ਮਾਸੀ ਦੀ ਕੁੜੀ ਕੱਢਣੀ ਆ ਕਿ ਮੈਨਾਂ ਕਿਵੇਂ ਕੱਢੀ ਚੱਲੋ ਜਿਹੜਾ ਘਰ ਇੱਥੇ ਟੁੱਟ ਰਿਹਾ ਉਹਦਾ ਖਿਆਲ ਨਹੀਂ ਔਰ ਜਿਹੜੀਆਂ ਜੋਕਾ ਨੂੰ ਤੁਸੀਂ ਟੈਸਟ ਦੇਤਾ ਉਹ 50 50 66000 ਡਾਲਰ ਤੁਹਾਡੇ ਤੋਂ ਲੈ ਕੇ ਦੁਵਾਨੀ ਤੁਹਾਡੇ ਦੇਸ਼ ਨੂੰ ਨਹੀਂ ਦਿੰਦੇ ਟੈਕਸ ਦੀ ਚੋਰੀ ਕਰਦੇ ਨੇ ਰੇਡਾਂ ਉਹਨਾਂ ਤੇ ਹੁੰਦੀਆਂ ਤਾਂ ਤੁਸੀਂ ਫਸਦੇ ਹੋ ਫਿਰ ਫਿਰ ਦੱਸਦੇ ਹੋ ਫਲਾਣੇ ਨੇ ਆ ਲੈ ਲਿਆ ਫਲਾਣੇ ਨੇ ਆ ਲੈ ਲਿਆ ਪੈਸੇ ਤੁਸੀਂ ਤੇ ਨੇ ਅਗਲਾ ਜਿਵੇਂ ਨਾ ਲਵੇ ਸਾਦੇ ਚੇਲੇ ਨੂੰ ਕਹਿਦਾ ਵੀ ਕਿਸੇ ਨੇ ਕਹਦਾ ਵੀ ਉਹ ਮਿਸ਼ਰੀ ਤੇ ਬਰਾਮੜਾ ਖੀਸੇ ਭਰੀ ਫਿਰਦਾ ਸੰਗ ਆਉਂਦੀ ਆ ਕਹਦਾ ਥੋਡੀਆਂ ਘਾਲ ਵਾਲੀਆਂ ਦੇ ਕੇ ਜੰਦੀਆਂ ਨਾਲੇ ਹੱਸਦਾ ਅਗਲਾ ਹਰਜੋ ਇਹਦੇ ਵਿੱਚ ਕੁਝ ਨਹੀਂ ਹੈ ਨਾਲ ਸ਼ਿਕਾਰ ਬਣੋ ਡਬਲ ਫੇਸ ਨਾ ਕਰੋ ਦੂਜਾ ਡਬਲ ਮੂੰਹ ਨਾ ਕਰੋ ਜਿਹਦੀ ਕਿਸਮਤਾਂ ਉਹਨੇ ਆ ਜਾਣਾ ਪੜਾਓ ਉਹਨਾਂ ਨੂੰ ਵਿਦਵਤਾ ਕਰੋ ਇਹਨਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਦੇ ਸਾਰੇ ਤੋਂ ਬੰਦਿਆਂ ਨੂੰ ਆਉਣ ਦਿਓ। ਨਾ 77 70 70000 ਦੋ ਐਲ ਐਮਓ ਜੇ ਬੋਏ ਨਾ ਨੇ ਤੁਹਾਨੂੰ ਲੁੱਟ ਲੈਣਗੇ ਲੋਕ ਖਾ ਜਾਣਗੇ ਲੋਕ ਬਗਿਆੜ ਨੇ ਖੂਨ ਚੂਸ ਜਾਣਗੇ ਤੁਟ। ਫੇਰ ਵੀ ਖਲਾਸੀ ਨਹੀਂ ਹੋਣੀ। ਫੇਰ ਉਹਨਾਂ ਦੇ ਸ਼ੋਸ਼ਣ ਹੁੰਦੇ ਨੇ ਉਹ ੱਟਕੇ ਖਾਂਦੇ ਫਿਰਦੀਆਂ ਨੇ ਖਾਂਦੀਆਂ ਫਿਰਦੀਆਂ ਨੇ ਕੁੜੀਆਂ ਅੱਜ ਤੋਂ ਦੇ ਦੇ ਇੱਥੇ ਕੰਮ ਤੇ ਰਖਾ ਦੇ ਪਹਿਲਾਂ ਚੈੱਕ ਲੈ ਲੈ ਫਿੱਚੋਂ ਕੈਸ਼ ਲੈ ਲੈ ਛੜਦੇ ਹੋਏ ਇਹ ਗੱਲਾਂ। ਕੁਝ ਨਹੀਂ ਹੈ ਇਨਾਂ ਚ। ਸੱਦੇ ਤਰੀਕੇ ਨਾਲ ਆਓ ਆਪਣੀ ਵਿਦਵਤਾ ਨਾਲ ਆਓ ਪੜ੍ਹਾਓ ਕਿਸੇ ਨੂੰ 30 ਲੱਖ ਰੁਪਈਆ 20 ਲੱਖ ਕਿਸੇ ਨੂੰ ਦਿਨੇ ਹੋ ਇੱਥੇ 30 35 ਲੱਖ ਉਹ 30 35 ਲੱਖ ਤਾਂ ਉੱਥੇ ਕਿਸੇ ਦੇ ਜਮ੍ਹਾਂ ਕਰਾ ਦਿਓ ਉਹਦੀ ਕਰ ਦਿਓ 8% ਮਿਲਦਾ ਵਿਆਜ 2.5 ਲੱਖ ਰੁਪਈਆ ਸਾਲ ਦਾ ਵਿਆਜ ਹੋ ਗਿਆ 30 ਲੱਖ ਦਾ ਦੇ ਦਿਓ ਉੱਥੇ ਕਿਸੇ ਨੂੰ ਮੁੱਕਣਾ ਨਹੀਂ ਰਜਿੰਦਰਪਾਲ ਸਿੰਘ ਦੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰਪਾਲ ਸਿੰਘ ਬੋਲਦਾ ਜੀ ਸਿੱਧੋ ਅ ਪਹਿਲਾਂ ਪਹਿਲੀ ਵਾਰੀ ਹਾਂ ਪਹਿਲੀ ਵਾਰੀ ਕਾਰ ਕੀਤੀ ਆ ਤੁਹਾਨੂੰ ਤੇ ਸਤਿ ਸ਼੍ਰੀ ਅਕਾਲ ਬੜਾ ਵਧੀਆ ਤੁਹਾਡਾ ਪ੍ਰੋਗਰਾਮ ਦਾ ਬੜਾ ਹੀ ਨੰਦਾ ਉਹਦਾ ਚਲੋ ਤੁਹਾਡਾ ਵੀ ਸਾਡਾ ਹੋਰ ਚੱਲ ਰਿਹਾ ਮੈਂ ਜਲਦੀ ਲਵੇਟ ਦੇਣਾ ਤੁਸੀਂ ਜਿਹੜੇ ਉਹ ਤੁਹਾਡੇ ਸ਼ੁਕਲਾ ਜੀ ਨਾਲ ਤੁਸੀਂ ਮੈਂ ਸੁਣੀ ਆ ਤੁਹਾਡੇ ਕੋਲੋਂ ਵੀ ਉਹ ਜਿਹੜੇ ਆਣੀ ਪ੍ਰੋਡਕਟਸ ਮਨਾਈ ਹੈ ਜੀ ਆਪਣੇ ਅਗਰ ਹੋ ਸਕੀ ਤਾਂ ਉਹਨਾਂ ਦਾ ਮੈਨੂੰ ਨੰਬਰ ਚਾਹੀਦਾ ਜੀ ਮੈਂ ਉਹਨਾਂ ਨਾਲ ਕਿਸ ਤਰ੍ਹਾਂ ਕਾਊਂਟਰ ਕਰ ਸਕਦਾ ਬਾਈ ਜੀ ਗੂਗਲ ਕਰ ਲਓ ਮੰਦਰ ਇੰਡੀਆ ਲਿਖ ਲਿਓ ਉਹਦੇ ਤੇ ਸਾਰਾ ਕੁਝ ਆ ਜਾਂਦਾ ਬਹੁਤ ਸਿੰਪਲ ਹੈ ਹੁਣ ਕਿਸੇ ਬੰਦੇ ਦਾ ਨੰਬਰ ਨਾ ਪਤਾ ਕਰੋ ਉਹਦਾ ਨੋ ਪਾ ਦਿਓ ਫਰਮ ਦਾ ਸਾਰਾ ਪਛ ਆ ਜਾਂਦਾ ਇੰਡੀਆ ਪਾ ਦਿਓ ਉਹਦੇ ਵਿੱਚ ਨੰਬਰ ਆ ਜੀ ਪਲੀਜ਼ ਇਹ ਉਸ ਸਮੇਂ ਗੱਲ ਕਰਿਆ ਕਰੋ ਜਦ ਉਹ ਗੱਲ ਚੱਲਦੀ ਹੁੰਦੀ ਹੈ ਜਾਂ ਇਹ ਨੰਬਰ ਲੈਣਾ ਤਾਂ ਰਿਸੈਪਸ਼ਨਿਸਟ ਕਹਿ ਕੇ ਲੈ ਲਿਆ ਕਰੋ ਜਦ ਫੋਨ ਕਰਦੇ ਹੋ ਵੀ ਸਾਨੂੰ ਨੰਬਰ ਦੇਓ ਸ਼ੁਕਲਾ ਜੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਅਜੋ ਤੁਸੀਂ ਗੱਲਾਂ ਕਰਦੇ ਠੀਕ ਆ ਇਹਨਾਂ ਨੇ ਪਹਿਲਾਂ ਇੰਗਲੈਂਡ ਦੇ ਵਿੱਚ ਇੰਗਲੈਂਡ ਬਹੁਤ ਵਧੀਆ ਮੁੱਲ ਸੀਗਾ ਫੁੱਲੀ ਸਾਰੀ ਮੈਡੀਕਲ ਬੈਨੀਫਿਟ ਲੋਕਾਂ ਨੂੰ ਵਧੀਆ ਕੰਮ ਕਰਦੇ ਗਏ 58 ਜਿਹਦੀ ਵੈਲਾ ਉੱਥੇ ਗੰਦ ਪਾਇਆ ਬਰੈਡਫੋਰਡ ਦੇ ਵਿੱਚ ਨਹੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਬਾਈ ਜੀ ਮੈਂ ਬੰਦਿਆਂ ਦੀ ਗੱਲ ਕਰਦਾ ਜਿਹੜੇ ਕੰਮ ਨਹੀਂ ਕਰਦੇ ਪਲੀਜ਼ ਦੀ ਗੱਲ ਨਾ ਕੰਮ ਹੀ ਨਹੀਂ ਕਰਦੇ ਨਾ ਕਰੋ ਠੀਕ ਹੈ ਨੇ ਨਿਆਣੇ ਕਰ ਦਿੱਤੇ ਉੱਥੇ ਉਸ ਵੇਲੇ ਪਹਿਲਾਂ ਉੱਥੇ ਡਾਗ ਇਸ ਗੱਲ ਤੇ ਵੱਜੀ ਆ 58 ਇੰਗਲੈਂਡ ਚ ਹੈ ਜੀ ਸੜਿਆਂਗ ਬੈਠੇ ਆ ਬਹੁਤ ਗੰਦ ਪਿਆ ਇੰਗਲੈਂਡ ਦੇ ਵਿੱਚ ਸਾਡੇ ਸਿੰਘਾਂ ਦੀਆਂ ਕੁੜੀਆਂ ਨੂੰ ਇਹਦੇ ਕੜੇ ਪਾਪ ਜਨਰਲ ਮੈਂ ਫੇਰ ਹਲੇ ਮੈਂ ਕਮਿਊਨਿਟੀ ਨੂੰ ਨਹੀਂ ਸਾਰੇ ਨੂੰ ਕਹਿਣਾ ਚਾਹੁੰਦਾ ਜਿਹੜੇ ਬਹੁਤ ਕੰਮ ਕਰਨ ਵਾਲੇ ਵੀ ਨੇ ਮਿਹਨਤੀ ਵੀ ਨੇ ਕੋਈ ਫਰਕ ਨਹੀਂ ਬਾਈ ਜੀ ਨਹੀਂ ਇਹ ਨਹੀਂ ਠੀਕ ਗੱਲ ਹੈ ਥੈਂਕ ਯੂ ਐਉਂ ਨਹੀਂ ਹੈ ਗੱਲ ਹੁਣ ਇੱਥੇ ਕਿਸ ਨੇ ਸੋਟਾ ਕੀਤਾ 20 ਸਾਲ ਪਹਿਲਾਂ ਉਸ ਤੋਂ ਮੈਂ ਅਸੀਂ ਕਹਿ ਲਿਆ ਨਾ ਸਾਰੇ ਸਿੱਖ ਨਹੀਂ ਐ ਤਾਂ ਕੁਛਕ ਨੇ ਨੋ ਮੇਰੇ ਡਬਲ ਸਟੈਂਡਰਡ ਮੈਂ ਨਹੀਂ ਕਰਨਾ ਸਾਰਿਆਂ ਨੂੰ ਨਹੀਂ ਮੈਂ ਕਹਿ ਸਕਦਾ ਬਹੁਤ ਵਧੀਆ ਨੇ ਜਿਹੜੇ ਲੋਕ ਸਾਡੇ ਲੈਂਦੇ ਪੰਜਾਬ ਚੋਂ ਪਾਕਿਸਤਾਨ ਤੋਂ ਬਹੁਤ ਭਾਈਚਾਰਾ ਆਇਆ ਬੈਠਾ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਬਿਜ਼ਨਸ ਕੀਤੇ ਘਰ-ਬਾਰ ਬਣਾਏ ਹੋਏ ਨੇ ਉਹ ਐਨ ਸੁਖੀ ਰਹਿੰਦੇ ਆ ਮਿਹਨਤਾਂ ਕਰਨ ਵਾਲੇ ਲੋਕ ਨੇ ਇੱਜ਼ਤ ਨਾਲ ਰਹਿੰਦੇ ਨੇ ਸਾਰੇ ਨਹੀਂ ਹੈ ਇਹ ਇਉਂ ਨਹੀਂ ਹਾਂ ਜਿਨ੍ਹਾਂ ਨੇ ਉਹ ਕੀਤਾ ਉੱਥੇ ਲੜਾਈਆਂ ਹੋਈਆਂ ਕਿਉਂਕਿ ਇੰਗਲੈਂਡ ਦੇ ਵਿੱਚ ਦੇਖਿਆ ਸਜਰੀ ਪੈਰ ਦਾ ਰੇਤਾ ਇਸ ਇਹਦੇ ਤੇ ਪੂਰਾ ਨਾਵਲ ਹੈ ਜੱਗੀ ਕੁੱਸੇ ਦਾ ਇੱਕ ਸੱਚੀ ਕਥਾ ਦੇ ਆਧਾਰਿਤ ਹੈ ਉਹ ਜਿਹੜੇ ਨੇ ਕੀਤਾ ਜ਼ੁਲਮ ਉੱਥੇ ਹੋਇਆ ਕਿਉਂਕਿ ਜਦ ਪੜਾਇਆ ਇਹ ਜਾਊਗੇ ਤੁਸੀਂ ਕਿਸੇ ਧਰਮ ਨੂੰ ਆਪਣੇ ਧਰਮ ਚ ਲਿਆਉਂ ਤੋਂ ਇਹਦੇ ਵਿੱਚੋਂ ਇਹ ਚੀਜ਼ਾਂ ਮਿਲਣਗੀਆਂ ਉਹ ਬਹੁਤ ਮਾੜੀ ਗੱਲ ਹੈ ਪਰ ਉਹਨੂੰ ਕਾਟ ਕਰਨ ਲਈ ਨਵੇਂ ਮੁੰਡੇ ਜਿਹੜੇ ਇੱਥੇ ਦੇ ਪੜ੍ਹੇ ਲਿਖਿਆ ਉਹ ਕੋਸ਼ਿਸ਼ ਵੀ ਕਰ ਰਹੇ ਆ ਜੁਵੀਸੀ ਚ ਪੜ੍ਹਨ ਵਾਲੇ ਮੁੰਡੇ ਇੱਥੇ ਬਹੁਤ ਕੋਸ਼ਿਸ਼ ਕਰ ਰਹੇ ਵੀ ਅਸੀਂ ਅੰਕਲ ਵਧੀਆ ਕਰਨਾ ਚਾਹੁੰਦੇ ਆ ਪਰ ਸਾਡਾ ਜ਼ੋਰ ਨਹੀਂ ਚੱਲਦਾ ਜਾਨੂ ਇੱਥੇ ਧੜਾ ਤੜ ਲਿਆ ਜਾਂਦੇ ਅਸੀਂ ਠੀਕ ਕਰਦੇ ਆ ਜਾਨੂ ਨੱਕਾ ਫੇਰ ਮੋੜ ਲੈਂਦੇ ਆ ਦਾ ਇਹਦੇ ਵਿੱਚ ਕੀ ਰਾਜ ਆ ਪੋਲਿਟਿਸ਼ੀਅਨ ਆਪਣੀਆਂ ਵੋਟਾਂ ਦੇ ਪਿੱਛੇ ਫਿਰਦੇ ਆ ਵੀ ਕੱਲ ਨੂੰ ਤਿੰਨਾਂ ਸਾਲਾਂ ਨੂੰ ਸਿਟੀਜ਼ਨ ਚਲਾ ਚ ਲੱਖ ਬੰਦਾ ਆ ਗਿਆ ਲੱਖ ਮੇਰੀ ਵੋਟ ਹੈ ਸਾਡੇ ਸਾਡੇ 6 ਫੁੱਟ ਦੇ ਬੰਦੇ ਦੇ 6.5 6 ਫੁੱਟ ਦੀਆਂ ਜਨਾਨੀਆਂ ਨਿਊਟਨ ਚ ਤੁਰੀਆਂ ਫਿਰਦੀਆਂ ਸਾਡੀਆਂ 7.5 5 ਫੁੱਟ ਵਾਲੀਆਂ ਕੰਮ ਕਰਦੀਆਂ ਮਸ਼ੀਨ ਬਣੀਆਂ ਫਿਰਦੀਆਂ ਇਹ ਨਹੀਂ ਬਣ ਸਕਦੀਆਂ ਇਹ ਨਹੀਂ ਕਰ ਸਕਦੀਆਂ ਉਹ ਬੰਦੇ ਨੇ ਜਿਹੜੇ ਸਾਰਾ ਦਿਨ ਸਟਾਰਬਕਸ ਤੇ ਟਿਮ ਹੌਟਨ ਦਾ ਉਹ ਖੜਾ ਨਹੀਂ ਛੱਡਦੇ ਅੰਦਰ ਕੋਈ ਬੰਦਾ ਨਹੀਂ ਬਰ ਸਕਦਾ ਕਾਮਾ ਰੌਲੀ ਪਾਈ ਹੈ ਅਰ ਉੱਥੇ ਬੋਲਦੇ ਨੇ ਇਹ ਕੰਮ ਨਹੀਂ ਕਰ ਸਕਦੇ ਸਕਟ ਬਾਹਰ ਪੀ ਆਉਂਦੇ ਨੇ ਤੇ ਅੰਦਰ ਜਾ ਕੇ ਕੌਫੀ ਦਾ ਕੱਪ ਲੈਣਾ ਸਕਟ ਬਾਹਰ ਪੀਉਣਾ ਜਾ ਕੇ ਕੌਫੀ ਇਹਨਾਂ ਨੂੰ ਕੋਈ ਕੰਮ ਕਰਨ ਨੂੰ ਕਹਿੰਦਾ ਨਹੀਂ ਨਾਰਥ ਬੈਂਚ ਇੱਕ ਕਮਿਊਨਿਟੀ ਹੈ ਸਾਰੇ ਇਰਾਨ ਦੇ ਉੱਥੇ ਬੈਠੇ ਆ ਕਿੰਨੇ ਬੰਦੇ ਆ ਉੱਥੇ 80% ਬੰਦੇ ਆ ਉੱਥੇ ਕਿਸੇ ਨਾਲ ਟੈਕਸੀਆਂ ਸਾਡੇ ਨਾਲ ਨੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਉਹ ਕਹਿੰਦਾ ਅਸੀਂ ਤਾਂ ਬਸ ਮਸਾਂ ਕਿਤੇ ਹਫ਼ਤੇ 'ਚ ਦੋ ਦਿਨ ਤਿੰਨ ਦਿਨ ਉਹ ਕੰਮ ਕਰਨਾ ਆਉਂਦੇ ਸੀ ਨਹੀਂ ਆਉਂਦੇ ਸੀ ਕਰ ਕਹਿੰਦਾ ਸਾਨੂੰ ਨਹੀਂ ਕੰਮ ਕਰਨ ਦੀ ਲੋੜ ਤੋ ਇਹ ਜਦ ਜਿਹਨੂੰ ਬੈਠੇ ਨੂੰ ਮਿਲੂਗਾ ਉਹ ਇਹ ਜੀ ਬਰਫ ਦੇ ਵਿੱਚ ਮੁਰਚੇ ਮੁਰਬਿਆ ਬਾਹਰ ਉਹ ਕਾਨੂੰ ਬਾਹਰ ਬੈਲਟਾਂ ਪਾਊਗਾ ਉਹ ਕਾਨੂੰ 2x4ਾਂ ਲਾਊ ਉਹ ਕਾਨੂੰ ਛੱਤ ਤੇ ਚੜੂ ਉਹ ਕਾਨੂੰ ਪਿਕਅਪ ਦੇ ਵਿੱਚ ਕੋਈ ਬਾਹਰ ਨਿਕਲਿਆ ਕਦੇ ਅੰਦਰ ਆ ਗਿਆ ਇਨਸਪੈਕਟਰ ਆਇਆ ਕਿ ਨਹੀਂ ਉਹ ਕਾਨੂੰ ਡਰਾਇੰਗਾ ਕੱਚ ਚ ਦੇਈ ਫਿਰੂ ਫੁੱਕਾ ਗਰਗਰ ਗਰਗਰ ਕਰਦਾ ਜਵਾਕ ਖੇਲਦੇ ਨੇ ਘਰ ਵਾਲੀ ਬਾਹਰਲੇ ਬੰਨੇ ਗੋਸ਼ਤ ਬਣਾਉਣ ਲੱਗੇ ਹੈ ਲੋੜ ਹੀ ਨਹੀਂ ਕੋਈ ਛਕੋ ਆਪਣਾ ਰਜਾਈ ਦੱਬੋ ਜਦਿ ਇਹ ਬਹੁਤ ਸੁਧਾਰ ਦੀ ਲੋੜ ਹੈ ਲੋਕਾਂ ਨੂੰ ਇਹ ਗੱਲ ਤੋਂ ਦੁਖੀ ਵੀ ਹੁੰਦੇ ਹੋਣਗੇ ਕਈਆਂ ਨੂੰ ਲੱਗਦਾ ਹੋਣਾ ਵੀ ਸਾਨੂੰ ਕਹਿ ਰਿਹਾ ਪਰ ਇਹ ਸੱਚ ਗੱਲ ਹੈ ਇਹ ਬਹੁਤ ਵੱਡਾ ਇਸ਼ੂ ਸਾਨੂੰ ਦਰਪੇਸ਼ ਆਉਣਾ ਅੱਜ ਤੋਂ 10 ਸਾਲਾਂ ਨੂੰ ਲਿਖ ਕੇ ਲੈ ਲਿਓ ਲਿਖ ਕੇ ਔਰ ਗੈਟੋ ਬਣ ਕੇ ਇਕੱਠਾ ਹੋਊ ਆਪਣਾ ਆਪਣਾ ਖਿੱਤਾ ਹੋਊ ਇੰਗਲੈਂਡ ਵਾਲਾ ਕੰਮ ਸਰੀ ਦੇ ਵਿੱਚ ਐਸ ਤੋਂ 15 ਸਾਲਾਂ ਨੂੰ ਹੋਊ ਤੁਸੀਂ ਯਾਦ ਰੱਖ ਲਿਓ ਔਰ ਇਹ ਕਮਿਊਨਿਟੀ ਦੇ ਵਿੱਚ ਲੜਾਈਆਂ ਹੋਣਗੀਆਂ ਇੰਗਲੈਂਡ ਤੇ ਰਹਿਣ ਵਾਲੇ ਲੋਕ ਦੱਸਦੇ ਕਹਿੰਦੇ ਬਹੁਤ ਜ਼ਿਆਦਾ ਉਜ ਪਰਸੈਂਟ ਕਰਕੇ ਸਾਰੀ ਕਮਿਊਨਿਟੀਾਂ ਦੋਨਾਂ ਨੂੰ ਸਿੱਖਾਂ ਤੇ ਮੁਸਲਮਾਨ ਜਿਹੜੇ ਵਧੀਆ ਰਹਿਣ ਵਾਲੇ ਸੀ ਉਹਨਾਂ ਨੂੰ ਵੀ ਇਸ ਦੁੱਖ ਚੋਂ ਨਿਕਲਣਾ ਪਿਆ। ਸੇਕੋ ਗੜਕੰਨੇ ਜਿਹੜੇ ਆ ਰਹੇ ਨੇ ਇਹਨਾਂ ਨੂੰ ਕੰਮ ਦੇ ਲਾਉਣ ਲਈ ਲੋਕ ਲੈਂਪੀਆ ਐਮਐਲਏ ਨੂੰ ਸਨੇਹਾ ਦਿਓ ਕਿ ਆਪਣੇ ਉੱਪਰ ਲੀਡਰਾਂ ਨੂੰ ਦੱਸੋ ਕਿ ਇਹਨਾਂ ਨੂੰ ਕੰਮ ਤੇ ਲਾਓ ਜਦ ਲੈ ਆਂਦਾ ਮੈਨੂੰ ਜਿਹੜਾ ਕੋਈ ਅੱਜ ਰੂੜੀਆਂ ਤੋਂ ਚੱਕ ਕੇ ਆਕੇ ਚਵਾਰੇ ਤੇ ਬਿਠਾਉਂਦਾ ਮੈਂ ਪਹਿਆਂ ਤੇ ਪਿੰਡ ਉੱਥੇ ਪੋਰ ਚੱਕੀ ਮੋਢਿਆਂ ਤੇ ਫਿਰਦਾ ਤੇ ਉਹ ਸਿੱਤੇ ਚੱਕ ਜੇ ਮੈਨੂੰ ਕਹੇ ਵੀ ਤੈਨੂੰ ਵੈਨਕੂਵਰ ਲੈ ਕੇ ਚੱਲੇ ਆ ਮੈਂ ਤਾਂ ਦੂਜੇ ਦਿਨ ਕਹਣਾ ਵੀ ਮੈਨੂੰ ਹੁਣ ਕੰਮ ਦੱਸ ਕਿੱਥੇ ਲੱਗਣਾ ਤੇ ਇੱਧਰ ਜਾ ਕੇ ਦੇਖਿਓ ਹੁਣੇ ਹੁਣ ਕੋਈ ਨੇੜੇਆ ਗਿਲਫਰਡ ਮਾਲ 'ਚ ਦੇਖਿਓ ਜਾ ਕੇ ਨਜ਼ਾਰਾ ਕੀ ਆ ਲੋਕ ਫਿਰਦੇ ਕਿਵੇਂ ਆ ਪਰਲੇ ਬੰਨੇ ਹੋਟਲਾਂ ਜੀ 'ਚ ਰਹਿੰਦੇ ਨੇ ਤੇ ਤੋਰਾ ਫੇਰਾ ਦੇਖਿਓ ਕਿਵੇਂ ਕੋਈ ਕਿਤੇ ਕੋਲੇ ਨਾਲ ਖੜਾ ਫੋਨ ਲਈ ਕੋਈ ਕਿਤੇ ਫੋਨ ਲਈ ਖੜਾ ਸਕਟਾਂ ਬਾਹਰ ਪੀ ਆਉਂਦੇ ਨੇ ਤੇ ਅੰਦਰੋਂ ਸਟਾਰਬਕਸ ਦੀ ਕਾਫੀ ਲੈ ਲੈਂਦੇ ਆਂ। ਹਿੱਸੇ ਪਰ ਹੋਏ ਨੇ ਜਨਾਨੀਆਂ ਨੂੰ ਥੋੜਾ ਦੇਣਾ 3600 ਡਾਲਰ ਪੈਸੇ ਤਾਂ ਇਹਨਾਂ ਦੇ ਹੀ ਐ। ਔਰ ਇਹ ਬਹੁਤ ਹੋਰ ਪਾਸੇ ਨੂੰ ਗੱਲ ਜਾ ਰਹੀ ਹੈ। ਇਹਦੇ ਤੇ ਹੁਣ ਵਰਤੋਂ ਇਹਨੂੰ ਥੰਮਣ ਦੀ ਲੋੜ ਐ। ਲੱਖ ਲਿਆਓ। ਔਰ ਇਹਦੇ ਤੇ ਡੋਨਲਡ ਟਰੰਪ ਦੀ ਕਸ਼ੀਦਗੀ ਲੋਕੋ ਨੂੰ ਗਾਲ੍ਹਾਂ ਕੱਢ ਰਹੇ ਨੇ। ਉਹਦੇ ਕੋਲ ਆਪਣਾ ਹੱਕ ਆਪਣਾ ਦੇਸ਼ ਪ੍ਰੋਟੈਕਟ ਕਰਨ ਦਾ ਔਰ ਇੱਕ ਨਵਾਂ ਸਿਸਟਮ ਹੁਣ ਇਹਦੇ ਤੋਂ ਸ਼ੁਰੂ ਹੋਣਾ ਜਿਹੜਾ ਉਹਨਾਂ ਨੇ ਕਿਹਾ ਜਿਹੜਾ ਉਹਨੇ ਸੱਤ ਦੇਸ਼ ਲਿਖਤੇ ਅਗਲੀ ਸਿਸਟਮ ਦੇਖਿਓ ਕੀ ਹੋਣਾ ਹੈ ਅਸੀਂ ਇੰਡੀਅਨ ਕੈਨੇਡੀਅਨ ਪਹਿਲਾਂ ਇੰਡੀਆ ਜੰਮੇ ਅਸੀਂ ਪਾਕਿਸਤਾਨ ਚ ਜੰਮੇ ਕੈਨੇਡਾ ਦੀ ਸਿਟੀਜ਼ਨ ਲੈ ਲਈ ਹੁਣ ਅਗਲਾ ਚਰਨ ਜਿਹੜਾ ਪੰਜਾਚਾਹਾਂ ਸਾਨੂੰ ਉਹਨਾਂ ਨੂੰ ਕਹਾਂ ਮੈਂ ਕੈਨੇਡੀਅਨ ਆ ਉਹ ਕਹਿੰਦਾ ਕੈਨੇਡੀਅਨ ਨਹੀਂ ਪਹਿਲਾਂ ਦੱਸ ਜੰਮਿਆ ਕਿੱਥੇ ਸੀ ਆ ਗੱਲ ਚੱਲੂ ਹੁਣ ਕਿਉਂਕਿ ਇਹਦੇ ਚੋਂ ਜਦ ਅਸੀਂ ਅਗਲੇ ਦੇ ਹੱਥ ਦਾ ਉਹੜਾ ਹੱਥਾ ਬਣਦੇ ਆ ਤੇ ਰੇਸਿਜ਼ਮ ਇਹ ਚ ਸਿਰ ਚੱਕਦਾ ਰੇਸਿਜ਼ਮ ਸਿਰ ਤਾਂ ਚੱਕਦਾ ਜਦ ਅਗਨੇ ਦੇ ਅੱਖਾਂ ਨੂੰ ਅਸੀਂ ਰੜਕਦੇ ਇਹ ਇਹੀ ਬੰਦੇ ਜਿਹੜੇ ਆ ਕੇ ਮਿਹਨਤਾਂ ਕਰਕੇ ਕੰਮ ਕਰਨ ਲੱਗ ਜਾਣ ਇਹ ਲੋਕਾਂ ਦੀ ਅੱਖਾਂ 'ਚ ਨਾ ਰੜਕਣ ਤਾਂ ਕਿਤੇ ਵੀ ਇਹ ਚੀਜ਼ਾਂ ਨਹੀਂ ਆਉਣੀ ਰੜਕਦੇ ਤਾਂ ਤਾਂ ਆ ਨਾ ਜਿੱਥੇ ਖਾਦਾ ਉੱਥੇ ਛੇਦ ਕੀਤਾ ਉਹ ਗੰਦੇ ਇਹਨਾਂ ਦਾ ਫਾਹਾ ਵੱਡੋ ਉਹਦੇ ਨਾਲ ਦੂਜੇ ਵੀ ਮੰਜ ਜੰਦੇ ਹੁਣ ਕਜ਼ਾਕਿਸਤਾਨ ਤੋਂ ਤਾਜ਼ਕਿਸਤਾਨ ਤੋਂ ਗਰੀਬ ਪਰਿਵਾਰ ਦੇ ਬੱਚੇ ਦੋ ਬਾਇਆ ਆਸਟ੍ਰੇਲੀਆ ਉਹਨਾਂ ਨੇ ਲੈ ਆਂਦੇ ਉੱਥੇ ਉਹ ਪਰਿਵਾਰ ਆ ਗਿਆ ਤੇ ਬੋਸਟਨ ਦੇ ਵਿੱਚ ਭੱਜੇ ਜਾਂਦੇ ਬੰਦੇ ਬੰਦਿਆਂ ਤੇ ਉਹਨਾਂ ਨੇ ਬਲਾਸਟ ਕਰਤਾ ਦੱਸੋ ਕਿ ਦੁਆਰਾ ਕਜ਼ਕਿਸਤਾਨ ਤੋਂ ਕਿਹਨੂੰ ਲੈ ਕੇ ਆਉ ਜਾਣ ਹੁਣ ਹੁਣ ਦੁਆਰਾ ਜਿਹੜਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਰੋਲਾ ਪਿਆ ਉਹੀ ਗੱਲ ਦਾ ਪੈ ਉਹ ਕਜ਼ਕਿਸਤਾਨ ਦੇ 16 ਕਜ਼ਕਿਸਤਾਨ ਦੇ 16 1700 ਬੰਦਾ ਉੱਥੇ ਨੇੜੇ ਦੀ ਆਈਲੈਂਡ ਤੇ ਗਿਨੀ ਦੇ ਵਿੱਚ ਬੈਠਾ ਗਿਨੀ ਪਪੂਆ ਗਿਨੀ ਜਿਹੜੀ ਜਗ੍ਹਾ ਉਹਨੂੰ ਲਿਆਉਣ ਦੀ ਗੱਲ ਵਾਮਾ ਨੇ ਕਹੀ ਹੋਈ ਸੀ ਸਰਪੰਚ ਨੇ ਕਾਲ ਕੱਟਤੀ ਉਹ ਕਹਿੰਦਾ ਨਾ ਇਹ ਨਹੀਂ ਆ ਸਕਦੇ ਇੱਥੇ ਹੋਰ ਬੋਸਟਨ ਬੰਬਰ ਮੇਰੇ ਕੋਲ ਭੇਜਣੇ ਆ ਤਾਂ ਤੋਂ ਐਨੀ ਬੇਜ਼ ਪਤਾ ਨਹੀਂ ਹੁਣ ਇਹ ਵੱਡਿਆਂ ਘਰਾਂ ਦੀਆਂ ਗੱਲਾਂ ਵੱਡੇ ਕਰਨਗੇ ਜਿਨ੍ਹਾਂ ਨੇ ਇਹ ਲੈ ਕੇ ਆਉਣ ਨੇ ਜਾਂ ਰੋਕਣਗੇ ਪਰ ਦਬੀ ਸੁਰਚੇ ਗੱਲ ਚੱਲਣੀ ਸ਼ੁਰੂ ਹੋਈ ਹੋਈ ਹੈ ਲੱਖ ਆਉਣ ਮੈਂ ਨਹੀਂ ਕਹਿੰਦਾ ਖੁੱਲਾ ਪਿਆ ਦੇ 3.5 ਕਰੋੜ ਟੋਟਲ ਬੰਦਾ ਸਾਲ ਆਖ ਖੁੱਲਾ ਵੈਨਕੂਵਰ ਦਾ ਫੋਰ ਸਟਾਰ ਹੋਟਲ ਚ ਕਾ ਫਿਰ ਚੱਕੋ ਸਿੱਤੋ ਪ੍ਰੇਰੀਜ਼ ਦੇ ਵਿੱਚ ਜਾ ਕੇ ਲਾਵੀਂ ਰਹੋ ਤੇ ਕੱਲ ਨੂੰ ਜਾਓ ਦਿਹਾੜੀ ਤੇ ਬਸਾਓ ਛੋਟੇ ਛੋਟੇ ਸ਼ਹਿਰ ਡਰਾਮ ਹਾਇਲਰ ਦੇ ਵਿੱਚ ਲਿਜਾਓ ਹਜ਼ਾਰ ਬੰਦਾ ਸਸਕਾ ਟੂਚ ਲਿਜਾਓ ਹਜ਼ਾਰ ਐਡਮਿੰਟ ਦੀ ਆਊਟਰ ਸਕਾਇਰਟ ਤੇ ਨੇੜੇ ਕਿਸੇ ਸ਼ਹਿਰ ਜਗ੍ਹਾ ਤੇ ਰਹੋ 2000 ਬੰਦਾ ਚਲੋ ਲੱਥ ਬ੍ਰਿਜ ਰਹੋ ਉੱਥੇ ਕਰੋ ਕੰਮ ਸਵੇਰ ਨੂੰ ਹੁਣ ਇੱਥੇ ਜਿਹੜਾ ਜਿਨੇ タルਮੀਆਂ ਛਕਣੀਆਂ ਨੇ ਉਹਨੇ ਕੰਮ ਨਹੀਂ ਕਰਨਾ ਜੜ ਇੱਕ ਵਾਰ ਤੁਸੀਂ ਕੰਨਾ ਨਾ ਪਾਇਆ ਉਹਨੇ ਕੰਮ ਨਹੀਂ ਕਰਨਾ ਹਰਜੀਤ ਸਿੰਘ ਜੀ ਲਾਈਨ ਨੰਬਰ 2 ਟਾਈਮ ਲਾਈਨ ਨੰਬਰ 3 ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਟੁੱਟੂ ਨੂੰ ਇਹ ਕਹੂੰਗਾ ਵੀ ਲੋਕ ਦਿਖਾਵੇ ਲਈ ਜੋ ਲੋਕ ਦਿਖਾਵੇ ਲਈ ਹੋ ਰਿਹਾ ਹੈ ਨਾ ਇਹ ਸਭ ਕੁਝ ਇਹਨੂੰ ਬੰਦ ਕਰੋ ਵਰਲਡ ਐਵੀ ਨਹੀਂ ਕੁਝ ਕੁਝ ਸੋਚ ਕੇ ਕਹਿ ਰਿਹਾ ਇਹਨਾਂ ਨੂੰ ਔਰ ਜਿੱਥੇ ਵੀ ਜਾਂਦੇ ਆ ਸਾਰੀ ਕਮਿਊਨਿਟੀ ਨਹੀਂ ਪਰ ਕੁਝ ਕੁਝ ਲੋਕ ਬਹੁਤ ਜ਼ਿਆਦਾ ਉਸ ਮੁਰਖਾ ਦੇ ਵਿੱਚ ਫੰਗੇ ਪੈਂਦੇ ਸਨ ਤਾਂ ਇਹ ਦਾਰਿਆ ਤਨੂ ਕੀ ਜਿੰਨੇ ਮਰਜੀ ਆ ਜਾਣ ਰਿਹਾ ਭਰ ਲੈਣ ਸਾਰਾ ਔਰ ਇਹ ਮੌਲਕ ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਔਰ ਜੋ ਹੋ ਰਿਹਾ ਆ ਇਹਦਾ ਸਿੱਟਾ ਤੁਸੀਂ ਬਿਲਕੁਲ ਸਹੀ ਕਰਦੇ ਆ ਦਸਾਂ ਵੀਹ ਸਾਲਾਂ ਨੂੰ ਪਤਾ ਲੱਗਿਆ ਨਾ ਜੀਤੋ ਸਾਹਿਬ ਲੋਕ ਦਿਖਾਵਾ ਨਾ ਕਰੋ ਆਪਣੇ ਦੇਸ਼ ਨੂੰ ਬਚਾਓ ਇੱਕ ਵਜੇ ਕੇ 26 ਮਿੰਟ ਜੀ ਪਿੰਡ ਦੀ ਸੱਤ ਦੇ ਵਿੱਚ ਤੁਹਾਡਾ ਸਵਾਗਤ ਹੈ ਖੁੱਲਾ ਤੁਹਾਡੇ ਕੋਲ ਸਮਾਂ ਵੀ 25 ਮਿੰਟ ਕੋਈ ਵੀ ਵਿਸ਼ੇ ਤੇ ਗੱਲ ਕਰਨੀ ਚਾਹੋ ਪੰਜਾਬ ਦੇ ਨਾਲ ਸੰਬੰਧਿਤ ਪੰਜਾਬ ਦੀ ਰਾਜਨੀਤੀ ਵੋਟਾਂ ਅੱਜ ਸਨੇਹਾ ਸਵੇਰ ਉੱਤੇ ਹੋ ਗਈ ਹੈ 3 ਵਜੇ ਨੇ ਲੋਕ ਉੱਠ ਖੜੇ ਨੇ ਵੋਟਾਂ ਪੈਣੀਆਂ ਨੇ ਵੋਟਾਂ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਪੰਜਾਬ ਦੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਟਰਡੀ ਮੰਗਤਾ ਜੀ ਤੁਸੀਂ ਇਹ ਤੇ ਲਾਈਨ ਨੰਬਰ 4 ਹਰਜੀਤ ਸਿੰਘ ਜੀ ਲਾਈਨ ਨੰਬਰ 3 ਹਲੋ ਸਤਿਕਾਰਾ ਜੀ ਸਤਿਕਾਰ ਜੀ ਹਰਜੀਤ ਜੀ ਜੋ ਵੀ ਤੁਸੀਂ ਕੱਲਾਂ ਦੱਸਿਆ ਸਾਰੀਆਂ ਸਹੀ ਆ ਤੁਸੀਂ ਦੇਖੋ ਵੀ ਇੱਕ ਮੈਂ ਰੇਡੀਓ ਤੇ ਹੁੰਦੇ ਮੁਸਲਮਾਨ ਭਾਈ ਦੀ ਗੱਲ ਸੁਣ ਰਿਹਾ ਸੀ ਉਹ ਦੱਸ ਰਿਹਾ ਸੀ ਤੁਸੀਂ ਰੌਲਾ ਪਾਈ ਔਰ ਦੇ ਗੋਲ ਗੋਲਿਆਂ ਦੇ ਵਿੱਚੋਂ ਤੁਸੀਂ ਗਰੀਬ ਬੰਦੇ ਮਰਦੇ ਬੰਦੇ ਚੱਕ ਲੈਣ ਕਹਿੰਦੇ ਤੁਹਾਡਾ ਭਲੇਖਾ ਹੈ ਜਿਹੜੇ ਬੰਦੇ ਕਹਿੰਦਾ ਇੱਥੇ ਆ ਰਹੇ ਨੇ ਉੱਥੇ ਬਹੁਤ ਵੱਡੀਆਂ-ਵੱਡੀਆਂ ਪਰੌਤੀਆਂ ਤੇ ਬਹੁਤ ਬੜਾ-ਬੜਾ ਨਾਲ ਉਹ ਬੰਦੇ ਆ ਰਹੇ ਨੇ ਜਿਹੜੇ ਉੱਥੇ ਬਹੁਤ ਗਰੀਬ ਨੇ ਜਾਂ ਬਹੁਤ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਉਹ ਤਾਂ ਕਹਿੰਦਾ ਉੱਥੇ ਹੀ ਮਰਦੇ ਆ ਇਸ ਤੋਂ ਭਲੇਖਾ ਇੱਥੇ ਆ ਰਹੇ ਨੇ ਦੂਜੀ ਗੱਲ ਤੁਸੀਂ ਜਿਹੜੀ ਕੀਤੀ ਹੈ ਨਾ ਵੀ ਇਹ ਕੀ ਹਾਂ ਦੇਖੋ ਵੀ ਉਹ ਸਾਲ ਕਰ ਰਹੇ ਹਨ ਉਹ ਵੀ ਕੈਲੀ ਲੀਚ ਵਰਗੀਆਂ ਨੇ ਦੇਖੋ ਫੇਰੇ ਮੁੱਦਾ ਚੱਕਾ ਡੋਨਰ ਪ੍ਰਾਪਤ ਵਾਂਗੂ ਤੇ ਇਹ ਆਪਣੇ ਤੋਂ ਬਹੁਤ ਮਹਿੰਗਾ ਪੈਣਾ ਮੈਨੂੰ ਲੱਗਦਾ ਬੋਲੀ ਵਾਲੀ ਜਿਹੜਾ ਉਹਨਾਂ ਨੇ ਇੱਥੇ ਲੋਕਾਂ ਨੂੰ ਵਾਲੇ ਰਾਤ ਦੇ ਸਾਰਾ ਬੁਸ ਕੀਤਾ ਤੇ ਬਸੇ ਬਸੇ ਸਾਰਾ ਕੁਝ ਬਹੁਤ ਗਲਤ ਹੋ ਰਿਹਾ ਜੀ ਥੈਂਕ ਯੂ ਜੀ ਹਣ ਸਿੰਘ ਮੈਨੇਜਰ ਜੀ ਲਾਈਨ ਨੰਬਰ 4 ਸਤਿ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੋਈ ਟਾਈਮ ਲਿਮਿਟ ਹੋਣੀ ਚਾਹੀਦੀ ਆ ਰਿਫਿਊਜ਼ਿਆਂ ਵਾਸਤੇ ਵੀ 3 ਮਹੀਨੇ ਜਾਂ 6 ਮਹੀਨੇ ਆਫਟਰ ਇਹਨਾਂ ਨੂੰ ਚਾਹੀਦਾ ਵੀ ਗਵਰਨਮੈਂਟ ਨੂੰ ਕੇ ਇਹਨਾਂ ਨੂੰ ਕੰਮ ਜਿਹਦਾ ਹੈਵ ਟੂ ਕੰਮ ਕਰਨਾ ਪਵੇ ਤੇ ਆ ਪਿਛਲੀ ਵੀਕ ਦਾ ਕੰਮ ਸਲੋਅ ਆ ਤੇ ਰਾਤ ਨੂੰ ਰੋਤੀ ਨਹੀਂ ਲੰਗਦੀ ਭਾਜੀ ਤੇ ਭਾਜੀ ਇੱਕ ਗੱਲ ਹੋਰ ਕਰਨੀ ਸੀਗੀ ਜੀ ਸਲਾਮ ਹੈ ਭਾਜੀ ਤੁਹਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਬੱਚੇ ਵੀ ਫੈਨ ਬਣ ਗਏ ਜੀ ਮੇਰਾ ਪੋਤਰਾ 2 ਸਾਲ ਦਾ ਜਦੋਂ ਤੁਹਾਡਾ ਪ੍ਰੋਗਰਾਮ ਆਵੇ ਉਹਨੂੰ ਕਈ ਅਰਜਨ ਕਿਦਾਂ ਅਰਜੀਤ ਸਾਹਿਬ ਜੀ ਉਹ ਕਰਦਾ ਥੈਂਕ ਯੂ ਬਾਈ ਜੀ ওকে ਥੈਂਕ ਯੂ ਥੈਂਕ ਯੂ ਜੀ ਧੰਨਵਾਦ ਸਿੰਘ ਵਿਰਕ ਲਾਈਨ ਨੰਬਰ 5 ਹਲੋ ਜੀ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਮੈਂ ਉਹ ਵੀ ਬੇਨਤੀ ਕੀਤੀ ਸੀਗੀ ਵੀ ਜਿਹੜੀਆਂ ਆਪਣੇ ਇਹਨਾਂ ਨੂੰ ਚਲੋ ਠੀਕ ਆ ਲੈਂਦਾ ਵਾ ਜਸਨ ਟੂਡੋ ਤੱਕ ਐਮਪੀ ਐਥੋਂ ਦੀ ਲੋਕਲ ਗੱਲ ਬਚਾਉਣ ਵੀ ਜਿਹੜੇ ਲੈਂਦੇ ਹੁਣ ਬੱਸ ਕਰ ਜਿੰਨੇ ਵੀ ਲੈਂਦੇ ਆ ਜਿੰਨੇ ਕੁ ਵੀ ਆ ਇਹਨਾਂ ਨੂੰ ਕੰਮ ਤੇ ਤਾਂ ਲਾਵੇ ਉਹਨੇ ਬੇਲੇ ਫਿਰਦੇ ਆ ਕੱਲ ਪਰਸੋ ਦੀ ਗੱਲ ਆ ਮੈਂ ਉੱਥੇ ਗਿਆ ਸੀ ਗਿਲਫੋਡ ਮਾਲ ਉਮੇ ਤੋਂ ਮਾੜੀ ਜਿਹੀ ਗੱਡੀ ਮੁਰਨ ਹੋ ਗਈ ਮੇਰੇ ਮੁਰੇ ਤੋਂ ਹੋ ਇੱਕ ਕੇ ਉੱਤੇ ਜਾੜ ਅਸੀਂ ਆਈਨਵਰ ਕਾਲ ਕਰਦੇ ਆ ਵੀ ਬਦਮਾਸ਼ੀ ਦਿਖਾਉਣ ਮੈਨੂੰ ਕਹਿਣਾ ਅੰਗਰੇਜ਼ੀ ਪੂਰੀ ਆਵੇ ਨਾ ਮੈਨੂੰ ਵੀ ਕਿਹੜਾ ਬੜੀ ਆਉਂਦੀ ਹੈ ਜਾਨੀ ਉਹਨਾਂ ਦੀ ਗੱਲ ਕਰਦਾ ਵਾਂ ਮੈਨੂੰ ਕਹਿਣਾ ਵੀ ਗੱਡੀ ਆਪਦੀ ਉੱਤੇ ਝੜ ਸਾਡੇ ਅਸੀਂ 911 ਕਰਦੇ ਦੱਸੋ ਮੈਂ ਹਿੰਦੀ ਵਿੱਚੇ ਕਰ ਲਈ ਮਤਲਬ ਭਰਾਵੋ ਤੁਸੀਂ ਨਿੰਘ ਜੋ ਤੁਹਾਨੂੰ ਬੜਾ ਜ਼ਰੂਰੀ ਕੰਮ ਆ ਤੁਸੀਂ ਨਿੰਘੋ ਬਈਆ ਵੀ ਇਹ ਬੇਨਤੀ ਹੱਤਵਾਂ ਕੇ ਜਿੰਨੇ ਵੀ ਲੋਕਲ ਐਮਪੀ ਆ ਇਹ ਲੈਂਦੇ ਆ ਇਹ ਕਿ ਕਹਿੰਦੇ ਇਹਨਾਂ ਨੂੰ ਹੁਣ ਕੰਮ ਤੇ ਲਾਓ ਬਸ ਇਹਦਾ ਚਰਖਵਾ ਲੀਆਂ ਇਹਨਾਂ ਨੂੰ ਹੁਣ ਕੰਮ ਤੇ ਲੱਗਣਗੇ ਪਤਾ ਲੱਗੂਗਾ ਅਸੀਂ ਹੁਣ ਡਿਲੀਵਰੀਆਂ ਕਰਦੇ ਹਾਂ ਸਾਨੂੰ ਪਤਾ ਮੈਂ ਦੋ ਵਾਰ ਡੱਕ ਪਿਆ ਲੋਡਿੰਗ ਡੌਕ ਤੇ ਸਬ ਪਤਾ ਲੱਗ ਪੀਰੇ ਨੂੰ ਪਤਾ ਲੱਗੂ ਵੀ ਕੀ ਹੁੰਦਾ ਕੀ ਕਰਨੂ ਕੰਮ ਕੀ ਹੁੰਦਾ ਵਾ ਨਹੀਂ ਵਿਲੇ ਖਾਈ ਜਨੇ ਇਹਨਾਂ ਨੂੰ ਤਾਂ ਹੀ ਤਾਂ ਪਤਾ ਲੱਗਦਾ ਨਹੀਂ ਵੀ ਕੰਮ ਕੀ ਹੁੰਦਾ ਥੈਂਕ ਯੂ ਤੇਜਪਾਲ ਸਿੰਘ ਨਾਲ ਪੰਜਾਬ ਦੀ ਵੀ ਗੱਲ ਕਰੀਏ ਇਹ ਆਪਾਂ ਇਹ ਵਿਸ਼ੇ ਤੇ ਵੀ ਕਰੀਏ ਪੰਜਾਬ ਦੇ ਬਾਰੇ ਵੀ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਲੋਕ ਸੱਤ ਦੇ ਪਿੰਡ ਦੀ ਸੱਤ ਦਾ ਤੁਹਾਡਾ ਪ੍ਰੋਗਰਾਮ ਹੈ ਪੰਜਾਬ ਦੇ ਵਿੱਚ ਰਾਜਨੀਤੀ ਵੋਟਾਂ ਕੀ ਹੋ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਬਾਰੇ ਵੀ ਗੱਲ ਕਰੀਏ ਤੇਜਪਾਲ ਸਿੰਘ ਜੀ ਲਾਈਨ ਨੰਬਰ 2 ਆ ਪੰਜਾਬ ਦੀ ਗੱਲ ਤੇ ਆਪਾਂ ਬਾਤ ਕਰ ਲਿਆ ਪਹਿਲਾਂ ਜਿਹੜੀ ਅੱਜ ਤੁਸੀਂ ਗੱਲ ਕੀਤੀ ਨਾ ਇਹਦਾ ਸਿਰੇ ਹੀ ਲਾਤੀ ਐ ਮੈਂ ਸਕੋਟ ਦਾ ਕੰਮ ਕਰਦਾ ਹਾਂ ਡਾਊਨਟਾਊਨ ਦੇ ਵਿੱਚ ਹੇਸਟਿੰਗ ਤੇ ਪੈਂਡਰ ਦੇ ਉੱਪਰ ਮੈਨੂੰ ਇੱਕ ਸਰਦਾਰ ਮਿਲਿਆ ਸੀ ਰਦਾਵਾ ਜਿਹੜਾ ਮੰਗਦਾ ਸੀ ਬਿਆ ਮੈਂ ਉਹਨੂੰ ਵੀ ਗੱਲ ਕਹੀ ਬਈ ਜੱਟਾਂ ਦੇ ਵਿੱਚ ਤੱਕ ਅੱਜ ਤੱਕ ਕੋਈ ਮੈਂ ਸੁਣ ਦੇਖਿਆ ਨਹੀਂ ਮੇਰੀ 70 ਸਾਲ ਦੀ ਉਮਰ ਐ 72 ਸਾਲ ਦੀ ਮੈਂ ਨਹੀਂ ਵੇਖਿਆ ਕੋਈ ਜੱਟ ਬੰਦਾ ਮੰਗਦਾ ਹੋਵੇ ਮੈਂ ਉਸ ਤੋਂ ਲਾ ਲਓ ਵੀ ਮੈਂ ਉਹਨੂੰ ਨਹੀਂ ਫਿਰ ਵੇਖਿਆ ਜਿਹੜੀ ਆ ਤੁਸੀਂ ਗੱਲ ਕੀਤੀ ਨਾ ਬਹੁਤ ਸੋਹਣੀ ਕੀਤੀ ਏ ਇਹ ਐਮਪੀਆ ਨੂੰ ਐਮਐਲਏ ਨੂੰ ਇਸ ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਜਾਗਰੂ ਬਰਾੜ ਹਾਰਿਆ ਸੀ ਨਾ ਜਿਹੜਾ ਮਹੀਨਾ ਉੱਥੇ ਰਹਿ ਗਿਆ ਸੀ ਇਸੇ ਕਲੋਂ ਆ ਸੀ ਥੈਂਕ ਯੂ ਥੈਂਕ ਮੰਗਤਾ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇਖੋ ਜੀ ਪਹਿਲੇ ਜਿਹੜਾ ਤੁਸੀਂ ਬਹੁਤ ਵਧੀਆ ਬੀਚਾ ਇਹਨੂੰ ਇਹ ਇਹ ਜਿਹੜਾ ਹਫੂਜੀ ਪਹਿਲਾਂ ਆਪਾਂ ਪਉ ਦੁੰਦੇ ਰੋਲਾ ਪਾਉਂਦੇ ਜਦੋਂ ਦੀ ਗਵਰਨਮੈਂਟ ਬਣੀ ਆ ਵੀ ਹਫੂਜੀਆ ਨੂੰ ਟੂਟੋ ਸਾਹ ਜਦੋਂ ਤੇ ਇਹ ਇਸ ਮਕਸਦ ਦੇ ਨਾਲ ਇਹ ਮਨੁੱਖੀ ਅਧਿਕਾਰਾਂ ਦੇ ਇਸ ਨੂੰ ਜਿੱਦਾਂ ਵੀ ਮਕਸਦ ਦੇ ਨਾਲ ਵੀ ਅਸੀਂ ਇਹਨਾਂ ਦੀ ਸਹਿਯਾ ਕਰਦੇ ਆਂ ਪਰ ਇਹ ਜਿਹੜੀ ਸਹਿਯਾ ਜਾਂ ਤਾਂ ਉਸ ਮੂਵਮੈਂਟ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ ਜਿਹੜਾ ਕਈ ਖਾਲਸਤਾਨੀ ਤੌਰ ਤੇ ਪੱਕੇ ਹੋਵੇ ਜਿਹੜੀ ਮੂਵਮੈਂਟ ਤੇ ਤੁਸੀਂ ਕੱਕੇ ਹੋਇਆ ਜਾਂ ਤਾਂ ਉਹ ਮੂਵਮੈਂਟ ਚਲਾਉਣ ਉੱਥੇ ਜਾ ਕੇ ਜਿੱਦਾਂ ਵੀ ਉਹ ਕਾਰਵਾਈ ਕਰਨ ਇਹ ਜਿਹੜਾ ਨਾ ਇਹ ਗੱਲਾਂ ਦੇ ਨਾਲ ਨਹੀਂ ਹੋ ਸਕਦਾ ਜਿਹੜਾ ਕਾਗਜ਼ ਹੁੰਦਾ ਨਾ ਉਹਦੀ ਵੈਲਿਊ ਬਹੁਤ ਹੁੰਦੀ ਕਾਰਵਾਈ ਹੋਵੇ ਐਮ ਪੀ ਐਮ ਐਲ ਕਾਗਜ਼ੀ ਕਾਰਵਾਈ ਹੋਵੇ ਤਾਂ ਉਹ ਜਿੱਦਾਂ ਵੀ ਇਹ ਡਾਲਰ ਇੰਨੇ ਬਣਾ ਰਹੇ ਆ 3600 ਜੇ ਹੁਣ ਆਪਾਂ ਸਾਡੇ ਫਾਰਮਰ ਵਰਕਰ ਆ ਸੀਜ਼ਨ ਵਰਕਰ ਆ ਉਹ ਜੇ ਇਹ ਆਈ ਲੈਂਦੇ ਆ ਤੇ ਉਹਨਾਂ ਨੂੰ ਤਾਂ ਇੰਨੇ ਕਪੀਕਰ ਦੇ ਕਹਿੰਦੇ ਫੋਰਸਸ ਦੇ ਤੇ ਉਹ ਸਾਨੂੰ ਜਿਹੜੇ ਅਸਲੀ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਜਿਹੜੇ ਅਸਲੀ ਬਿਲ ਫੇਰ ਵੀ ਲੈਂਦੇ ਆ ਜਿਵੇਂ ਜਗਰੂ ਬਰਾੜ ਤੋਂ ਨੇ ਬੜਾ ਕੇਸ ਲੜਿਆ ਸੀ ਉਹਦੇ ਬਿਲ ਫੇਰ ਵੀ ਜਿੱਦਾਂ ਕਿ ਅੰਗਹੀਣ ਆ ਜਾਂ ਕੋਈ ਵੀ ਬੰਦਾ ਆ ਉਹਨਾਂ ਨੂੰ ਇਹ ਪਰੇਸ਼ਾਨ ਕਰਦੇ ਆ ਇਹ ਇਹ ਉੱਥੇ ਜਿੱਦਾਂ ਉੱਥੇ ਦੇ ਕੇ ਰਾਜ਼ੀ ਨਹੀਂ ਉਹਨਾਂ ਨੂੰ ਇਹ بڑا ਔਖਾ ਬਿੱਲ ਫਿਰ ਲੈਣਾ ਪਈ ਆਈ ਇੰਨਾ ਔਖਾ ਆ ਵੀ ਉਹ ਇੰਟਰਵਿਊ ਰੱਖੀ ਜਾਂਦੇ ਇੰਟਰਵਿਊ ਰੱਖੀ ਜਾਂਦੇ ਤਾਂ ਆਪਣਾ ਪੈਸਾ ਕਿਸੇ ਕਾਰਵਾਈ ਨਾਲ ਦੇਖੋ ਜੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਜਿੱਦਾਂ ਵੀ ਕੋਈ ਕਾਗਜ ਕਾਰਵਾਈ ਕਮਿਟੀ ਕਰੇ ਸਾਰੇ ਤੁਸੀਂ ਗੱਲ ਨੂੰ ਸੁਝਾ ਤੇ ਇਹ ਸਾਡੇ ਜਣੇ ਐਮਪੀ ਐਮਐਲ ਜਿਹੜੇ ਵੀ ਹੋਏ ਆਪਾਂ ਕੁਐਸਚਨ ਵੀ ਕਰਾਂਗੇ ਉਹਨਾਂ ਨੂੰ ਇਹ ਜਰੂਰ ਇਹ ਬੰਦ ਹੋਣਾ ਚਾਹੀਦਾ ਜੀ ਸਿਸਟਮ ਸੱਸੀ ਕਾਲਜ ਦਾ ਨਿਮਾਜੀ ਲਾਈਨ ਨੰਬਰ 4 ਆ ਸੱਸੀ ਗਾਲਾ ਜੀ ਸਿੰਘ ਜੀ ਸੱਸੀ ਕਾ ਬਾਈ ਜੀ ਆਪਣੇ 1999 ਦੇ ਵਿੱਚ ਜਿਹੜੇ ਸੀਗਾ ਦੌਰ ਉਦੋਂ ਉਹੀ ਦੁਬਾਰਾ ਯਾਦ ਆ ਗਿਆ ਸਾਈਕਲ ਕਿੰਨੀ ਸਾਈਕਲ ਚਲਾਉਣਾ ਤੇ ਡੰਡੇ ਦੇ ਨਾਲ ਝੰਡੇ ਦਾ ਨਿਸ਼ਾਨ ਮਿਲਦਾ ਗੱਡਾ ਸੀਗਾ ਉਸ ਦਿਨ ਅਜੀਤ ਸਿੰਘ ਮਾਨ ਸਾਹਿਬ ਉਹੀ ਹੁਣ ਰਿਹਾ ਨੋ ਇਹ ਸਾਰੇ ਗਾਪਾ ਨੂੰ ਵੀ ਪਤਾ ਕਿੱਧਰ ਉਹਨਾਂ ਦਾ ਚਿਕਾ ਤੇ ਬਾਕੀ ਦੇਖਦੇ ਆ ਉਹਨਾਂ ਰਿਜ਼ਲਟ ਤੋਂ ਤੇ ਦੂਜੀ ਗੱਲ ਕਰਨੀ ਕੀਤੀ ਤੇ ਉਹੋ ਵੀ ਛੋਟੀ ਜਿਹੜੀ ਰੀਸ ਕਰਾਉਂਦੀ ਆ ਹੂੰ ਕਹਿੰਦੀ ਆ ਤੇ ਗੱਲ ਯਾਦ ਆ ਗਈ ਬੱਚੇ ਵੀ ਤੁਹਾਡੇ ਫੈਨ ਹੋ ਗਏ ਜੀ ਤੇ ਇੰਨੇ ਗਨੇ ਦਾ ਉਪਰਾਲਾ ਜੀ ਬਈ ਪੱਬਾਂ ਤੇ ਰਹੋ ਔਰ ਕੱਖ ਨਹੀਂ ਇਹਨੇ ਕੱਖ ਨਹੀਂ ਕਰ ਲੈਣਾ ਕੋਈ ਚੀਜ਼ਾਂ ਸੈੱਟ ਕਰਨੀਆਂ ਪੈਣੀਆਂ ਸੀ ਸਤਾਪਤ ਵੱਡੇ ਚੌਧਰੀਆਂ ਦੇ ਵਿੱਚ ਜਦ ਪ੍ਰੋਗਰਾਮ ਸ਼ੁਰੂ ਕਰਨਾ ਹੈ ਰਾਜ ਲਾਈਨ ਨੰਬਰ 5 ਸਸੀ ਕਾਲਪਾ ਜੀ ਗੱਲ ਕਰੀ ਤਲਾ ਚਾਲ ਬੋਲਦੇ ਜੀ ਸਸੀ ਕਾਲਪਾ ਜੀ ਚਾਲ ਸਾਹਿਬ ਬੜੀ ਦੇਰ ਬਾਅਦ ਗੱਲ ਹੋਈ ਜੀ ਅੱਜ ਸਿਰੇ ਪੰਜਾਬ ਤੇ ਕਦੀ ਹੁੰਦੀ ਸੀਗੀ ਪਰ ਬਾਅਦ ਚਾਜੀ ਹੋਈ ਹੈ ਮੈਂ ਤੁਹਾਡੇ ਪਿਛਲੇ ਵਿਸ਼ਾ ਤੁਹਾਡਾ ਪਾਜੀ ਬਹੁਤ ਵਧੀਆ ਸੀਗਾ ਉਹਦੇ ਤੇ ਗੱਲ ਕਰਨੀ ਚਾਹੁੰਦਾ ਵੀ ਵੇਖੋ ਹੁਣ ਜਿਹੜੇ ਵਰਕ ਪਰਮੈਂਟ ਤੇ ਆਉਂਦੇ ਨੇ ਸਕੈਚ 1 ਫॉर ਐਗਜ਼ਾਮਪਲ ਉਹਨਾਂ ਨੂੰ ਤੇ ਕਹਿੰਦੇ ਆ ਜੀ ਤੁਹਾਨੂੰ ਪੀਆਰ ਤੋਂ ਬਾਅਦ ਚ 2 ਸਾਲ ਘੱਟੋ ਘਾਟ ਇੱਥੇ ਰਹਿਣਾ ਪੈਣਾ ਆ ਤੇ ਇਹਨਾਂ ਨੂੰ ਜਿਨ੍ਹਾਂ ਨੂੰ ਉਹੀ ਤੁਹਾਡੀ ਗੱਲ ਸੁਣੋ ਜਹਾ ਦੇ ਬਾਅ ਕੇ ਤੇ ਸਟਾਰ ਫੈਸਿਲਿਟੀਆਂ ਦੇ ਕੇ ਇਹਨਾਂ ਪਾਸੇ ਕੋਈ ਸਟ੍ਰਿਕਸ਼ਨਾਂ ਨਹੀਂ ਗੀਆਂ ਇਹਨਾਂ ਨੂੰ ਚੁੱਕ ਕੇ ਸੁੱਟਣ ਉੱਥੇ ਜਿੱਥੇ ਥਾਂ ਖਾਲੀ ਨੇ ਉਥੇ ਇਹਨਾਂ ਨੂੰ ਕਹਿਣ ਭਾਈ ਇਹਨੂੰ ਬਾਦ ਕਰੋ ਤੇ ਤੁਸੀਂ ਇੱਥੇ 5 ਸਾਲ ਰਹਿਣਾ ਜੇ ਉਦੋਂ ਬਾਅਦ ਜਿੱਥੇ ਮਰਜ਼ੀ ਮੋਗੋ ਜੇ ਜੇ ਤੁਹਾਨੂੰ ਅਸੀਂ ਲਿਆਂਦਾ ਮਾੜੇ ਥਾਂ ਤੁਹਾਨੂੰ ਫੈਸਿਲਿਟੀ ਜਿਹੜੀ ਚਾਹੀਦੀ ਕਰਾਂਗੇ ਪਰ ਇਹਨੂੰ ਬਾਦ ਕਰੋ ਇੱਥੇ ਰਵੋ ਇੱਥੇ ਆਪ ਬੱਚੇ ਪਾਲੋ ਸਕੂਲ ਨਹੀਂ ਹੈ ਅਸੀਂ ਸਕੂਲ ਬਣਾ ਕੇ ਦੇਨੇ ਆ ਹਸਪੀਟਲ ਨਹੀਂ ਹੈ ਤੇ ਅਸੀਂ ਉਹ ਬਣਾ ਕੇ ਦੇਨੇ ਆ ਜਿਹੜਾ ਪਹਿਲਾਂ ਨੂੰ ਇਦਾਂ ਹੀ ਦੇਈ ਜਾਂਦੇ ਉਹ ਕਿਹੇ ਫੈਸਿਲਿਟੀ ਤੇ ਲਾ ਦੇਣਾ ਉਹਨਾਂ ਪਰ ਨਹੀਂ ਜਿਹੜਾ ਸਿੱਧੇ ਤਰੀਕੇ ਨਾਲ ਆ ਰਿਹਾ ਮਿਹਨਤ ਕਰਕੇ ਵਰਕ ਪਰਮਿਟ ਤੇ ਸਿਰ ਯਾਰ ਲੈਂਦਾ ਆ ਉਹਦੇ ਵਾਸਤੇ ਰੂਲ ਹੈ ਇਹਨਾਂ ਲਈ ਕੋਈ ਰੂਲ ਨਹੀਂ ਆ ਤੇ ਬਾਕੀ ਗੱਲ ਵੋਟਾਂ ਦੀ ਭਾਜੀ ਕਿੱਥੇ ਮੈਂ ਤਾਂ ਇਹੀ ਕਹੂੰਗਾ ਵੀ ਪ੍ਰਮਾਤਮਾ ਕਰੇ ਕੱਲ ਦਾ ਦਿਨ ਸੁੱਖ ਸ਼ਾਂਤੀ ਨਾਲ ਸਰੇ ਜੜੇ ਸਰਕਾਰ ਤੇ ਜਿਹਦੀ ਵੀ ਆਵੇ ਚੰਗੀ ਹੋਵੇ ਪਰ ਇਹ ਵੀ ਕਿ ਮਾਂ ਪਿਓ ਦਾ ਕੋਈ ਬੱਚਾ ਨਾ ਲੱਗੇ ਜਿੱਦਾਂ ਦੇ ਮਾਦਨੇ ਉਥੇ ਮਹਾਰਾਜ ਰੱਖੇ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਸੁਨੀਲ ਜੀ ਲਾਈਨ ਨੰਬਰ 2 ਅਮ ਸਤਿ ਸ਼੍ਰੀ ਅਕਾਲ ਗਿਆਨ ਸਾਹਿਬ ਕੀ ਹਾਲ ਚਾਲ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਾਈ ਉਹ ਧੰਨਵਾਦ ਭਾਜੀ ਜੀ ਜੀ ਥੈਂਕ ਅ ਮੈਂ ਤਾਂ ਨਾਈ ਗੱਲ ਪਹਿਲਾਂ ਗੱਲ ਕੀਤੀ ਆਪਣੇ ਰਫਿਜੀ ਬਾਰੇ ਡਾਕਟਰ ਦਾ ਇੱਥੇ ਵੀ ਭਾਜੀ ਸਹੀ ਮਰਾ ਚੱਕਰ ਆ ਇੱਥੇ ਵੀ ਬਹੁਤ ਰਫਿਜੀ ਆ ਇਹਨਾਂ ਨੂੰ ਜਿੱਦਾਂ ਫੁੱਲ ਆਪਣੀਆਂ ਫੈਸਿਲਿਟੀਜ਼ ਮਿਲਦੀ ਆ ਯਾਨੀ ਕਿ ਦੇ ਵਿੱਚ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਆ ਤੇ ਬਸ ਆਪਣੇ ਛੋਪਾ ਦੇ ਬੈ ਜਾਂਦੇ ਆ ਹਲ ਹਲ ਕਰੀ ਜਾਂਦੇ ਆ ਗਵਰਨਮੈਂਟ ਯਾਨੀ ਕਿ ਇਹਨਾਂ ਕੋਲ ਵੀ ਕਾਫੀ ਪ੍ਰੋਬਲਮ ਹੈ ਗਵਰਨਮੈਂਟ ਨੂੰ ਪਰ ਹੁਣ ਕ੍ਰੀਏਟ ਕਰੀ ਜਾਂਦੇ ਆ ਤੇ ਉਹਨਾਂ ਨੂੰ ਥੋੜਾ ਕੋਈ ਤੇ ਬਸ ਗਵਰਨਮੈਂਟ ਲੱਗੀ ਹੈ ਜੋਰ ਨਾਲ ਪਰ ਮੈਨੂੰ ਨਹੀਂ ਲੱਗਦਾ ਇਹਦਾ ਕੋਈ ਹੱਲ ਹੋ ਸਕਦਾ ਤੇ ਇੱਕ ਹੋਰ ਗੱਲ ਕਹਨੀ ਭਾਈ ਆਪਾਂ ਤਾਂ ਪ੍ਰੋਗਰਾਮ ਸਾਰੇ ਸੁਣਦੇ ਆ ਬੜਾ ਹਾਂਜੀ ਆ ਮੈਂ ਗੱਲ ਕਰਦਾ ਜਿੱਦਾਂ ਆਪਾਂ ਅਸੀਂ ਇੱਥੇ ਟਰੱਕ ਚਲਾਉਣੇ ਆ ਪਲੇ ਕਰੀ ਜਾਇਆ ਪਰ ਸਾਰਾ ਬੈਨੇਫਿਟ ਇਹ ਲੈ ਆ ਜਿੱਦਾਂ 3-3 4-4 ਹਜ਼ਾਰ ਰੁਪਏ ਉਹਨਾਂ ਨੂੰ ਮਿਲਦਾ ਹਨਾ ਡਿਪੈਂਡ ਹੋਏ ਹਾਂ ਬਸ ਬਹਿਲੇ ਬੈਠੇ ਆ ਕਰਦੇ ਕੋਈ ਕੰਮ ਨਹੀਂ ਛੇ ਛੇ ਫੁੱਟੇ ਹੈਗੇ ਆ ਬਸ ਕ੍ਰਾਈਮ ਦੇ ਵਿੱਚ ਇਨਵੋਲ ਹੋਈ ਜਾਂਦੇ ਹੋਲੀ-ਵੜੀ ਥੈਂਕ ਯੂ ਭਾਈ ਜੀ ਰਹੋ ਤੁਸੀਂ ਥੈਂਕ ਪਿਛਲੇ ਦਿਨੀ ਸਵਰਗਵਾਸ ਹੋ ਗਏ 30 ਜਨਵਰੀ ਨੂੰ ਐਕਸੀਡੈਂਟ ਉਹਨਾਂ ਦਾ ਹੋਇਆ ਇੱਕ ਬੇਟਾ ਦੋ ਧੀਆ ਪਿੱਛੇ ਛੱਡ ਗਏ ਤੇ ਉਹਨਾਂ ਦੀ ਸਰਦਾਰਨੀ ਮਨਜਿੰਦਰ ਕੌਰ ਬੜੈਚ ਪਿਛਲਾ ਪਿੰਡ ਭਰੋਵਾਲ ਜ਼ਿਲ੍ਹਾ ਜਲੰਧਰ ਫਿਊਨਰ ਆ ਜਿਹੜਾ 12:30 ਵਜੇ ਇਸ ਐਤਵਾਰ ਨੂੰ ਹੈ 5 ਫਰਵਰੀ ਨੂੰ ਫਾਈਬਰ ਫਿਊਨਰ ਹਾਲ ਦੇ ਵਿੱਚ ਤੇ ਉਹਦੇ ਬਾਅਦ ਅਕਾਲੀ ਗੁਰਦੁਆਰਾ ਸਾਹਿਬ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਸਕੀਨਾ ਰੋਡ ਤੇ ਅੰਤਿਮ ਅਰਦਾਸ ਹੈ ਫਾਦਰ ਇਨ ਲਾਸਾ ਹਿੰਮਤ ਸਿੰਘ ਮੰਗੜ 778 864 0408 ਤੁਸੀਂ ਦੁੱਖ ਦਾ ਪ੍ਰਗਟਾਵਾ ਇੱਥੇ ਕਰ ਸਕਦੇ ਹੋ ਤੇ ਨਾਲ ਹੀ ਸਰ ਅਫਤਾ ਸਿੰਘ ਚੱਜ ਪਿਛਲਾ ਪਿੰਡ ਬਲਾਸਪੁਰ ਸਾਡਾ ਲੁਧਿਆਣਾ ਜ਼ਿਲ੍ਹੇ ਦਾ ਜੀ ਰਾੜਾ ਸਾਹਿਬ ਦੇ ਨਾਲ ਪਿੰਡ ਹੈ ਸਰਜੋਰਾ ਸਿੰਘ ਚੱਜ ਉਹਨਾਂ ਦੇ ਵੱਡੇ ਬ੍ਰਦਰਸ ਹਨ 26 ਜਨਵਰੀ ਨੂੰ ਉਹ ਪੂਰੇ ਹੋ ਗਏ ਐ ਫਿਊਨਲ ਉਹਨਾਂ ਦਾ ਕੱਲ ਨੂੰ 2 ਵਜੇ ਐ ਫਾਈਵ ਰਿਵਰ ਦੇ ਵਿੱਚ ਤੇ ਉਸ ਤੋਂ ਬਾਅਦ ਅੰਤਮਰਦਾਸ ਸਿੰਘ ਸਭਾ ਗੁਰਦੁਆਰਾ ਸਾਹਿਬ 132 ਸਟਰੀਟ ਤੇ ਵਿਕੀ ਚੱਜ 604 722 6413 ਨੰਬਰ ਹੈ ਤੁਸੀਂ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰ ਸਕਦੇ ਹੋ ਹਰਜੀਤ ਸਿੰਘ ਜੀ ਲਾਈਨ ਨੰਬਰ 3 ਹਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਲక్ష్ਮੀ ਦੀ ਗੱਲ ਕਰਨ ਸੀ ਦੇਖੋ ਜਿਸ ਨੇ ਆ 3 ਮਹੀਨੇ 4 ਮਹੀਨੇ ਪਹਿਲਾਂ ਮੈਂ ਸੁਰਜ ਕੈਂਡੀਡੇਟ ਨਹੀਂ ਡਿਕਲੇਅਰ ਕਿ ਕਿੱਥੋਂ ਹੈ ਕੈਂਡੀਡੇਟ ਕੈਂਡੀਡੇਟ ਲੈ ਕੇ ਆਉਣਗੇ ਕੌਣ ਹੈ ਮੇਰਾ ਬੂਥ rau ਉੱਥੇ ਦਾ ਪਿੰਡ ਦੋ ਧੜੇ ਚ ਮੰਡਿਆ ਹੋਇਆ ਦਾ ਕਾਂਗਰਸੀ ਕਾਂਗਰਸੀ ਦਾ ਅਖਾਲੀ ਦਾ ਖੰਗ ਦਿੰਦੇ ਯਕੀਨ ਪਿੰਡ ਦਾ ਸਾਰਾ ਨਸਾ ਹੀ ਬਦਲਿਆ ਪਿਆ ਮੈਂ ਕੱਲ ਪਰਸਾ ਦੇਖਿਆ ਹੀ ਰੋਡ ਸੋਵਗਰ ਜਿਹੜੇ ਪਿੰਡਾਂ ਦੇ ਵਿੱਚ ਜਿੰਨੇ ਵੀ ਬਾਹਰ ਗਏ ਆਪਣੇ ਪੜਾਈ ਵੇਸ ਅਸਟ੍ਰੇਲੀਆ ਜਾਂ ਆਪਣੇ ਪੱਕੇ ਵੀ ਆਏ ਜਿੰਨੇ ਉਹਨਾਂ ਦੇ ਪਿੰਡਾਂ ਦੇ ਫੈਮ ਨਹੀਂ ਸਾਰੇ ਉਹਨਾਂ ਨੇ ਚੇਂਜ ਹੋਏ ਪਿਆ ਸਾਡੇ ਪਿੰਡ ਦਾ ਸਰਪੰਚ ਸੀ ਮਤਲਬ 20-25 ਸਾਲ ਤੋਂ ਉਹ ਅਕਾਲੀ ਦਾ ਸਰਪੰਚ ਰਿਹਾ ਤੇ ਆਗੂ ਵੀ ਰਿਹਾ ਏਰੀਆ ਦੇ ਵਿੱਚ ਮੈਂ ਦੇਖਿਆ ਹੈਰਾਨ ਰਹੀ ਉਹ ਰੋਡ ਸ਼ੋਅ ਦੇ ਵਿੱਚ ਗਾਲਚੋ ਦੇ ਝੰਡਾ ਚੱਕਿਆ ਤੇ ਰੋਡ ਸ਼ੋਅ ਦੇ ਸਾਰਿਆਂ ਨੂੰ ਮੂਰੇ ਸੀ ਉਹ ਕਾਰਨ ਕੀ ਕਿ ਉੱਥੇ ਜਿਹੜੇ ਬਾਹਰ ਜਿੰਨੇ ਵੀ ਬਾਰ ਕਿਸੇ ਮੁੰਡਾ ਕੁੜੀ ਬੈਠਾ ਉਹਨਾਂ ਨੇ ਇੰਨਾ ਜਿਆਦਾ ਪ੍ਰੈਸ਼ਰ ਪਾਇਆ ਉਹਨਾਂ ਸਾਰਾ ਕੁਝ ਹੀ ਚੇਂਜ ਕਰਾਉ। ਤੁਸੀਂ ਦੱਸੋ ਕਿ ਜਿਹੜੇ ਬਾਹਰ ਬੈਠੇ ਕੋਈ ਮੁੰਡਾ ਜਾਂ ਕੁੜੀ ਇਹਦੇ ਘਰਦਿਆਂ ਨੂੰ ਕਿਤੇ ਪਰੇ ਹਿੱਲ ਨਹੀਂ ਸਕਦਾ ਦੂਜੀ ਗੱਲ ਜੀ ਗੱਡੀ ਦੀ ਗੱਲ ਦੱਸੀ ਸੀ ਜਿਹੜੀ ਆ ਜਿਹੜੀ ਫੜੀ ਗਈ ਆ ਉਹ ਤੇ ਪੁਲਿਸ ਵਾਲੇ ਕੋਲੇ ਖੜੇ ਤੇ ਆਪਣੇ ਅਮਰੀਕਾ ਲੋਕ ਪੈਂਕ ਫੜ ਕੇ ਭੰਗੜਾ ਪਾਉਣ ਦੇ ਆਏ ਭੰਗੜਾ ਪਾ ਰਹੇ ਆ ਉਹ ਜਦ ਮੈਂ ਸਵੇਰੇ ਫੋਨ ਕਰ ਰਿਹਾ ਸੀਗਾ ਤੇ ਮੁੰਡਿਆਂ ਨੂੰ ਉਹ ਕਹਿੰਦੇ ਵੀ 2 ਮਿੰਟ 5 ਮਿੰਟ ਤੂੰ ਗੱਲ ਕਰ ਲੈ ਜਿਹੜੀ ਕਰਨੀ ਆ ਵੀ ਅਸੀਂ ਸਾਨੂੰ ਹੋਰ ਕੋਈ ਕੰਮ ਹੀ ਨਹੀਂ ਬਾਹਰ ਹੋ ਜਾਣ ਦੀ ਅਮਰੀਕਾ ਤੋਂ ਬਲੇ 2 ਮਿੰਟ ਬਾਅਦ ਕਰਦੇ ਘੰਟੇ ਮੁੰਡਿਆਂ ਦੇ ਫੋਨ ਆਉਂਦੇ ਇਹ ਪੂਨੇ ਬੈਟਰੀ ਦਾ ਪਾਟਣ ਵਾਲੀਆਂ ਵੀ ਪੇਰੇ ਸਾਡੇ ਕੋਲ ਟਾਈਮ ਹੈ ਨਹੀਂ ਆ ਕਿ ਇੰਨਾ ਜਿਆਦਾ ਅਗਰੈਸਿਵ ਹੋਏ ਪੈ ਇੰਨਾ ਜਿਆਦਾ ਜੋਸ਼ ਹੈ ਮੈਂ ਥੈਂਕ ਯੂ ਜੀ ਥੈਂਕ ਯੂ ਜੀ ਲਾਈਨ ਨੰਬਰ 4 ਜੀ ਅਸੀਂ ਫਾਈਲ ਆਪਣੇ ਪਾਸੇ ਜਿਆਦਾ ਕਾਲਾਂ ਮੈਂ ਥੋੜੇ ਬੈਲੈਂਸ ਕਰਨਾ ਚਾਹੁੰਦਾ ਸੀ ਕਰੋ ਜੀ ਕਰੋ ਹਾਂ ਜਿਹੜਾ ਕੁਝ ਉਹ ਗੋਸੂ ਹੋ ਰਿਹਾ ਮੇਰਾ ਖਿਆਲ ਵੀ ਜਿਵੇਂ ਆਪਾਂ ਕੋਈ ਟੀਮ 4 ਦੇ ਵਿੱਚ ਆਪਣਾ ਨਾਮ ਹੋਇਆ ਸੀ ਜਿਉਂ ਆਪਾਂ ਉਹਨਾਂ ਨੂੰ ਕਹੀਏ ਤੁਸੀਂ ਆਏ ਨਹੀਂ ਕਰਦੇ ਜੋ ਨਹੀਂ ਕਰਦੇ ਵੀ ਹੋ ਆਪਾਂ ਨੂੰ ਵੀ ਜਾਦਾ ਇੱਥੇ ਜਿਹੜੀਆਂ ਗਵਰਨਮੈਂਟ ਜੇ ਇਹ ਇਹ ਜੋ ਕੁਝ ਕਰਦੀਆਂ ਵਾਸਤੇ ਕਿਉਂ ਤੁਸੀਂ ਪ੍ਰੋਬਲਮ ਖੜੀ ਕਰਦੇ ਹੋ ਬਾਕੀ ਜੇ ਆਪਾਂ ਕਹਿੰਦੇ ਇਹਨਾਂ ਦੇ ਇੰਜਣ ਨੇ ਜਵਾਕ ਹੈ ਇਹ ਮੇਰੇ ਖਿਆਲ ਮੁਸਲਮਾਨ ਕਾਂਟ ਦੇ ਵਿੱਚ ਉਹਨੀ ਪੋਪੂਲੇਸ਼ਨ ਦੀ ਪ੍ਰੋਬਲਮ ਨਹੀਂ ਹੈਗੀ ਜਿੱਨੇ ਮੇਰੇ ਖਿਆਲ ਆਪਣੀ ਆਪਾਂ ਕਹਿੰਦੇ ਆਪਣੇ ਕੋਲ ਜ਼ਮੀਨਾਂ ਨਹੀਂ ਰਹਿਣ ਆਪਾਂ ਤਾਂ ਇੱਧਰ ਆਉਨੇ ਆਪਾਂ ਮੇਰਾ ਸੱਜਣ ਓਪਨ ਥੋੜਾ ਪਰ ਬਾਈ ਜੀ ਮੈਂ 1 ਮਿੰਟ ਮੈਂ ਤੁਹਾਨੂੰ ਟੋਕਦਾ ਪਰ ਸਾਡਾ ਅਸੀਂ ਰਿਫਿਊਜੀ ਬਣ ਕੇ ਆਏ ਕੰਮ ਤਾਂ ਕੀਤੇ ਨਾ ਮੈਂ ਤਾਂ ਕੀਤੇ ਉਹ ਵਰਕ ਪਰਮਿਟ ਦਓ ਅਸੀਂ ਕੰਮ ਕਰਨ ਇਹ ਕੰਮ ਮੈਂ ਤਾਂ ਗੱਲ ਕੰਮ ਦੀ ਕਰ ਰਿਹਾ ਮੈਂ ਇਹ ਲਿਉਣ ਦੀ ਨਹੀਂ ਹੈ ਮੇਰੇ ਸਿਰ ਤੇ ਨਹੀਂ ਕੋਈ ਬੈਠਾ ਦੁਨੀਆ ਖੁੱਲ ਬਹੁਤ ਦੇਸ਼ ਵੱਡਾ ਪਰ ਉਹਨਾਂ ਦੀ ਕੀਮਤ ਤੁਸੀਂ ਮੈਂ ਕਿਉਂ ਦਿੰਨੇ ਆ ਗੱਲ ਮੈਂ ਇਹ ਕਹਿ ਰਿਹਾ ਉਹ ਆਪਣੀ ਸਿਚੂ ਆਪਣਾ ਮਾਈਂਡ ਸੈਟ ਬਣਾਇਆ ਹੋਇਆ ਸੀ ਆਪਾਂ ਜਿੱਦਾਂ ਆਇਆ ਕੋਈ ਕਿਵੇਂ ਆਇਆ ਕੋਈ ਰਿਫਿਜੀ ਹਾਂ ਫਿਰ ਇਹਦਾ ਦਾ ਮਾਈਂਡ ਸੈਟ ਇਹਨਾਂ ਦਾ ਹੋਣਾ ਚਾਹੀਦਾ ਕੰਮ ਤਾਂ ਕਰਨਾ ਚਾਹੀਦਾ ਬਾਕੀ ਇੰਡੀਆ ਦੀ ਆਪਣੀ ਪੋਲਿਟਿਕਸ ਮੈਂ ਉਸ ਬਾਰੇ ਕਹਿਣਾ ਚਾਹੁੰਦਾ ਜੀ ਕਰੋ ਜੀ ਹਾਂਜੀ ਜਿਹੜੇ ਨੇ ਆਪਣੇ ਅੱਜ ਕੱਲ ਪੋਲਿਟਿਕਸ ਨਵੀਂ ਆਈ ਹੈਗੀ ਤੁਸੀਂ ਲੋਕਾਂ ਦੀ ਸੇਵਾ ਕਰੋ ਚਾਹੇ ਨਾ ਕਰੋ ਤੁਸੀਂ ਐਕਸਪਰਟ ਹੋਵੋ ਦੇ ਲੋਕਾਂ ਦੇ इमोਸ਼ਨਲ ਐਂਟਰਟੇਨਮੈਂਟ ਦੇ ਵਿੱਚ ਤੁਸੀਂ ਤੁਹਾਡੇ ਐਕਸਪੀਰੀਅੰਸ ਹੋਵੇ ਤੁਸੀਂ ਲੋਕਾਂ ਨੂੰ ਆਸਾ ਵੀ ਸਕੋ ਤੁਸੀਂ ਲੋਕਾਂ ਨੂੰ ਰਵਾ ਵੀ ਸਕੋ ਵੀ ਉਹੋ ਜੇ ਹੁਣ ਤੇ ਸਚੇ ਸਿੰਘ ਪੱਡਾ 604 617 84 ਤੇ 604 592 ਪਾਸੇ ਸਰੀ ਦਾ ਤਾਜ ਹੈ ਗ੍ਰੈਂਡ ਤਾਜ ਇਹਦੇ ਵਿੱਚ ਪਾਰਟੀ ਤੁਸੀਂ ਕੋਈ ਵੀ ਕਰ ਸਕਦੇ ਹੋ ਵਧੀਆ ਪਾਰਟੀ ਸੇਵਾ ਭਾਵਨਾ ਪੂਰੀ ਵੱਡੀਆਂ ਛੋਟੀਆਂ ਪਾਰਟੀਆਂ ਰਾਜਨੀਤਿਕ ਇਕੱਠ ਪਿੰਡੂਆਂ ਦਾ ਕੋਈ ਇਕੱਠ ਪੈਸੇ ਇਕੱਠੇ ਕਰਨ ਲਈ ਮਤਲਬ ਉਹ ਤਾਂ ਕਹਿਣਾ ਹੁੰਦਾ ਵੀ ਉਹ ਸਸਤੀਆਂ ਕਰ ਦਿੰਦੇ 604 ਹੈ ਤਾਂ ਉਹ ਵੀ ਪਾਰਟੀ ਹੀ ਹੈ 6178484 ਵੇਖੋ ਕੋਈ ਵੀ ਭਾਈਚਾਰੇ ਦੀ ਮੁਸ਼ਕਲ ਆ ਗੱਲ ਕਰਨੀ ਬਣਦੀ ਹੈ ਮੈਂ ਆਪਾਂ ਆਪਣੀ ਵੀ ਕਰਦੇ ਆ ਆਲਮੋ ਵਾਲੇ ਜਿਹੜਾ ਸਾਰੇ ਨਹੀਂ ਕੰਸਲਟੈਂਟ ਚੰਗੇ ਵੀ ਨੇ ਪਰ ਜਿਹੜੇ ਖਲ ਲਾਉਂਦੇ ਪੁੱਠੀ ਕਰਕੇ ਮੈਂ ਉਹਨਾਂ ਦੀ ਗੱਲ ਕਰਦਾ ਸੀ ਜਿਨ੍ਹਾਂ ਦੇ ਉੱਥੇ ਵੀ ਹੱਥ ਜੋੜਦੇ ਆ ਤੇ ਇੱਥੇ ਵੀ ਹੱਥ ਜੋੜਦੇ ਆ ਰਮਿੰਦਰ ਮਾਨ ਜੀ ਲਾਈਨ ਨੰਬਰ 5 ਹਾਂਜੀ ਗਿਲਸਰ ਸੱਤੀ ਕਾਲ ਜੀ ਸੱਤੀ ਕਾਲ ਮਾਨ ਸਰ ਗਿਲਸਰ ਮੈਂ ਪਿਛਲੇ ਟਾਈਮ ਤੋਂ ਗੱਲ ਕਰਨੀ ਆ ਤੇ ਕੁਛ ਇਹ ਦੱਸਦੇ ਵੀ ਨੰਬਰ 1 ਮੈਂ ਕੈਨੇਡਾ ਦੇ ਵਿੱਚ ਸ਼ਸਤੀ ਸਾਲ ਪਹਿਲਾਂ ਆਇਆ ਸੀਗਾ ਜੀ ਔਰ ਅੱਜ ਤੱਕ ਇੱਕ ਦਿਨ ਵੀ ਮੈਂ ਅਨਪਲੋਇਡ ਨਹੀਂ ਰਿਹਾ ਅਨਪਲਾਈਮੈਂਟ ਨਹੀਂ ਲਈ ਹੌਣ ਵੈਸੇ ਪਿਛਲੇ 7-8 ਸਾਲ ਤੋਂ ਮੈਂ ਟਰੱਕਿੰਗ ਬਿਜ਼ਨਸ ਦੇ ਵਿੱਚ ਆ ਇੱਕਦਮ ਮੈਂ ਤੁਹਾਨੂੰ ਦੱਸਣ ਲੱਗਾ ਸੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਪਹਿਲੇ ਦੇ ਵਿੱਚ ਅਮਰੀਕਾ ਬਾਰੇ ਮੈਂ ਪਰਸੋਂ ਹੀ ਟਰੱਕ ਲੈ ਕੇ ਵਾਪਸ ਆ ਰਿਹਾ ਸੀਗਾ ਇਸ ਬਾਰਡਰ ਤੇ ਬਲੇਨ ਵਾਲੇ ਤੇ ਜਿਹੜੀ ਪਾਰਕਿੰਗ ਲਾੜ ਹੈ ਉੱਥੇ ਸੀਗੇ ਯੂ ਐਸ ਕਸਟਮ ਵਾਲੇ ਤੇ ਉਹ ਟਰੱਕ ਆ ਰਹੇ ਉਹਨਾਂ ਨੂੰ ਚੈੱਕ ਕਰ ਰਹੇ ਸੀਗੇ ਤੇ ਮੇਰਾ ਟਰੱਕ ਉਹਨਾਂ ਨੇ ਮੈਨੂੰ ਕਹਿੰਦੇ ਕਿ ਕਿੱਥੋਂ ਲੈ ਲੋਡ ਲੈ ਕੇ ਆ ਮੈਂ ਦੱਸਿਆ ਮੈਂ ਕਿਹਾ ਅਮਰੀਕਾ ਚੋਂ ਕੈਲੀਫੋਰਨੀਆ ਲੈ ਕੇ ਆ ਤੇ ਐਨੀਵੇ ਖੋਲੋ ਮੈਂ ਤਾਂ ਵੇਖਣਾ ਚਲੋ ਟਰਲ ਖੋਲ ਕੇ ਦੇਖ ਕੇ ਤੇ ਮੈਨੂੰ ਕਹਿੰਦੇ ਕਿ ਵੇਅਰ ਯੂ ਫਰਮ ਮੈਂ ਕਿਹਾ ਸਰੀ BC ਨਹੀਂ ਫਿਰ ਫਿਰ ਫਿਰ ਮੈਨੂੰ ਪੁੱਛਿਆ ਉਹਨੇ ਵੀ ਵੇਅਰ ਯੂ ਸਿਟੀਜ਼ਨ Uh, anyway me because i have one report actually one of the lawyer and immigration lawyer in america one the email me i told about that you have your right ki hai gaye to you kisi koi bhi us custom officer nal aggressively gal nahi karni politely but you have some rights to over my mind ki gal main unnu keh ja ke main kaha anyway i am originally from india i belong to sik religion and mm. uh, now i live lot 36 years firo gal change kar gi topic change karke main unne kya kende you your accent is pretty good actually i thought uh, uh, you know you were born here in canada main kaha anyway I, i came 36 years ago so that's why mm. my english looked good better right because another hai ga they ask actually mostly no ki tusi jehde country you belong karde ho pakistan or any muslim country because sara color bhi unna da holdda hi hai baki jehdi gal kar rahe si the welfare di ਇਥੇ ਹਾਂ ਜੀ ਇਹ ਪ੍ਰੋਬਲਮ ਤਾਂ ਸਾਡੀ ਹੈਗੀ ਗਵਰਨਮੈਂਟ ਨੂੰ ਵਸੇ ਚਾਹੀਦਾ ਹੈਗਾ ਵਾ ਹੈਂਡੀਕੈਪ ਐਂਡ ਐਲਡਰਲੀ ਪੀਪਲ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਬਾਕੀ ਜਿਹੜੇ ਹੈਗੇ ਆਈ ਥਿੰਕ ਇਸ ਟੋਟਲੀ ਐਂਡ ਆਨੋਵਰਹਾਲ ਕਰਨਾ ਚਾਹੀਦਾ ਵੈਲਫੇਅਰ ਸਿਸਟਮ ਤੇ ਦੂਜਾ ਅਸਲੀ ਕ ਭਾਈ ਹੋਰ ਪਤਾ ਨਹੀਂ ਸਾਰੀ ਕੀਤੀ ਕਿ ਨਹੀਂ ਕੀਤੀ ਸਾਰੇ ਦੇ ਵਿੱਚ ਜਿੰਨੇ ਬਾਰ ਬੋਸ਼ਾ ਪਿਆ ਦੇ ਉਹਨਾਂ ਨੇ ਲਿਖ ਕੇ ਲਾਇਆ ਵਾ ਕੈਸ਼ ਓਨਲੀ ਆ ਰੋਣਾ ਕਿਤੇ ਤੁਸੀਂ ਤਾਂ ਘਰ ਨਹੀਂ ਗਏ ਹੋਣੇ ਅੱਜ ਤੁਹਾਡੇ ਸਰੋਤੇ ਹੋ ਜਿਹੜੇ ਐਕਸਪੀਰੀਅੰਸ ਹੋਊਗਾ ਮੈਂ ਗਿਣ ਕੇ ਚ ਇਨ ਗਿਆ ਵੀ ਹੈਗਾ ਵਾਕਟਾਉਣ ਵਾਸਤੇ ਤੇ ਲਿਖ ਲਿਆ ਹਰ ਐਵੀ ਦੁਕਾਨ ਦੇ ਵਿੱਚ ਜਿਹੜੇ ਮੁਸਲਮਾਨ ਹਨ ਹੈਗੀਆਂ ਲਿਚਾ ਹੈਗਾ ਕੈਸ਼ ਪਾਉਣ ਲਈ ਨਾ ਕਿਉਂਕਿ ਦੂਜੇ ਬੰਦੇਓ ਕੁੰਡੀ ਉਧਰੋਂ ਵੀ ਸਿੱਟਣੀ ਆ ਨਾ ਪਰਲੇ ਬੰਦੇਓ ਵਪਾਰਕ ਸੰਦੇਸ਼ ਓਕੇ ਬਈ ਸਮਾਂ ਮੇਰੇ ਕੋਲ ਕੱਟ ਗਿਆ ਜੀ ਪਰ ਵੀ ਥੋੜਾ ਜਿਹਾ ਸੰਖੇਪ ਰੱਖਿਓ ਪ੍ਰਵੀਰ ਸਿੰਘ ਜੀ ਲਾਈਨ ਨੰਬਰ ਟੂ ਦੱਸ ਦਿਓ ਪਰ ਜੀ ਯੂ ਆਲ 3 ওকে ਯਾ ਤੁਹਾਡੀ ਜੈ ਸਿੰਘ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਕੀ ਹਾਲ ਚਾਲ ਹੈ ਜੀ ਬਾਹ ਸ਼ੁਕਰਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੱਸੋ ਵੀਰ ਦੀ ਗੱਲ ਇਹ ਹੈ ਸੀ ਵੀਰ ਸ਼ੁਜੀ ਆਏ ਸੀ ਪੱਕੇ ਹੋਏ ਮੌਂਟਰੀ ਤੇ ਟੋਟ ਟੋਟ ਬੰਦੇ ਸੀ ਕੰਮ ਕਰਦੇ ਸੀਗੇ ਸਿਆਲਾਂ ਦੇ ਵਿੱਚ ਹੱਥ ਮੁੜ ਜਾਂਦੇ ਸੀਗੇ ਸਾਗਮਲ ਚੁੱਕਣ ਜਾਂਦੇ ਹੁੰਦੇ ਸੀ 2-2 ਕਿਲੋ ਦਾ ਕਿੱਟਾ ਜਿਹਾ ਸਾਗਮਲ ਦੇਖਣੇ ਕੋਰਾ ਸਟੋਰਨ ਤੇ ਆਪਣੇ ਬੰਦਿਆਂ ਨੇ ਧਨੀਆ ਬੰਨੇ ਆ ਕੁਛ ਨਾ ਡੰਡੇ ਫੇ ਸਾਰਾ ਕੁਝ ਕੀਤਾ ਇਹ ਨਹੀਂ ਸਮਝ ਆਉਂਦੀ ਕਿ ਇਹ ਗਵਰਨਮੈਂਟ ਇਹਨਾਂ ਨੂੰ ਵਿਹਲਿਆਂ ਨੂੰ ਕਿਉਂ ਘਾਉਣ ਡੀਆਂ ਆ ਤੁਸੀਂ ਕਿਤੇ ਤੁਹਾਡੇ ਅਸਿਸਟੈਂਟ ਰੱਬ ਨਾ ਕਰੇ ਕਿਸੇ ਦਾ ਹੋ ਜਵੇ ਅਨਪਲਾਈਮੈਂਟ ਲੈ ਕੇ ਦੇਖੋ ਨਾਲੇ ਤੁਸੀਂ 10 ਸਾਲ ਕੰਮ ਵੀ ਕੀਤਾ ਹੁੰਦਾ ਤੁਹਾਡੇ ਨਾਕ ਨਾਲ ਕੀਹਾਂ ਕਰਾਉਂਦੇ ਆ ਜੇ ਤੁਸੀਂ ਵੈਲਫੇਅਰ ਨੂੰ ਮੂੰਹ ਕਰਦੇ ਉਹ ਵੀ ਚੀਜ਼ਾਂ ਦੇ ਨਹੀਂ ਮੈਨੂੰ ਆਹ ਆ ਪੇਪਰ ਦੋ ਸਾਨੂੰ ਸੌਪਰੂਫ ਦੋ ਲਿਆਣ ਕੇ ਇਸ ਕਰਕੇ ਇਹ ਗੱਲ ਆ ਵੀ ਸਾਡਾ ਕਿਸੇ ਨਾਲ ਵਿਰੋਧ ਨਹੀਂ ਹੈਗਾ ਰਿਪਬਲੀਕਨ ਦੇ ਨਾਲ ਜਾਂ ਜਿਵੇਂ ਮੁਸਲਮਾਨ ਕੰਟਰੀ ਦੇ ਨਾਲ ਇਹ ਆਉਣ ਜੀ ਸਾਡੇ ਚਾਹਣ ਪਰ ਕੰਮ ਕਰਨ ਕੰਮ ਕਰਕੇ ਆਪਣੇ ਖਾਣ ਕੋਈ ਤੰਗੀ ਨਹੀਂ ਕਿਸੇ ਨੂੰ ਥੈਂਕ ਯੂ ਧੰਨਵਾਦ ਜੀ ਕਰਨ ਜੀ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਜੀ ਸੱਚੇ ਕਾਲ ਬਾਈ ਜੀ ਅ ਬਈ ਮੈਂ ਆਸਟ੍ਰੇਲੀਆ ਤੋਂ ਮੂਵ ਆਇਆ ਯੂ ਐਸ ਤੇ ਉੱਥੇ ਮੈਂ ਸਿਕਿਉਰਿਟੀ ਕਰਦਾ ਸੀਗਾ ਉੱਥੇ ਬਾਈ ਮੈਨੂੰ ਮਿਲਿਆ ਇੱਕ ਬੰਗਲਾਦੇਸ਼ ਤੋਂ ਇਦਾਂ ਆਉਣ ਲੱਗ ਗਿਆ ਹਰ ਵਾਰ ਟੈਕਰ ਹੋਣ ਲੱਗੀ ਮੈਂ ਪੁੱਛਣ ਲੱਗ ਗਿਆ ਵੀ ਕੀ ਕਰਦਾ ਇਹ ਕਹਿੰਦਾ ਬਾਈ 3 ਸਾਲ ਹੋ ਗਿਆ ਇਹਨੂੰ ਇੰਗਲਿਸ਼ ਸਿੱਖੀ ਜਾਂਦਾ ਹੈਗਾ ਤੇ ਮੈਂ ਕਿਹਾ ਕੰਮ ਕੋਮ ਤਰਾ ਸਰਦਾ ਕਿਵੇਂ ਹੈਗਾ ਇਹਦਾ ਸੱਤ ਜਵਾਬ ਹੈ ਡਾਲਰ 6000 ਆਉਂਦਾ ਮਹੀਨੇ ਦਾ ਤੇ ਹੋਰ ਚਾਹਾਂ 50 ਸਾਲਾਂ ਦੇ ਦਾ ਸਾਰਿਆਂ ਤੋਂ ਵੱਡਾ ਮੁੰਡਾ 16 17 ਸਾਲਾਂ ਦਾ ਹੋ ਜੂਗਾ ਉਹ ਕੰਮ ਕਰਨ ਲੱਗ ਜੂਗਾ ਆਪਾਂ ਕਹਿੰਦਾ ਸਾਰੀ ਉਮਰ ਕੰਮ ਨਹੀਂ ਕਰਨਾਗਾ ਹੂੰ ਇਹ ਇਹ ਕੈਨੇਡਾ 'ਚ ਨਹੀਂਗਾ ਜਿੱਥੇ-ਜਿੱਥੇ ਵੀ ਰਿਫਿਊਜੀਆ ਨੂੰ ਸਪੇਅਰ ਦਿੰਦੇ ਹੈਗੇ ਆ ਡੋਜ਼ਨਟ ਮੈਟਰ ਕਿ ਉਹ ਕਿਹੜੀ ਵੀ ਕੰਟਰੀ ਦੇ ਹੈਗੇ ਆ ਪਰ ਇਹ ਜਾ ਕੇ ਨਜਾਇਜ਼ ਫਾਇਦਾ ਚਾਹਦੇ ਉੱਥੇ ਮੁੰਡੇ ਸਟੂਡੈਂਟ 6 6 ਮਹੀਨੇ ਦਾ 30 30 ਹਜ਼ਾਰ ਡਾਲਰ ਕਮਾ ਕੇ ਪੀਸਾਂ ਭਰੀ ਜਾਂਦੇ ਹੈਗੇ ਆ ਇਹ ਇਹਨਾਂ ਨੂੰ ਗਵਰਨਮੈਂਟ ਵੇਹਲਾਂ ਨੂੰ ਬਿਠਾ ਕੇ ਕੋਈ ਜਾਂਦੀ ਹੈ ਪਰ ਨਹੀਂ ਇਹ ਸੁਧਰ ਨਹੀਂ ਸਕਦੇਗੇ ਥੈਂਕ ਯੂ ਠੀਕ ਹੈ ਸਾਡੇ ਵਿੱਚ ਵੀ ਕੈਸ਼ ਵਾਲੇ ਕੁਝ ਕੰਮ ਨੇ ਜਿਹਦੇ ਵਿੱਚ ਲੋਕਾਂ ਨੇ ਬਹੁਤ ਲੋ ਇਨਕਮ ਦਿਖਾਈ ਪੈਸੇ ਵੱਧ ਬਣਾਉਂਦੇ ਰਹੇ ਪਰ ਵੈਲਫੇਅਰ ਤੇ ਨਹੀਂ ਬੈਠੇ ਕੰਮ ਉਹ ਕਰਦੇ ਰਹੇ ਔਰ ਤਰੱਕੀਆਂ ਵੀ ਕੀਤੀਆਂ ਉਹ ਵੀ ਮੈਂ ਹੱਕ 'ਚ ਨਹੀਂ ਚਾਹੀਦਾ ਕਿ ਜਿੰਨੇ ਪੈਸੇ ਬਣਾਉ ਉਹਨੇ ਦਾ ਸਰਕਾਰਾਂ ਨੂੰ ਦਿੰਨੇ ਆ ਉਹੀ ਆਪਾਂ ਨੂੰ ਵਾਪਸੇ ਦਿੰਦੇ ਆ ਪਰ ਇੱਕ ਦਿਨ ਜਿਹੜਾ ਅੱਜ ਹੁਣ ਕੰਮ ਕਰ ਰਿਹਾ ਇਹ ਜੇ ਮੌਸਮ 'ਚ ਉਹਨੂੰ ਦੇਖਦਾ ਵੀ ਮੈਂ ਹੁਣ 50 ਦਾ 15 ਸਾਲ ਨੂੰ ਮੇਰੇ ਲਈ ਤਾਂ ਕੁਝ ਨਹੀਂ ਬਚਣਾ ਜੇ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਜਦ ਫਾਈਨੈਂਸ਼ੀਅਲੀ ਕੰਟਰੀਆਂ ਡਾਊਨ ਹੁੰਦੀਆਂ ਨੇ 올ਡ ਏਜ ਪੈਨਸ਼ਨ ਜੇ ਬੋਝ ਤਾਂ ਸਪਲੀਮੈਂਟ ਹੈ 150 150 ਡਾਲਰ 올ਡ ਏਜ ਹੈ ਤੇ 900 ਡਾਲਰ ਉਹਦੇ ਨਾਲ ਸਪਲੀਮੈਂਟ ਹੈ ਤਾਂ 1000 ਡਾਲਰ ਬਣਦਾ ਉਹ ਸਰਕਾਰਾਂ ਕੋਲ ਪੈਸੇ ਮੁੱਕ ਕਿਹਨੇ ਦੇਣੇ ਨੇ ਉਹ ਸਪਲੀਮੈਂਟ ਫਿਰ ਜਿਹੜੇ ਬੱਚੇ ਨੇ ਜਿਹੜੇ ਗਾਂ ਆਉਣੇ ਨੇ ਉਹਨਾਂ ਨੂੰ ਨੌਕਰੀਆਂ ਉਹਨਾਂ ਲਈ ਰਹਿائش ਉਹਨਾਂ ਲਈ ਜਗ੍ਹਾ ਬਹੁਤ ਕੁਝ ਹੈ ਬਹੁਤ ਫੈਕਟਰ ਨੇ ਜਾਂ ਪਲੇਸਮੈਂਟ ਕਰੋ ਪ੍ਰੋਪਰ ਉਹਨਾਂ ਨੂੰ ਸੈੱਟ ਕਰਕੇ ਦੋ ਉਹਨਾਂ ਨੂੰ ਕੰਮ ਲਈ ਕਹੋ ਤੇ ਉਹ ਕਮਿਊਨਿਟੀਆਂ ਆਵਾਦ ਕਰੋ ਜਿੱਥੇ ਕੋਈ ਨਹੀਂ ਰਹਿੰਦਾ ਨਾਲੇ ਦੇਸ਼ ਕਿਸ਼ਾਲ ਹੋਵੇ ਸਲੀਟਾ ਗੱਲ ਇਹ ਜਿਹੜੀ ਸ਼ੁਰੂ ਤੋਂ ਮੈਨੂੰ ਲੱਗਦਾ ਜੇ ਜਾਨ ਹੀ ਬਚ ਗਈ ਉਹਦੇ ਬਾਅਦ ਤਾਂ ਦੇਸ਼ ਦਾ ਸ਼ੁਕਰ ਕਰਨਾ ਚਾਹੀਦਾ ਵੀ ਕੰਮ ਤੇ ਕੰਮ ਸੀਬੀਸੀ ਨੇ ਡਾਕੂਮੈਂਟਰੀ ਕੀਤੀ ਇੱਕ ਸਾਲ ਪੂਰਾ ਹੋ ਗਿਆ ਐਕਸੀਡੈਂਟ ਬੰਦੇ ਨੂੰ ਉਹ ਕਹਿੰਦਾ ਹੁਣ ਕੰਮ ਮੈਨੂੰ ਚਾਹੀਦਾ ਨਹੀਂ ਓਬਵੀਅਸਲੀ ਲੱਭਣਾ ਹੀ ਨਹੀਂ ਏਸੀਜੀ ਅੱਜ ਦਾ ਪ੍ਰੋਗਰਾਮ ਪੰਜਾਬ ਵੱਲੋਂ ਝਾਕ ਮਾਰ ਲਿਓ ਤੇ ਵੋਟਾਂ ਪਵਾ ਦਿਓ ਕਹਿ ਕੇ ਅਖੀਰ ਦੇ ਵਿੱਚ ਸੁਦੀ ਮਾਨਕ ਤੇ ਸੋਮਵਾਰ ਨੂੰ 11 ਵਜੇ ਮੁੜਦਾ ਰੱਬ ਰੱਖ